ਪਿਤਰ ਮਾਤ ਜੇਹ ਕਰਮ ਪਰਮ ਕਰਮ ਪਰਮ ਨਹੀਂ ਹਾਂ ਨੂੰ ਕੋਈ ਕਰਮ ਧਰਮ ਦਾ ਕੋਈ ਕਰਮ ਨਹੀਂ ਕਰ ਰਿਹਾ ਧਰਮ ਦੇ ਜਿਹੜੇ ਲੋਕ ਕਰਮ ਕਰਦੇ ਨੇ ਉਹਦੇ ਨਾਲ ਪਰਮੇ ਵੱਧਦਾ ਉਹਨੂੰ ਪਰਮ ਹੁੰਦਾ ਪਰ ਉਹ ਵੀ ਐਸ ਕਰਮ ਨਾਲ ਸ਼ਾਇਦ ਕਦ ਠੀਕ ਹੋ ਕਰਬ ਕੋਈ ਨਹੀਂ ਕਰਮ ਦੇ ਤਹਿ ਸ਼ਬਦ ਵਿਚਾਰ ਆਇਆ ਤਾਂ ਜਾਂ ਫਿਰ ਪਰਮੇਸ਼ਰ ਦੀ ਕਿਰਪਾ ਕਰਪਾ ਇਹ ਆ ਸ਼ਬਦ ਵਿਚਾਰ ਸਰੀਰ ਦਾ ਉਹਦੇ ਚ ਹੱਥਾਂ ਪੈਰਾਂ ਦਾ ਕੋਈ ਕੰਮ ਨਹੀਂ ਹੱਥਾਂ ਪੈਰਾਂ ਆਲਾ ਕੰਮ ਕੋਈ ਨਹੀਂ ਜਿਹਦਾ ਕੰਮ ਭੁੱਕਿਆ ਹੋਇਆ ਤੇ ਉਹਦੀ ਗੱਲ ਜਾਂਦੀ ਸਦਾ ਵਾਸਤੇ ਇੱਕ ਅਡੋਲ ਉਹ ਨਹੀਂ ਗੱਲ ਕਰਦਾ ਉਹਨੂੰ ਕਰਮ ਭਰਮ ਕੀ ਆ ਉਹਦਾ ਉਹਦਾ ਹੋ ਰਿਹਾ ਉਹਦਾ ਤਕਬਲ ਇਹ ਕਰਮ ਭਰਮ ਨਹੀਂ ਜਾਤ ਪਾਤ ਜਾਤ ਪਾਤ ਕੋਈ ਨਹੀਂ ਜਾਤ ਪਾਤ ਉਹਦਾ ਤਾਂ ਕਾਹ ਜਨ ਜਨ ਸੀਗਾ ਤੇ ਸਰੀਰ ਹੈ ਹੀ ਨਹੀਂ ਉਹ ਨੂੰ ਵੀ ਸੀਗੇ ਐਸੋ ਭਗਤ ਹੈ ਵਜੂਦ ਪਰ ਨਾ ਜਾਤ ਪਾਤ ਦਾ ਨਾ ਕਰ ਪਰਮ ਜੇ ਸ਼ਰੀਰ ਲੋਕਜਾਤ ਮੰਨਦੇ ਹੁੰਗੇ ਜਿਦਾ ਜਿਦਾ ਸ਼ਰੀਰ ਹੈ ਲੋਕਜਾਤ ਬੋਲਦੇ ਹੁੰਗੇ ਕਹਦੇ ਹੁੰਦੇ ਸੱਚ ਨਾਲ ਕੋਈ ਯਾਦਵਾਤ ਹੁੰਦੀ ਨਹੀਂ ਸ਼ਰੀਰ ਹੁੰਦਾ ਨਹੀਂ ਯਾਦਵਾਤ ਨਹੀਂ ਹੁੰਦੀ ਜੋ ਤੋਂ ਹਦੀ ਹਤੇ ਜੋਦੀ ਕੋ ਹੁੰਦੀ ਨਹੀਂ ਤਾਂ ਪਾਤ ਹੁੰਦੀ ਹੈ ਪਾਤ ਜੋਦ ਵਿੱਚ ਪਦ ਫੇਰ ਉਹ ਤਾਂ ਕੋਈ ਕਲਮ ਕਰੀ ਲੱਗ ਸਕਦਾ ਗਲਤੀ ਨਹੀਂ ਹੋ ਸਕਦੀ ਪਾਤਾ ਪਤ ਤੋ ਜਾਣ ਪਾਤਕ ਕੋਈ ਰੁਕ ਸਕਦਾ ਜਣੂ ਕੋਈ ਉਸ ਫਰਨ ਦੇ ਕੋਈ ਕੁਝ ਐਸੇ ਨਹੀਂ ਨਹੀਂ ਗਏ ਨਹੀਂ ਪਿਤਰਮਾਤ ਨਾ ਪਿਤਰਮਾਤ ਹੈ ਕੋਈ ਪਿਤਰਮਾਤ ਤਾਂ ਹੀ ਹੋਵੇ ਜੇ ਦੇ ਹੋਵੇ ਜਨਮ ਲਿਆ ਹੋਵੇ ਦੇ ਗਏ ਦੀ ਕੋਈ ਘਰ ਨਹੀਂ ਹੈ ਘਰ ਦਾ ਰੋੜੀ ਵੋੜੀ ਉहां पे ਹੈ ਦੀ ਇਹਦਾ ਮਤਲਬ ਇਹ ਹੈ ਕਿਉਂ ਬਾਰ ਬਾਰ ਕਹਿੰਦੇ ਐ ਲੱਗੂਗਾ ਬਾਰ ਬਾਰ ਉਹੀ ਗੱਲ ਹੈਗੇ ਨਹੀਂ ਗਏ ਹਾਂ ਅਸਲ ਦੇ ਵਿੱਚ ਇਸ ਅਵਸਥਾ ਵਿੱਚ ਵੀ ਜੀਵਨ ਹੁੰਦਾ ਆ ਤੁਸੀ ਕਹਿਣਾ ਮਤਲਬ ਇਹ ਆਵਾਜ਼ ਉਹ ਨਹੀਂ ਮੰਨੂਗਾ ਕਿ ਜੀਉਂਦਾ ਰਹੇ ਵੀ ਉਹਦੀ ਕੋਈ ਵजूद ਹੁੰਦਾ ਤੇ ਇਹ ਝੱਲੇ ਤੋਂ ਬਾਅਦ ਹੀ ਵजूद ਹੁੰਦਾ ਭਗਤਾਂ ਦਾ ਜਿਹੜਾ ਦੱਸ ਰਹੇ ਨੇ ਸੱਚਖੰਡ ਵਾਸੀਆਂ ਦਾ ਵजूद ਹੈ ਜਿਹੜਾ ਦੱਸ ਰਹੇ ਨੇ ਇੱਥੇ ਵਾਰ-ਵਾਰ ਕਰ ਰਹੇ ਨੇ ਇਹ ਉਹਨਾਂ ਦਾ ਵजूद ਹੈ ਇਹ ਹੈ ਜਰੀਰ ਉਹਦਾ ਨਾ ਨਾ ਕਹਿਣਾ ਮਤਲਬ ਇਹ ਉਹਨਾਂ ਦੀ ਹੋਂਦ ਹੈ ਜਿਹੜੀ ਹੋਂਦ ਹੈ ਪਰ ਇਹ ਜੀ ਹੁੰਦੀ ਹੈ ਇਹ ਸਾਡੀ ਹੈ ਸਰੂਪ ਹੈ ਰੂਪ ਨਹੀਂ ਹੈ ਰੂਪ ਉਹਦਾ ਸਰੀਰ ਸਰੂਪ ਉਹਦਾ ਆਪਣਾ ਰੂਪ ਹੈ ਇੱਕ ਉਹਦਾ ਆਪਣਾ ਰੂਪ ਹੈ ਕਿਹੜਾ ਉਹਦਾ ਸਰੀਰ ਬਣਾਇਆ ਹੋਇਆ ਰੂਪ ਹੈ ਜਿਹੜਾ ਸਰੀਰ ਦਾ ਰੂਪ ਹੈ ਉਹ ਰੂਪ ਹੈ ਜਿਹੜਾ ਉਹਦਾ ਆਪਣਾ ਰੂਪ ਹੈ ਉਹ ਸਰੂਪ ਹੈ ਇੱਕ ਸਰੀਰ ਹੈ ਕੋਦਾ ਵੇਚਦਾ ਹੋਇਆ ਕਪੜਾ ਬਣਾਇਆ ਕਬੀਰ ਫਟ ਉਹ ਜਿਹੜਾ ਬਾਡੀ ਦਾ ਰੂਪ ਹੈ ਉਹ ਜਿਹੜਾ ਬਣਾਇਆ ਹੈ ਪੈਰਾਂ ਕੋਲ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਰੂਪ ਹੈ ਪੈਰੋਂ ਦਾ ਰੂਪ ਹੈ ਜਿਹੜਾ ਪੈਰ ਦਾ ਰੱਖਿਆ ਹੈ ਉਹ ਰੂਪ ਹੈ ਉਹਦੇ ਬਾਅਦ ਚੀਜ਼ ਬਣਾਈ ਹੈ ਉਹ ਰੂਪ ਅਸਲੀ ਜਿਹੜਾ ਹੁੰਦਾ ਸਰੂਪ ਹੁੰਦਾ ਉਦੇ ਵਾਸਤੇ ਜੋ ਬਣਿਆ ਹੋਈ ਜੀ ਚੀਜ਼ ਉਹ ਜਿਵੇਂ ਤਲਵਾਰ ਦਾ ਬਿਆਨ ਬਣ ਜੇ। ਵਿਆਰ ਉਹ ਨਹੀਂ ਹੋ ਖਮ ਹੋਊਗਾ ਜਿਵੇਂ ਤਲਵਾਰ ਦਾ ਖਮ ਹੋਊਗਾ। ਤਲਵਾਰ ਰੂਪ ਦਾ ਤਲਵਾਰ ਦਾ ਸਰੂਪ ਹੈ, ਵਿਆਰ ਦਾ ਰੂਪ ਹੈ। ਰੂਪਰ ਸਰੂਪ ਤੇ ਹੀ ਫਰਕ ਉਦ। ਉਹਨੇ ਨਾਲ ਉਹ ਹੀ ਚੀਜ਼ ਬਣਾਉਣੀ ਸੀ। ਹੀ ਖਮ ਹੋਵੇ ਤਾਂ ਤਲਵਾਰ ਨਿਕਲਦੀ ਪੈਂਦੀ ਰਹੇ ਉਹਦੇ ਵਿੱਚ। ਆਹੀ ਨਾ ਪਿਤਰ ਮਾਤਾ ਨਾ ਪਿਤਰ ਮਾਤਾ ਸੰਸਾਰ ਨੂੰ ਸ਼ਬਦ ਦਾ ਰੂਪ ਰੂਪ ਉਹ ਤੇਰਾ ਹੈ ਨਾ ਰੂਪ ਰੂਪ ਉਹ ਆਪਣਾ ਰੂਪ ਸ਼ਬਦ ਦਾ ਯਾਰ ਉਹ ਪਾਸ ਰੂਪ ਹੈ ਜਿਹੜਾ ਉਹਨੇ ਪੈਦਾ ਕੀਤਾ ਹੈ ਉਹ ਕੋਮ ਨੇ ਉਹ ਰੂਪ ਹੈ ਜੋ ਕੋਮ ਨੇ ਪੈਦਾ ਕੀਤਾ ਉਹ ਰੂਪ ਹੈ ਜੇ ਨਾਮ ਥਾਮ ਨਹੀਂ ਬਰਗ ਵਿਆਜ ਜੇ ਨਾਮ ਥਾਵ ਨਹੀਂ ਧੋਆ ਕੋਈ ਨਾਮ ਹੈ ਆ ਦੇਖੋ ਨਾਮ ਜਗਾ ਹੋ ਰਹੀ ਐਵੇਂ ਸੱਚਖੰਡ ਅਸੀਂ ਕਹਿ ਦਿੰਦੇ ਹੋਂ ਜੇ ਤੇ ਸੱਚ ਆ ਉਹ ਸੱਚਖੰਡ ਇਹ ਹਦੇ ਸੱਚਾ ਸੱਚਖੰਡ ਬਣ ਗਿਆ ਸੱਚਾ ਨੇ ਹਦੇ ਇਹ ਖੰਡ ਹੁੰਦਾ ਟੁਕੜਾ ਐਸਾ ਸਾਲ ਦੇ ਵਿੱਚ ਕੋਈ ਧਰਤੀ ਦਾ ਟੁਕੜਾ ਕੋਈ ਜਗਾ ਹਰਦਤ ਸੱਚਖੰਡ ਉਹ ਜਿਹੜਾ ਨਹੀਂ ਖੰਡ ਲੱਗ ਸਕਦਾ ਜਿਹੜੀ ਚੀਜ਼ ਕੋਈ ਹੈ ਉਹਨਾਂ ਨਾਲ ਸੁਖ 사ਗਰ ਕਰੇ ਫਿਰ ਸੱਚ ਹੋ ਲਿਖੇਗਾ ਸੁਖ 사ਗਰ ਦੇ ਨਵਾਸ ਕਰਨਾ ਸੱਚਖੰਡ ਆਪਣੇ ਅੰਦਰ ਬੰਨਾ ਹੈ ਉਹ ਹੋ ਜਾਣਾ ਸੱਚਖੰਡ ਹੋ ਜਾਣਾ ਹੈ ਖੰਡ ਦਾ ਟੁਕੜਾ ਹੋ ਜਾਏ ਜੀਦਾ ਉਹ ਜਿਹੜਾ ਸਰਵ ਵਿਆਪੀ ਉਹ ਟੁਕੜਾ ਹੀ ਤਾਂ ਖਾਲਾ ਟੁਕੜਾ ਸਿਰੋ ਜਿਹੜਾ ਘਰ ਸੱਚਖੰਡ ਵਿੱਚ ਵਸਦਾ ਹੈ ਸੱਚ ਜਿੱਥੇ ਸੱਚਾ ਹੀ ਸੱਚਾ ਉੱਥੇ ਵਸਦਾ ਜਾਂਦਾ ਹੈ ਉਧਿਆਣ ਲੜੇ ਮਾਇਆ ਮੋਹੇ ਝੂਠ ਪਸਾਰ ਕੁਛ ਨਹੀਂ ਹੁੰਦਾ ਜਿਹੜਾ ਸੱਚਖੰਡ ਬੜਦਾ ਉਹ ਦਾ ਨਉ ਦਾ ਨਾ ਫਿਰ ਸਾਗਰ ਆਉਂਦਾ ਸਮੁੰਦਰ ਨਹੀਂ ਸਮੁੰਦਰ ਦਾ ਬਾਉਂਡਰੀ ਹੁੰਦੀ ਹੈ ਸਮੁੰਦਰ ਲਿਮਟਿਡ ਹੁੰਦਾ ਸਾਗਰ ਲਿਮਟਿਡ ਹੁੰਦਾ ਸਾਗਰ ਦੀ ਕੋਈ ਮਿਟਰੀ ਇਹ ਸਮੁੰਦਰ ਵੀ ਸਾਗਰ ਕਹਿ ਤੇਰੀ ਦੋ ਆਵੇ ਇਕੱਠੇ ਯਾਨੀ ਸਮੁੰਦਰ ਸਮੁੰਦਰ ਸਾਗਰ ਢੇਰ ਭਇਆ ਜਿੱਦੂ ਤੇ ਸਾਗਰ ਆਇਆ ਨਾ ਤੇ ਤੇ ਉਹ ਗਣਾ ਹਾਰੇ ਤੇ ਲੋਕ ਸੁਧ ਕਹਿਆ ਆ ਗੁਰਬਾਣੀ ਸਮੁੰਦਰ ਹੰਦੀ ਐ ਸਾਦਰ ਲੋਕ ਕਹਿੰਦੇ ਨੇ ਪਰਮੂਖ ਸਾਦਰ ਕਹਿੰਦੇ ਨੇ ਕਿ ਚ ਲੋਕਾਂ ਨੂੰ ਪਤਾ ਨਹੀਂ ਸੀ ਸਾਰੇ ਸਮੁੰਦਰ ਦਾ ਨਾਪ ਤੋਲ ਲਈ ਸੀ ਉਹਨੇ ਸਾਦਰ ਕਹਿਣ ਲੱਗੇ ਉਹ ਤਾਂ ਸਭ ਪਤਾ ਇਹ ਨਾਮ-ਥਾਮ ਨਹੀਂ ਬਦਿਆ ਆ ਨਾਮ ਰਹਿਦਾ ਨਾਮ ਹੈ ਕੋਈ ਅਦਾ ਹੈ ਸੋਗ ਸਾਗਰ ਹੈ ਖਾਂ ਕੋਈ ਨਹੀਂ ਸਰਬ ਵਿਅਕਤੀ ਹੈ ਸਰਬ ਵਿਅਕਤੀ ਆਕੀ ਤਾਂ ਹੁੰਦਾ ਉਹ ਤਾਂ ਇਹ ਵੀ ਦੱਸਿਆ ਹੈ ਕਿ ਨੇ ਜਿਹੜਾ ਕੋਲਾ ਨਾ ਕੋਲਾ ਉਹਦੇ ਤੋਂ ਬਰਗ ਲਖਦੇ ਵਰਤੇ ਨੇ ਜਿਹੜੀ ਭਗਤਾਂ ਦੀ ਕੋਲਾ ਹੈ ਸਾਰਾ ਭਗਤਾਂ ਦਾ ਵਰਗ ਹੈ ਵਰਗੋ ਇੱਕੋ ਅਲੱਗ ਸਬੂਧਾ ਦਾ ਨੌ ਉੱਤਰ ਵਰਗ ਫਰਕ ਤੋਂ ਸਬੂਧਨਾਂ ਭਗਤਾਂ ਦਾ ਵੱਖਰਾ ਵਰਗ ਸੰਸਾਰੀ ਨਹੀਂ ਸੰਸਾਰੀਆਂ ਨਾਲੋਂ ਵੱਖਰਾ ਹੈ ਭਗਤਾਂ ਦਾ ਵਰਗ ਵੱਖਰਾ ਹੈ ਭਗਤਾਂ ਦੇ ਵਰਗ ਦੇ ਵਿੱਚ ਅਪਿਆਸ ਨਹੀਂ ਹੁੰਦਾ ਝਗੜਾ ਨਹੀਂ ਹੁੰਦਾ ਕੋਈ ਝਗੜਾ ਨਹੀਂ ਹੁੰਦਾ ਸੱਚਖੰਡ ਯਾਨੀ ਸੁਖ ਸਾਗਰ 'ਚ ਕੋਈ ਝਗੜਾ ਨਹੀਂ ਕਿਸੇ ਦਾ ਝਗੜੇ ਇੱਥੇ ਵਰਗ ਬਿਆਦ ਹੋ ਰਹੀ ਹੈ ਕਿਆ ਕਹ ਬਤਾ ਦੇ ਬੱਤਾਂ ਦੇ ਘਰੇ ਸੈ ਇਥੇ ਨੇ ਹੱਦਾ ਬਣਿਆ ਦੇ ਮੁਲਕਾਂ ਦੇ ਘਰੇ ਸੈ ਇਥੇ ਨੇ ਉੱਤੇ ਕੋਈ ਵਰਗ ਵਿਆਹ ਨਹੀਂ ਸੱਚੇ ਵਰਗ ਵਿਆਹ ਨਹੀਂ ਨਸਲਾਂ ਦੇ ਧਰਮਾਂ ਦੇ ਇਥੇ ਨੇ ਵਰਗ ਵਿਆਹ ਦੇ ਕੋਈ ਵਰਗ ਨਹੀਂ ਵਿਆਹ ਤਾਂ ਹੁਣ ਕਿਸਾ ਕੇ ਵਰਗ ਹੀ ਨਹੀਂ ਕੋਈ ਵਿਆਦ ਦਾ ਲੰਮ। ਵਰਗ ਨਹੀਂ ਹੈ ਕੋਈ ਵਿਆਦ ਨਹੀਂ ਹੈ ਜਿੱਥੇ ਫਰਕ ਹੋਣ ਇਹ ਉਥੇ ਵਿਆਦ ਰਹੂਗਾ। ਯਾਰ ਕੌਮ ਕਹਿੰਦੇ ਨਾ ਕੌਮ ਤਾਂ ਵਰਗ ਹੈ। ਅਧਿਕ ਵਰਗ ਬਣ ਗਿਆ। ਸੱਚ ਦਾ ਕੋਈ ਵਰਗ ਨਹੀਂ ਕਿਸੇ ਨਾਲ। ਸੱਚੀ ਕੋਈ ਲਿਮਟ ਨਹੀਂ ਹੈ ਹਾਲ ਨਾਲ। ਵਰਗ ਤੇ ਹਾਲ ਨਾਲੇ ਲਿਮਟ ਹੋਊਗੀ। ਬਾਉਂਡਰੀ ਹੋਊਗੀ। ਵਰਗ ਵੀ ਬਾਉਂਡਰੀ। ਸੱਚ ਬਾਉਂਡਰੀ ਲੈਸਰ। ਸਾਜਾ ਕੋਈ ਵਰ ਨਹੀਂ ਲੁੱਟੋ ਜਿਹਨੇ ਹੋਰ ਵਾਰਸ਼ੀ ਜਨੇ ਆ ਕੇ ਬਣੀ ਜੋ ਕੋਈ ਝਗੜਾ ਨਹੀਂ ਸਤਿਆਰਾ ਹੋ ਕੇ ਜੇ ਕੋਈ ਮਿਲ ਜਾਓ ਝੂਠੇ ਨੂੰ ਐਂਟਰੀ ਦਿੰਦੇ ਝੂਠੇ ਦੀ ਐਂਟਰੀ ਐ ਹੈ ਦੀ ਸਤਿਆਰੇ ਸਾਰੇ ਜੇ ਮਿਲ ਜਾਣਾ ਕੋਈ ਝਗੜਾ ਨਹੀਂ ਕੋਈ ਪਰਵਟ ਨਹੀਂ ਹੈ ਏਰੀਆ ਵੀ ਸਾਡੇ ਜਾਈ ਮੁਲਕ ਜਗ੍ਹਾ ਨਹੀਂ ਉੱਤੇ ਖੁੱਲੀ ਜਗ੍ਹਾ ਦੇ ਰੋਗ ਸੋਗ ਨਹੀਂ 70 ਸਾਧ ਰੋਗ ਸੋਗ ਨਹੀਂ ਕੋਈ ਆੜੂ ਨਾ ਕੋਈ ਸ਼ਤਰੂ ਹੈ ਐਸਾ ਸ਼ਤਰੂ ਕੋਈ ਨਹੀਂ ਜਿਹਨੋ ਸਾਧਣ ਆਪਣੇ ਅਨੁਸਾਰ ਕਰਨ ਸਾਰੇ ਉਹਦੇ ਹੁਕਮ ਜਿਹੜੇ ਪਹਿਲਾਂ ਹੀ ਸਾਧਣਾ ਹੁੰਦਾ ਸ਼ਤਰੂ ਨੂੰ ਸਾਧਣਾ ਜਦੋਂ ਕੋਈ ਸ਼ਤਰੂ ਆਉਂਦਾ ਸਾਧਣਾ ਬੋਲਤੇ ਕਿੰਨੇ ਆਉਗਣੇ ਸਾਧਣਾ ਨੇ ਜਿਹੜੇ ਆਉਗਣੇ ਸ਼ਤਰੂ ਨੇ ਸਾਧਣਾ ਸਾਧਨਾ ਮਤਲਬ ਹੁੰਦਾ ਆਪਣੇ ਪੈਰ ਤੇ ਖੜੂ ਹੋਣਾ ਆਪਣੇ ਗੂਗੂਲ ਬਣਾ ਕੇ ਰੱਖ ਲੈਣੇ ਅਡੋਲ ਜਿਹਾ ਖੜੇ ਰਹੀ ਆਖੀ ਦੀ ਹੁੰਨੇ ਰੱਖ ਜੀ ਤਰਾਸ ਬਾਸ ਨਹੀਂ ਦੇ ਹਾਸ ਨਾ ਤਤਰਾਸ ਹਰ ਕੋਈ ਕਿਸੇ ਕਰਮ ਦੀ ਚਿੰਤਾ ਨਾ ਉਹ ਦੇਦਾ ਨਾਸਾ ਨਾ ਕਿਦੇ ਹੋਂ ਦਾ ਖਾਸ ਨਾ ਵਾਸੀ ਹੈ ਵਾਸੀ ਹੈ ਇੱਥੇ ਰਸਦਾ ਤੇਰੀ ਵਸਦਾ ਤਰਾਸ ਵਾਸ ਨਹੀਂ ਦੇ ਨਾ ਦਾਸ ਜੇ ਆਦ ਅੰਤ ਨਹੀਂ ਰੂਪ ਰਾਸ ਦਾ ਉਹਦਾ ਆਦ ਅੰਤ ਦਾ ਰੂਪ ਕਰ ਗਈ ਉਹਦੀ ਦੌਲਤ ਹੈ ਰੂਪ ਇੱਕ ਦੌਲਤ ਉਹਦੀ ਆਪਣੇ ਆਪ ਰੂਪ ਆਪਣੇ ਆਪ ਚ ਦੌਲਤ ਹੁੰਦੀ ਕ੍ਰਿਸ਼ਨ ਉਸ ਗੱਲ ਦਾ ਪ੍ਰੇਮ ਕਰਦੇ ਨੇ ਕਿ ਉਹਦਾ ਰੂਪ ਚ ਬਸ ਰਣੇ ਰੋਪਾ ਪ੍ਰੇਮ ਨਹੀਂ ਕਰਦੇ ਬੱਚਿਆਂ ਦਾ ਰੂਪ ਹੈ ਦੌਲਤ ਹੁੰਦੀ ਹੈ ਫੜੇ ਨੂੰ ਜਦਾ ਲੱਗਦਾ ਇਸਤਰੀ ਦਾ ਰੂਪ ਹੈ ਇਸਤਰੀ ਕੋ ਦੌਲਤ ਹੈ ਲੋਕੋ ਇਸਤਰੀ ਕੋ ਕੋਈ ਦੌਲਤ ਨਹੀਂ ਕਕੇ ਪਿਤਾ ਮਾਤਾ ਹੋਏ ਨੇ ਨਾ ਇੱਥੇ ਇਹ ਪਿਤਾ ਮਾਤਾ ਹੋਏ ਨੇ ਤਾਂ ਰੂਪ ਰਸ ਲੱਗਿਆ ਇੱਕੋ ਹੀ ਯਾਰਾ ਬਾਤ ਬਤਾ ਅਰੇ ਇੱਥੇ ਮਾਤਾ ਪ੍ਰਧਾਨ ਹੈ ਇਹਦੇ ਵਿੱਚ ਰੂਪ ਤਾਂ ਲੱਗਿਆ ਓਰੇ ਹੈ ਜਿਹੜੇ ਜਿਹੜੇ ਦਸੰਗਰਾਂ ਤੇ ਚੱਲਦਾ ਦਸੂਦੇ ਬਾਣੀ ਇਹ ਮਾਤਾ ਪ੍ਰਦਾਨ ਚੱਲਦਾ ਇੱਥੇ ਰੂਪ ਦਾ ਨਾ ਰਾਸਤਾਂ ਲੱਗਿਆ ਔਰਤ ਕੋ ਰੂਪ ਤੇ ਫਿਰ ਕੁਝ ਹੁੰਦਾ ਹੀ ਨਹੀਂ ਅਸੋ ਰੂਪ ਦੀ ਦੌਲਤ ਇਸ ਕਰਕੇ بڑے بڑے ਜਿਹੜੇ ਰਾਜੇ ਸੀ ਬਹੁਤ ਗਰੀਬਾਂ ਦੀਆਂ ਲੜਕੀਆਂ ਜਿਹਨਾਂ ਕੋ ਰੂਪਮੰਤੀਆਂ ਦੀ ਉਹ ਮਹਲੇਂ ਤੇ ਰਾਣੀ ਪਟਰਾੜੀ ਬਣਾ ਦਿੰਦੇ ਸੀ ਰੂਪੇ ਦੌਲਤ ਬਣੀ ਰਹਦੀ ਸੀ ਖੱਲੇ ਰੂਪ دولت عورت ਹੋਰ ਕੁਝ ਵੀ ਇਹਨੂੰ ਨਹੀਂ ਚਾਹੀਦਾ ਇਹ ਦੀ ਡਿਮਾਂਡ ਰੂਪ ਆਤਮ ਦੀ ਡਿਮਾਂਡ ਹੈ ਬੇਸਿਕ ਵਰਕਾ عورت اور ਆਦਮੀ ਦਾ ਆਜ ਮੈਨੂੰ ਪਤਾ ਹੀ ਨਹੀਂ ਹੁੰਦਾ ਵੀ ਚੱਲ ਵੇ ਅੱਜ ਦਸਹਾਰ ਸਜਾ ਲਈਆਂ ਨਾ ਸਜਾ ਲਈ ਕਿਵੇਂ ਸਜਾਈ ਬਾਹਰ ਨੂੰ ਜਾਣ ਲੱਗੇ ਕਿਵੇਂ ਵੀ ਇਹਨਾਂ ਨੇ ਖਾਸ ਸਾਰਾ ਤਾਂ ਨਾ ਧਿਆਨ ਰੁਕਤੇ ਰਹੇ ਰੂਪ ਦੇਖਦੇ ਦੇਖ ਨਾਰੀ ਮੇਲ ਪੜੇ ਪੜ ਪੰਡੰਨ ਫੜ ਸਾਰਾ ਧਿਆਨ ਤੇ ਸਰਦਨ ਇਸ ਕਰਕੇ ਇਹ ਚ ਕਮਜ਼ੋਰੀ ਰੂਪ ਰਾਸ ਰੂਪ ਦੇ ਨਾਲ ਰਾਸ ਤਾਂ ਆਇਆ ਹੈ ਲੱਗਦਾ ਕਿਤੇ ਵੀ ਨਹੀਂ ਆਇਆ ਰੂਪ ਨਾ ਰਾਸ ਹੁਣ ਤੱਕ ਅੰਤ ਨਹੀਂ ਰੂਪ ਰਾਸ ਹਾਂ ਰੂਪ ਰਾਸ ਰਾਸ ਹੁੰਦੀ ਹੈ ਦਲਤ ਜੈਦਾਦ ਵਾਲੀयत ਰਾਸ ਦਾ ਮਤਲਬ ਹੈ ਰਾਸ਼ੀ ਉਹ ਤੇ ਕੋ ਕੀ ਹੈ ਰੂਪ ਦੀ ਦੌਲਤ ਹੁੰਦੀ ਹੈ ਪਰਮੈਸ਼ਰ ਕੋ ਕੋਈ ਅਜਿਹੀ ਦੌਲਤ ਨਹੀਂ ਔਰ ਜਿਹੜੇ ਰੂਪ ਦੌਲਤ ਹੈ ਨਾ ਉਹ ਉਧਰ ਚਾਰ ਦੀ ਹੁੰਦੀ ਹੈ ਇਹ ਵੀ ਨਾਲ ਉਹ ਕਸੂਮਦਾਰ ਰੰਗ ਹੁੰਦਾ ਫੁੱਲ ਦਾ ਰੰਗ ਵਾਂਗੂ ਹੁੰਦਾ ਨਾਸਵੰਤ ਚੀਜ਼ ਰੂਪ ਨਾਸਵੰਤ ਹੈ ਸਰੂਪ ਨਾਸਵੰਤ ਨਹੀਂ ਹੁੰਦਾ ਸਰੂਪੁਰਾ ਸੋਤਰੀ ਹੁੰਦਾ। ਸਰੂਪ ਜੋਤ ਦਾ ਹੀ ਹੁੰਦਾ ਹੈ। ਮਾਇਆ ਦਾ ਰੂਪ ਹੀ ਹੁੰਦਾ। ਮਾਇਆ ਦਾ ਰੂਪ ਹੀ ਹੁੰਦਾ ਹੈ। ਸਰੂਪ ਵੀ ਹੁੰਦਾ ਮਾਇਆ ਦਾ। ਜਿਵੇਂ ਨੂਣ। ਨੂਣ ਦਾ ਜਿਹੜਾ ਖਾਰਾ ਪਾਣਾ ਨਾ ਉਹ ਸਰੂਪ ਹੈ। ਪਰ ਉਹ ਨਾ ਹਸਬ ਨਹੀਂ ਹੁੰਦਾ। ਉਹ ਨੂੰ ਵੀ ਕਹਿਆ ਹੈ। ਜਾਂ ਮੈਂ ਅਮਰਤ ਨੂਣ। ਨੂਣ। ਖਾਰਾ ਪਣ ਸਰੂਪ ਹੁੰਦਾ ਡੜਾ ਜਾਂ ਬਰੀਕ ਪਾਊਡਰ ਇਹ ਰੂਪ ਨਹੀਂ ਉਹ ਤੇ ਉਹ ਤੇ ਚਲਦੇ ਰਹਿੰਦੇ ਨੇ ਬਰੀਕ ਵੀ ਡੜੇ ਵੀ ਹੋ ਜਾਂਦੀ ਪਾਣੀ ਕਿ ਕੁੜ ਗਿਆ ਉਹ ਰੂਪ ਬਦਲ ਗਿਆ ਖਾਰਾ ਪਣ ਜਰੂਗਾ ਚਾਹੇ ਡੜਾ ਹੋਵੇ ਚਾਹੇ ਪਾਣੀ ਹੋਵੇ ਚਾਹੇ ਕੁਝ ਹੋਵੇ ਸਲੂਣਾ ਪਾਣਾ ਜਿਹੜਾ ਉਹ ਦਾ ਰੂਪ ਹੈ ਉਹਦਾ ਟੇਸਟ ਹੈ ਉਹਦਾ ਸਰੂਪ ਹੈ ਸਰੂਪ ਹੈ ਪੱਕੇ ਰੂਪ ਨੇ ਪੜਿਚੋਲੇ ਆਇਆ ਰੋਡ ਦਾ ਹੋਰ ਰੂਪ ਹੈ ਲਿਉਕੜ ਹੋਇਆ ਆ ਪਗੜ ਜਾਂਦਾ ਰੋਡ ਵੀ ਪਗੜ ਜਾਂਦਾ ਪੜਿ ਢਲ ਜਾਂਦਾ ਜਿਵੇਂ ਉਸ ਰਾਂ ਪਿੱਛੇ ਦਾ ਹੋਰ ਰੂਪ ਹੈ ਡਲੀਆਂ ਦਾ ਹੋਰ ਰੂਪ ਹੈ ਡਲੇ ਦਾ ਹੋਰ ਰੂਪ ਹੈ ਜਿਹੜਾ ਉਹਦਾ ਗੋਣਾ ਗੋਣਾ ਗੋਲ ਸਾਲਟ ਉਹ ਪਰਤ ਹੈ ਜਿਹੜਾ ਉਹਦਾ ਸਰੂਪ ਹੈ ਉਹ ਸਰੂਪ ਉਹੀ ਰਹੂਗਾ ਪਾਣੀ ਜਮਲਾ ਲੋਧਾ ਵੀ ਹੋਈ ਹੈ ਇੱਕੋ ਰਹੂਗਾ ਉਹ ਹੀ ਕੋ ਰਹੂਗਾ ਹੋਰ ਹੀ ਬਦਲਦਾ ਜੇਹ ਰੋਗ ਸੋਗ ਨਹੀਂ ਜੋਗ ਯੁਗਤੀ ਜੇ ਰੋਗ ਸੋਗ ਵੀ ਨਾ ਉਹਨ ਕੋਈ ਰੋਗ ਹੈ ਨਾ ਕੋਈ ਸੋਗ ਹੈ ਰੋਗ ਹੀ ਫਿਰ ਸੋਗ ਰਹਿੰਦਾ ਹੀ ਹੈ ਨਾ ਫਿਕਰ ਰਹਿੰਦਾ ਚਿੰਤਾ ਰਹਿੰਦੀ ਰੋਗ ਸੋਗ ਨਹੀਂ ਹੈ ਉਹਨ ਕੋਈ ਉਹਨ ਨੂੰ ਨਹੀਂ ਹੈ ਹੋਵੇ ਦੀ ਰੋਗਨ ਤੇ ਨਾਲ ਜੋਗ ਯੁਗਤੀ ਹੈ ਜੇ ਸੰਸਾਰੀ ਸਰੀਰ ਕੋ ਰੋਗ ਹੋਵੇ ਤਾਂ ਜੋਗ ਜੁਤੀ ਦੀ ਕੀ ਲੋੜ ਹੈ ਉਹ ਜੋਗਾ ਤਾਂ ਹੀ ਬਣਾ ਲਿਆ ਨਾ ਰੋਗਾਂ ਦੇ ਨਾਲ ਗੱਲ ਹੋਰ ਸੀ ਆ ਰੋਗਾਂ ਨਾਲ ਜੋਗਾ ਕਿਉਂ ਜੋੜਿਆ ਰੋਗ ਅਜਲਿਆ ਨਾ ਜੋਗ ਦੀ ਲੋੜ ਹੈ ਬਾਲੇ ਰੋਗ ਨਹੀਂ ਜੋਗੀ ਠੀਕ ਕਰ ਸਕਦਾ ਸਰੀਰ ਦੇ ਰੋਗਾਂ ਨੂੰ ਜੋਗ ਨਹੀਂ ਠੀਕ ਕਰ ਸਕਦਾ ਚੂਡ ਬੋਲਦੇ ਨੇ ਲੋਕ ਇਹ ਜੇ ਗ੍ਰੋਗਾਰੇ ਜੇ ਸਰੀਰ ਗ੍ਰੋਗ ਜੋਗ ਨਾ ਠੀਕ ਹੋਦੇ ਔਰ ਬੇਦ ਵਿਚਾਰ ਵੈਦ ਕਾਦੇ ਲਿਖੀ ਹੈ ਫਿਰ ਜੜੀਆਂ ਬੋਟੀਆਂ ਦਾ ਐਡਾ ਬੜਾ ਚੈਪਟਰ ਉਹਦੇ ਲਿਖਿਆ ਉਹ ਇਹਦੇ ਹਿੰਦੂ ਮਤ ਦਾ ਆਯੁਰਵੈਦ ਬੇਦ ਵਿੱਚ ਲਿਖਿਆ ਹੈ ਆਯੁਰਵੈਦ ਜੇ ਜੋਗ ਨਾ ਰੋਗ ਠੀਕ ਹੋਦੇ ਤਾਂ ਇਡੀਆਂ ਜੜੀਆਂ ਬੋਟੀਆਂ ਦਾ ਵਿਸਤਾਰ ਕਿਉਂ ਲਿਖਿਆ ਆਇਆ ਝੂਲ ਹੋਣਾ ਜਿਹੜਾ ਹਿੰਦੂ ਮਤ ਦੇ ਵਿੱਚ ਸਿੱਧੂ ਮਾਤਾ ਕਹਿੰਦਾ ਝੂਠ ਜਿਹੜਾ ਇਦੂ ਵਾਦਾ ਕਿਸਾ ਹੈ ਜਵੇਂ ਘਾਟਾ ਪੈਣਾ ਵਪਾਰ ਦਾ ਕਿਸਾ ਨੁਕਸਾਨ ਹੋਣਾ ਵਪਾਰ ਦਾ ਹਿੱਸਾ ਹੈ ਨੁਕਸਾਨ ਹੋਣ ਵਾਸਤੇ ਵਪਾਰਸੀ ਕਰਦੇ ਨਹੀਂ ਲਾਭ ਵਾਸਤੇ ਕਰਦੇ ਆ ਪਰ ਨੁਕਸਾਨ ਹੋਣਾ ਇੱਕ ਵਪਾਰ ਦਾ ਹਿੱਸਾ ਹੈ ਜਿਵੇਂ ਝੂਠ ਬੋਲਣਾ ਇਦੂ ਵਾਦਾ ਕਿਸਾ ਹੈ ਜਿਵੇਂ ਵਪਾਰ 'ਚ ਘਾਟਾ ਪੈਂਦਾ ਹੀ ਪੈਂਦਾ ਮਨਵਤਾਨਾ ਤੁਸੀਂ ਮਤ ਨੂੰ ਛੱਡੋ ਜਿੰਨੀਆਂ ਵੀ ਮਨਵਤਾਨ ਨੇ ਟੋਟਲ ਬੇਦਮਤ ਨੂੰ ਛੱਡ ਕੇ ਜਦੋਂ ਬੇਦਮਤ ਤਾਂ ਉਹਦਾ ਹਿੰਦੂ ਨਹੀਂ ਲੱਭਦਾ ਉਹਦਾ ਹਿੰਦੂ ਨਹੀਂ ਸ਼ਾਸਤਰਾਂ ਚ ਲੱਭਦੀ ਹਿੰਦੂ ਤਾਂ ਕੱਲ ਆਇਆ ਲੱਭਦਾ ਹਿੰਦੂ ਦਾ ਗੀਤਾ ਵਿੱਚ ਵੀ ਨਹੀਂ ਹੈ ਹਿੰਦੂ ਦਾ ਕਿਸੇ ਨਾ ਤੇ ਗ੍ਰੰਥ ਵਿੱਚ ਲੱਭਦੇ ਨਹੀਂ ਹੈ ਸਨਾਤਨ ਗੱਤ ਹੈਗੀ ਹੈ ਸਨਾਤਨ ਵਤ ਵੀ ਸਮ੍ਰਿਤੀਆਂ ਦੇ ਬਾਦ ਆਈ ਹੋਈ ਹੈ ਸੂਪਰਤੀ ਸ਼ਾਸਤਰ ਨਾਲ ਵਾਲੇ ਜਦੋਂ ਬੇਦਮਤ ਹੈ ਹਿੰਦੁਸਤਾਨ ਦੇ ਵਿੱਚ ਉਦੋਂ ਵੱਤ ਹੋਰ ਅੱਜ ਵਾਲੀ ਵੱਤ ਹੋਰ ਜਦ ਬਣਤ ਨੇ ਬਾਟ ਪਾੜ ਲਈ ਬਨੂਰੇ ਬਨੂਰੇ ਬਾਟ ਪਾੜੀ ਹੈ ਮਨੂ ਸੂਪਰਤੀ ਬੜੀ ਗਈ ਬਾਟ ਪਾੜ ਲਈ ਬੇਤ ਤੋਂ ਅਲੱਗ ਕਰ ਲਈ ਰਾ ਪਾੜ ਲਿਆ ਉਹਨੋਂ ਤਾਂ ਜਿਹੜੀਆਂ ਮਨਵੱਤਾਂ ਬਣੀਆਂ ਨੇ ਜਿਹੜੀਆਂ ਵੀ ਮਨਵੱਤਾਂ ਨੇ ਉਹ ਝੂੜਤੇ ਹੀ ਖੜੀਆਂ ਨੇ ਬਸ ਸਕਤੀ ਦਾ ਨਾਮ ਆਤਰਿਆ ਉਹਨਾਂ ਚ ਜਿਵੇਂ ਮਿੱਟੀ ਹੈ ਇਹ ਠੀਕ ਹੈ ਗਿੱਲੀ ਕਰਕੇ ਹੀ ਕੋਈ ਮੂਰਤੀ ਬਣੂਗੀ ਜੈਸੀ ਮਿੱਟੀ ਹੈ ਗਿੱਲੀ ਕਰਦੇ ਆ ਤਾਂ ਹੀ ਕੋਈ ਚੀਜ਼ ਉਹਦੇ ਬਣਾਉਂਦੇ ਆ ਨਾ ਇੱਟਾ ਪੱਥਰੀਏ ਕੋਈ ਹੋਰ ਚੀਜ਼ ਬਣਾ ਲੀਏ ਕੰਤ ਕਰ ਲੀਏ ਉਹ ਵੀ ਗਿੱਲੀ ਮਿੱਟੀ ਕਰਦੇ ਨੇ ਥੋੜਾ ਬਥੜਾ ਗਿੱਲੀ ਕਰਦੇ ਹੀ ਨੇ ਲੜੀ ਫਟੇ ਲਾ ਕੇ ਵਿਦਵਾਰ ਕਰਦੇ ਨੇ ਜਾਂ ਕੋਈ ਉਹਦੀ ਚੀਜ਼ ਬਣਾਈਏ ਆਟਾ ਗੱਲਾ ਕਰਕੇ ਰੋਟੀ ਬਣਾਉਂਦੇ ਪਾਣੀ ਤਾਂ ਪਾਉਣਾ ਪਿਆਣਾ ਤੇ ਥੋੜਾ ਪਾਣਾ ਪਰ ਇੰਨਾ ਕਿ ਸੱਚ ਹੁੰਦਾ ਜਿੰਨਾ ਪਾਣੀ ਬਾਅਦ ਵਿੱਚ ਪਾਣੀ ਵੀ ਸੁੱਕ ਜਾਂਦਾ ਗਾਹਾਂ ਜਾ ਕੇ ਜੈਸਾ ਖੀਰ ਸੁਣੋ ਨੇ ਨਾ ਫਿਰ ਗਾਹ ਪਾਣੀ ਵੀ ਨਹੀਂ ਰਹਿੰਦਾ ਫਿਰ ਉਹ ਪਹਿਲਾਂ ਇੰਨਾ ਅਗੇ ਪਾਣੀ ਹੁੰਦਾ ਜਿੰਨਾ ਪਾਣੀ ਪਾਈਦਾ ਨਾ ਆਟੇ ਦੀ ਰੋਟੀ ਆਟਾ ਖਲਣ ਵੇਲੇ ਪਾਣੀ ਜ਼ਿਆਦਾ ਹੁੰਦਾ ਸਟਾਰਟ ਵਿੱਚ ਪਾਣੀ ਹੈ ਇਹਨਾਂ ਦੇ ਵਿੱਚ ਤੇ ਪਰਮੇਸ਼ਰ ਇੱਕ ਹੈ ਸਰਬਵਿਆਪੀ ਹੈ ਇਹ ਸਟਾਰਟ ਵਿੱਚ ਤਾਂ ਗੱਲਾਂ ਕਹਿੰਦਾ ਨੇ ਬਾਕੀ ਸਾਹਿਬ ਫਿਰ ਝੂਠੇ ਝੂਠ ਹੋ ਜਾਂਦੇ ਰਾਹ ਜਾ ਕੇ ਫਿਰ ਇਹ ਮਾਮੂਲੀ ਰਾਜਾ ਦਾ ਸੱਚ ਕਿਤੇ ਵਿੱਚ ਬਾਕੀ ਨਹੀਂ ਨਾ ਮਨਮਤਾ ਦਾ ਬੇਜਰਪੁਰ ਸਭ ਝੂਠ ਹੈ ਬੇਦਮਤ ਵਿੱਚ ਗੁਰਮਤ ਵਿੱਚ ਝੂਠ ਵਾਸਤੇ ਕੋਈ ਜਗ੍ਹਾ ਹੀ ਨਹੀਂ ਕੋਈ ਜਗ੍ਹਾ ਨਹੀਂ ਝੂਠ ਵਾਸਤੇ ਹਵਾ ਜ਼ਮਾਨ ਵੀ ਜਗ੍ਹਾ ਨਹੀਂ ਝੂਠ ਵਾਸਤੇ ਜਲਵੇਂ ਲੈਣਾ ਪਊਗਾ ਤੂੰ ਜੇ ਰਤੀ ਮਸਾ ਰਹਿ ਗਿਆ ਨਾ ਉਹ ਝੂਠ ਪਰ ਜਾਰ ਫਿਰਣਾ ਨਹੀਂ ਪਊਗਾ ਜੇ ਰੋਗ ਸੋਗ ਨਹੀਂ ਜੋਗ-ਜੁਗਤੀ ਜੋਗ-ਜੋਗ ਜਾਰ ਹੋਗੇ ਨਹੀਂ ਜੋਗ-ਜੁਗਤੀ ਕਿ ਲੋੜ ਜੋ ਜੁਤੀ ਰੋਗੀ ਨੂੰ ਲੋੜ ਹੈ ਜਿਹੜੇ ਸਮਾਧੀ ਲਾਉਂਦੇ ਨੇ ਮਾਲਾ ਫੇਰਦੇ ਨੇ ਜਿੰਨਾ ਚਿਰ ਯੋਗ ਦੀ ਯੁਗਤੀ ਪੜਹਾਉਂਦਾ ਨਾ ਭਗਤੀ ਕਰਦਾ ਉਹਨਾਂ ਜਿਹੜੇ ਰੋਗੀ ਹੈਗਾ ਇਹ ਵਰਬ ਗਿਆਨੀ ਵੀ ਕਹੋਣਾ ਮਾਲਾ ਵੀ ਫੇਰਦਾ ਪੂਰਖਾ ਬੰਨਣ ਵਾਲੇ ਉਦੋਂ ਮਹਾਪੂਰਖ ਨੇ ਓਏ ਉਹਦਾ ਆਪਣਾ ਰੋਗ ਦਾ ਇਲਾਜ ਕਰ ਰਿਹਾ ਸਮਾਧੀ ਲਾ ਲਾ ਕੇ ਤੁਸੀਂ ਕਹਿੰਦੇ ਹੋ ਮਰ ਪੂਜਨੀ ਹੈ ਹਾਂ ਇਹ ਗੱਲ ਵੀ ਤੁਸੀਂ ਆਪਣਾ ਇਲਾਜ ਕਰ ਨਹੀਂ ਉਹ ਕਰ ਰਹੇ ਉਹ ਦਾਖਲਾ ਹਸਪਤਾਲ ਚ ਹੋਇਆ ਹੋਇਆ। ਤੁਸੀਂ ਦਾਖਲ ਹੋਏ ਨਹੀਂ ਹੋਏ। ਹੋ ਸਕਦਾ ਤੁਹਾਡੇ ਰੋਗ ਘੱਟ ਹੋਵੇ ਉਹਦੇ ਨੂੰ। ਉਹਦੇ ਚ ਹੋਵੇ ਜਲ। ਕਈ ਵਾਰ ਰੋਗੀ ਦੀ ਹਾਲਤ ਬਿਗੜ ਜਾਂਦੀ ਹਸਪਤਾਲ ਚ ਵੀ ਜਾ ਕੇ ਡਾਕਟਰ ਜੇ ਜ਼ੋਰ ਲਾਈ ਜਾਣ। ਥੋੜੇ ਰੋਗੀ ਜਾਂਦੇ ਨੇ ਜਿਆਦਾ ਬਿਮਾਰ ਹੋ ਜਾਂਦੇ ਨੇ। ਹਾਂਜੀ। ਜਿਹੜੇ ਜੋਗ ਜੋਗਨ ਦੇ ਵਿੱਚ ਲੱਗੇ ਹੋਏ ਨੇ ਉਹ ਰੋਗੀ ਨੇ ਸਾਰੇ ਹੀ ਸਾਰੇ ਜੋਗੀ ਨੇ ਚੇਤਰਾਸ ਆ ਨਹੀਂ ਭੂਮਿਕ ਭੁਗਤੀ ਜਿਹੜਾ ਜੋਗੀ ਹੋ ਗਿਆ ਜੋਗ ਜਿਹੜਾ ਜੁੜ ਗਿਆ ਉਹ ਜੁੜ ਗਿਆ ਉਹ ਜੋਗ ਉਹ ਦਿਲ ਹੋੜਦੀ ਹੁੰਦੀ ਲੋਗ ਰਹੱਤ ਮੇਰਾ ਸਤਗੁਰ ਜੋਗੀ ਜੋਗੀ ਉਹ ਜੋਗੀ ਉਹ ਹੈ ਜਿਹੜਾ ਜੁੜ ਚੁੱਕਿਆ ਜੋਗੀ ਉਹ ਨਹੀਂ ਹੈ ਜੋ ਜਿਹੜਾ ਜੋਗ ਸਾਧਨਾ ਕਰ ਰਿਹਾ ਜੋ ਕਸਨਾ ਵਾਲੇ ਨੂੰ ਹੀ ਜੋਗੀ ਕਹਤਾ ਹੈ ਗਲਤੀ ਸੀ ਸ਼ਾਂਤੀਆ ਜੋ ਬਲੀਨੀ ਸੰਤ ਕੱਪੜੇ ਪਾ ਕੇ ਬਣ ਗਿਆ ਗਲਤੀ ਸੀ ਸੰਤ ਨਹੀਂ ਹੁੰਦਾ ਖਾਲਸਾ ਬਾਣਾ ਪਾ ਕੇ ਬਣ ਗਿਆ ਪੌੜ ਸ਼ੱਕ ਇਹ ਵੀ ਗੱਲ ਗਲਤ ਹੈ ਖਾਲਸਾ ਨਹੀਂ ਬਣ ਸਕਦਾ ਜਿੰਨਾ ਜਿਹੜੇ ਹਿਰਦੇ ਵਿੱਚ ਪਰਮਾ ਜਾ ਕੇ ਹਰਦੇ ਪਰਬਣਾ ਹੋਏ ਕੌਣ ਉਹਨੂੰ ਚਾਹੀਦਾ ਹਰਸਾ ਜੀ ਦੇ ਹਿਰਦੇ ਚ ਪਰਬਣਾ ਹੋਵੇ ਵਰਨਾ ਖਾਲਸਾ ਨਹੀਂ ਇਹ ਤੇ ਹਥ ਕੁਦੋਂ ਖਾਲਸੇ ਬਣੇ ਫਿਰਦੇ ਨੇ ਪਤਾ ਹੀ ਨਹੀਂ ਗੱਲ ਦਾ ਗੱਲ ਕੀ ਹੈ ਮਤਲਬ ਹੈ ਕੋਈ ਨਹੀਂ ਜਿਵੇਂ ਉਹ ਕਰਦੇ ਸੀ ਨਾ ਉਹਨਾਂ ਨੂੰ ਉਹ ਅਸੀਂ ਕਰ ਲ ਗਏ ਸਿੱਖੀ ਦਾ ਪਤਾ ਕੋਈ ਨਹੀਂ ਸਿੱਖ ਘੋੜ ਲਗੇ ਮੁਸਲਮਾਨ ਧਰਮ ਦਾ ਗਿਆਨ ਕੋਈ ਨਹੀਂ ਸੀ ਕੁਰਾਨ ਨੂੰ ਬੁਰਾ ਕੋਈ ਨਹੀਂ ਸੀ ਮੁਸਲਮਾਨ ਕਹਣ ਲੱਗੇ ਸੀ ਉਹਨਾਂ ਨੇ ਉਂਗਲੀ ਉਠਾਈ ਮੁਸਲਮਾਨ ਕਹਾ ਬੜਾ ਪਰ ਅੱਜ ਜੇ ਸਾਡੇ ਗੱਲ ਨੂੰ ਵੱਲ ਨੂੰ ਕੋਈ ਉਂਗਲੀ ਕਰੇ ਫਿਰ ਕੀ ਜਵਾਬ ਹੈ ਅੱਜ ਅੱਜ ਵੀ ਸਾਡਾ ਵੀ ਤਾਂ ਹਿਆਲ ਹੈ ਜੋ ਮੁਸਲਮਾਨਾਂ ਦਾ ਸੀ ਉਹਨਾਂ ਦੇ ਦਾਰਮ ਦੇ ਵਿੱਚ ਮਾੜੀ ਮੋਟੀ ਖੋੜ ਸੀ ਸਾਡੇ ਦਾ ਖੋਟੇ ਨਹੀਂ ਹੈ ਗੁਰੂ ਉਹਨਾਂ ਨੇ ਵੀ ਤਾਂ ਮਾੜੀ ਮੋਟੀ ਕਮੀ ਹੈ ਖੋੜ ਤਾਂ ਨਹੀਂ ਹੈ ਕੋੜ ਤਾਂ ਨਹੀਂ ਕਹਿ ਸਕਦੇ ਕਬੀ ਹੈ ਉਹਦੇ ਵਿੱਚ ਕਿਉਂ ਤੇ ਜੋ ਆਦਮ ਦਾ ਗਿਆਨ ਸ਼ੁਰੂ ਨਹੀਂ ਕੀਤਾ ਚੈਪਟਰ ਉਹਦੇ ਆਦਮ ਗਿਆਨ ਦੇ ਕਾਬਿਲ ਆਦਮ ਨੂੰ ਜ਼ਰੂਰ ਬਣਾਇਆ ਇਹ ਗੈਰ ਆਦਮੀ ਜਪਣਾਤਾ ਪਰ ਆਦਮ ਗਿਆਨੀ ਨਹੀਂ ਬਣਾ ਸਕਿਆ ਆਦਮ ਗਿਆਨੀ ਨਹੀਂ ਦਿੱਤਾ ਜੀ ਉੱਥੇ ਇਹ ਕਬੀ ਸੀ ਉੱਥੇ ਸਾਡੇ ਇਹਦੇ ਸਭ ਕੋ ਜਾ ਤਾਂ ਕੁਝ ਨਹੀਂ ਕੰਮ ਲਗਾਉਣਾ ਜਿੰਨਾ ਉਹਨੂੰ ਗਿਆਨ ਦਿੱਤਾ ਉਹ ਤਾਂ ਪਤਾ ਹੈ। ਅਸੀਂ ਤਾਂ ਦੰਦੇ ਕੁਝ ਨਹੀਂ ਕਰ ਸਾਨੂੰ। ਨਾ ਸਾਡਾ ਬੁੱਧਾ ਹੈ, ਬੁੱਧਾ ਵੀ ਨਹੀਂ ਰਿਹਾ ਤਰਬੂ। ਤਰਮੋਦਾਨੇਰਾ, ਤਰਮਹਾ ਰਾਜਨੀਤੀ। ਬਸ ਬੁੱਧਾ। ਉਹਦਾ ਰਾਜਨੀਤੀ ਹੈ। ਰੌਲਾ ਸਿੱਖੀ ਦਾ। ਸਿੱਖੀ ਦਾ ਤਾਂ ਰੌਲਾ ਹੀ ਰੌਲਾ ਹੈ। ਬੁੱਧਾ ਨਹੀਂ ਹੈ ਸਿੱਖੀ। ਸਿਕਾਇ ਦੀ ਪ੍ਰਾਪਤੀ ਦਾ ਮੁੱਦਾ ਨਹੀਂ ਹੈ ਕਰਮਾਤੀ ਪ੍ਰਾਪਤੀ ਮੁੱਦਾ ਨਹੀਂ ਹੈ ਸਾਡਾ ਉਧਾ ਰਾਜਨੀਤੀ ਹੈ ਰਾਵੜਾ ਸਿੱਖੀ ਦਾ ਰਾਵੜਾ ਹੋ ਰਿਹਾ ਮੁੱਦਾ ਹੋ ਰਿਹਾ ਜਿਹੇ ਤਰਾਸ ਆਸ ਨਹੀਂ ਭੂਮ ਭੁਗਤੀ ਜਿਹੇ ਤਰਾਸ ਆਸ ਨਹੀਂ ਭੂ ਭੁਗਤ ਤ ਤਰਾਸ ਹੈ ਡਾਰੇ ਭੈ ਨਾ ਕੋਈ ਸੰਸਾਰੀ ਜਿਹੜੇ ਪਦਾਰਥ ਦੇ ਨਾਲ ਦੀ ਭੁੱਖ ਹੈ ਸੰਸਾਰੀ ਪਦਾਰਥਾਂ ਦੀ ਕੋਈ ਭੁੱਖ ਨਹੀਂ ਹੈ ਜੇ ਸੰਸਾਰੀ ਪਦਾਰਥਾਂ ਦੀ ਭੁੱਖ ਹੈ ਉਹ ਸਿੱਖ ਨਹੀਂ ਹੈ ਸੰਸਾਰੀ ਪਦਾਰਥਾਂ ਦੀ ਲੋੜ ਹੈ ਭੁੱਖ ਨਹੀਂ ਹੈ ਭੁੱਖੋਂ ਲੋੜ 'ਚ ਫਰਕ ਹੈ ਲੋੜ ਹੈ ਉਹ ਵੀ ਸ਼ਰੀਰ ਤੱਕ ਸ਼ਰੀਰ ਨੂੰ ਇਹ ਜਿਹੜਾ ਸ਼ਰੀਰ ਦਾ ਰੀਤ ਹੈ आई रीति जात रीत जात ਰੀਤ राज रीत ए रीत है प्रवेश नहीं बनाई थी ना रीता शरीर दी माया थी शरीर दी गुर भूख में अस लगती है लखूंगी उदी पूर्ति कर ली है पर लोड है जद भूख बनजू वे मान लो कि बनजू जाके ਕਿ ਭੁੱਖ ਬਣ ਗਈ ਫਿਰ ਫਲੂ ਜਾਂ ਜਪੜੂ ਗਈ ਉਹ ਰੋਗ। ਸ਼ਰੀਰ ਦੀ ਲੋੜ ਨਾ ਹੋ ਕੇ ਮਨ ਦੀ ਭੁੱਖ ਬਣ ਗਈ ਉਹ ਰੋਗ ਐ। ਜੇ ਸ਼ਰੀਰ ਦੀ ਲੋੜ ਤੋਂ ਗਾਹਾਂ ਮਨ ਦੀ ਭੁੱਖ ਬਣ ਗਈ ਨਾ ਮਾਇਆ ਤੇ ਬਦਾਰਸ ਉਹ ਰੋਗ ਵੱਡ ਜਾਊਗਾ ਉੱਥੇ ਜਾ ਕੇ ਰੋਗ ਵੱਡ ਜਾਊ। ਸ਼ਰੀਰ ਤੱਕ ਕੋਈ ਰੋਗ ਨਹੀਂ। ਸ਼ਰੀਰ ਦੀ ਲੋੜ ਤੱਕ ਕੋਈ ਰੋਗ ਨਹੀਂ ਉਦੋਂ ਗਾਹਾਂ ਗਿਆ ਰੋਗ ਵੱਡ ਜਾਊਗਾ ਕੈਂਸਰ ਵਾਂਗੂ ਛੜਾਂ। ਖਾਰ ਦੇ ਫੈਲ ਗਿਆ ਜਾ ਕੇ ਇੱਕ ਤਾਂ ਉੱタル ਕਬੜੀ ਕਬੜੀ ਹੈ ਜੋ ਉਹਨਾਂ ਕੱਢ ਦੇਵੇ ਇੱਕ ਹਾਰ ਤੱਕ ਫੈਲ ਗਿਆ ਜਾ ਕੇ ਉਹਦਾ ਇਲਾਜ ਫਿਰ ਔਖਾ ਹੈ ਰਾਜ ਤਾਂ ਉਹਦਾ ਵੀ ਨਹੀਂ ਭੂਮੀ ਭੁਗਤੀ ਭੂ ਭੁਗਤੋਂ ਸੰਸਾਰੀ ਪਦਾਰਥ ਭੂਪ ਦੇ ਪੈਦਾ ਹੁੰਦੇ ਧਰਤੀ ਦੇ ਪਦਾਰਥ ਇਹਦੇ ਖਾਣ ਦੀ ਭੁੱਖ ਕਿਸੇ ਚੀਜ਼ ਦੀ ਲੋੜ ਲੋੜ ਹੈ ਭੁਖਰੀ ਦਾ ਇਹਦੀ ਇਹਨਾਂ ਨੂੰ ਭੁੱਖਾ ਤੋਂ ਤਨਰ ਪਹੁੰਚਾ ਤਰ ਬਹਿਰਾ ਤੇ ਉਸ ਕਾ ਬੂਆ ਜਗਤ ਕਰ ਕੇ ਰਹਾ ਇਸ ਨੂੰ ਕਹ ਰਿਹਾ ਜਿਹਨੂੰ ਭੂਮ ਦੇ ਭੁੱਖਾ ਹੈ ਕਿਸੇ ਦੀ ਉੱਡ ਚੰਦ ਤੇ ਜਾਂਦਾ ਨਹੀਂ ਮੈਂ ਉੱਥੇ ਪਹਿਲੇ ਜੰਡੇ ਆਪਣੇ ਕੱਢ ਲਓ ਹੋਰ ਚਲੇ ਜਾਣਗੇ ਕੈ ਵੀ ਨਹੀਂ ਪਤਾ ਵੇ ਤੋੜਣ ਲੱਗੇ ਰਾਜੇ ਮਰ ਮੁਰਜਲ ਬਤਾਇਓ ਰਹੀ ਹੈ ਉੜ ਕੇ ਆਉਣ ਕਰੀ ਹੁਣ ਜੇ ਕਾਲ ਬਿਆਲ ਨਾ ਅੰਗ ਜੇ ਕਾਲ ਬਿਆਲ ਕਟਿਓ ਲੋਕ ਕਾਲ ਬਿਆਲ ਕੀ ਦੇਖੋ ਬਿਆਲ ਨੂੰ ਇਹਨਾਂ ਨੇ ਸੱਪ ਲਿਖਿਆ ਹੋਇਆ ਲਿਖਿਆ ਹੋਇਆ ਠੀਕ ਹੈ ਸਭ ਪਰ ਉਹ ਜ਼ਬਾਨਾ ਪਰ ਨੂੰ ਜ਼ਬ ਕਿਆ ਹੋਇਆ ਜਿਹੜਾ ਮਨਮੁਖ ਹੈ ਨਾ ਤਖੜਾ ਬਹੁਤਾ ਮਨਮੁਖ ਹੈ ਉਹ ਨੂੰ ਨਾ ਕਿਹਾ ਨਾਗ ਮਨਵਤ ਦਈ ਨਾ ਨਾਗ ਮਤ ਮਨ ਜਾਣੀ अंग ਆਂਗਰੀ कट सकता ਕਾਲ बयाल. ਕਾਲ ਦੀ ਆਕਾਲ ਕਲਪਨਾ ਜਿਹਦਾ ਮਨ ਇਨਾ ਟੈਨਡ ਕੀਤਾ ਹੋਇਆ ਕਾਬੂ ਚ ਹੈ ਕਿ ਉਹਦਾ ਜਿਹੜਾ ਅਸਲ ਅਡੋਲ ਅਸਲ ਨੂੰ ਮਨ ਭੰਗ ਨਹੀਂ ਕਰ ਸਕਦਾ ਉਹਦੀ ਬਿਰਤੀ ਨੂੰ ਮਨ ਭੰਗ ਨਹੀਂ ਕਰ ਸਕਦਾ ਘਟਿਓ ਨਾ ਆਂ ਘਾਪੇ ਕਟੂਗਾ ਸਵਾਇਤਾ ਆਪਣੀ ਪਾਵਰ ਇਸਤੇਮਾਲ ਨਹੀਂ ਕਰ ਸਕਦਾ ਬੰਦੇ ਉੱਤੇ ਇਨਾ ਬੋਝ ਹੈ ਤੈਨੂੰ ਮਿਲੂ ਪੀਣਾ ਬਣਾਵਾ ਹੈ ਲੋੜ ਲੋਗਾ ਹੈ ਨਹੀਂ ਨਹੀਂ ਨਹੀਂ ਸਕਦਾ ਉਹ ਪਟਾਰੀ 'ਚ ਰਹਿੰਦਾ ਸਭ ਵਾਰ ਪਟਾਰੀ 'ਚ ਵਾਰ ਕੱਢਾਂਗੇ ਤਾਂ ਹੀ ਅਜਿਹਾ ਬੰਦਾ ਬਾਹਰ ਉੱਡਦਾ ਹੈ ਗੜਬੜ ਕਰੂਗਾ ਜਿਹੜਾ ਪਟਾਰੀ 'ਚ ਰਹਿੰਦਾ ਉਹ ਵਿਚਾਰਾ ਕੀ ਕਰੂਗਾ ਤਾਫ ਔਖਾ ਉੱਥੇ ਅਸ਼ੈਸ ਰੂਪ ਅਖੈ ਅਪੰਗ ਇਸ ਕਰਕੇ ਇਹ ਸ਼ੈਸ ਰੂਪ ਹੈ ਉਹ ਕਿਉਂਕਿ ਮਨ ਉਹ ਵਿਚਲੇਤ ਨਹੀਂ ਕਰਦਾ ਬਣ ਘੜਵੜ ਨਹੀਂ ਕਰਦਾ ਇਸ ਕਰਕੇ ਉਹ ਸਰੂਪ ਹੈ ਜਿਹੜਾ ਡੋਲ ਰਹਿੰਦਾ ਡੋਲਦਾ ਨਹੀਂ ਹੈ ਅਪੰਗ ਅਪੰਗ ਰਹਿੰਦਾ ਗੁਮਾਨ ਨਹੀਂ ਕਰਨਾ ਮਨੇ ਬਗੋੜ ਬਣ ਬਾਹਰ ਆਉ ਬਟਾਰੀ ਤੋਂ ਤਾਂ ਹੀ ਅਡੋ ਜੇ ਪਟਾਈ ਤੋਂ ਕੱਢ ਨਿਕਲਣ ਨਹੀਂ ਦੇਣਾ ਬਾਹਰ ਜਿਉਂਗੇ ਤੇ ਐਨਾ ਮਜ਼ਬੂਤੀ ਨਾਲ ਭਰਿਆ ਹੈ ਮਨ ਜਾਇ ਨਹੀਂ ਦਰਦ ਅਰੇ ਤੇ ਦੇਖ ਲਿਆ ਮਨ ਜਾ ਕੇ ਬਾਹਰ ਇਹ ਕੀ ਲਿਆ ਮਨਾ ਫੇ ਨਹੀਂ ਜਾਂਦਾ ਉਹਨੇ ਦੇਖ ਜਾਂਦਾ ਵਾਹਲਾ ਜਹਨੇਤ ਜਿਹਨੂੰ ਨੇਤ ਨੇਤ ਬੇਦ ਜਿਹੜੇ ਸਾਰੇ ਨੇਤ ਨੇਤ ਕਹਿੰਦੇ ਨੇ ਵੇਦੁਰਤਨ ਗਿਆਨਵਾਨ ਆਦਮੀ ਉਚਰੰਤ ਬੇਦ ਬੇਦ ਬਹੁ ਬਚਨ ਜਿਨ ਸਾਰੇ ਗਿਆਨਵਾਨ ਆਦਮੀ ਰੋਜ ਦੇਤ ਨੇ ਇਤ ਕਹਿੰਦੇ ਨੇ ਬੇਅੰਤ ਬੇਅੰਤ ਕਹਿੰਦੇ ਸਹੀ ਉਹ ਬੇਅੰਤ ਜਿਹੜੇ ਅਲਖ ਰੂਪ ਕਥੰਤ ਕਤੇਵ ਕਤੇਵ ਦੇਖੋ ਅਲਖ ਇਹ ਲਫਜ਼ ਆਇਆ ਕਤੇਵ ਜੋ ਆਇਆ ਹੈ ਅਲਖ ਲਫਜ਼ ਆਇਆ ਹੈ ਨਾ ਇਹ ਕਤੇਵ ਵਿੱਚ ਆਇਆ ਹੈ ਕਤੇ ਕੋ ਰਾਤ ਚ ਆਇਆ ਹੋਇਆ ਉਹ ਜੋਗੀ ਸੀ ਅਲਖ ਰੱਜਣ ਕਹਿੰਦੇ ਸੀ ਉਹ ਕਹਿੰਦੇ ਸੀ ਜੋਗੀ ਮੁਸਲਮਾਨ ਦਾ ਇਹ ਰਲਿਆ ਬਲਿਆ ਸੀ ਨਾ ਪਿਉ ਹੋਈ ਮੁਸਲਮਾਨ ਵਸਤ ਦੀ ਜੋਗੀਆਂ ਤੇ ਉਹ ਰਾਤ ਖਾਏ ਨੇ ਰਾਤ ਉਹਨੂੰ ਕਹਿੰਦੇ ਸੀ ਉਹ ਅਲਖ ਰੱਜਣ ਕਹਿੰਦੇ ਸੀ ਅਲਖ ਅਲਖ ਜਗ੍ਹਾਉਂਦੇ ਸੀ ਜਾ ਕੇ ਕਤੇ ਉਹ ਅਲਖ ਕਹਿੰਦੀ ਹੈ ਵੀ ਦੇਖਦਾ ਨਹੀਂ ਹੈ ਕਦੇ ਬੋਲਣ ਦੀ ਹੈ ਬਿਉਦਾ ਰੂਪ ਅਲਖ ਹੈ ਪਰ ਉਹ ਕੀ ਹੈ ਇਹ ਨਹੀਂ ਕਹਿੰਦੀ ਕਿਤੇ ਇਹ ਤਾਂ ਬੋਲਣ ਦੀ ਹੈ ਕਿ ਦੇਵ ਕੀ ਹੈ ਉਹ ਹੈ ਕੀ ਉਹਦੇ ਬਾਰੇ ਗੱਲ ਨਹੀਂ ਕਰਾਉਂਦੇ ਇਹ ਤਾਂ ਸਾਰੇ ਕਹਿੰਦੇ ਨੇ ਉਹਦਾ ਰੂਪ ਦਾ ਸੰਕਲਨ ਕਰਨਾ ਹੋਰ ਗੱਲ ਹੈ ਅਲਖ ਮੰਨ ਲੈਣਾ ਹੋਰ ਗੱਲ ਹੈ ਸੁਣ ਕੇ ਜੇ ਅਲਖ ਰੂਪ ਆਸਨ ਅਡੋਰ ਉਹ ਲਖ ਰੂਪ ਹੈ ਜੀ ਦਾ ਉਹ ਰੋਲ ਹਸਣ ਵੀ ਰੋਲ ਹੈ ਆਸਣਾ ਰੋਲ ਹੋਣਾ ਜ਼ਰੂਰੀ ਨਹੀਂ ਹੈ ਅਲੱਖ ਰੂਪ ਦਾ ਅਲੱਖ ਦਾ ਸਾਡਾ ਮਨ ਵੀ ਹੈ ਬੜੇ ਬਣਾ ਨੇ ਤਨ ਵਿੱਚੋਂ ਮੰਦੀ ਖੋਜੇ ਆਪਣੇ ਮਨ ਆਪੇ ਖੋਜ ਲਈ ਹੋਇਆ ਤੇ ਅਲੱਖ ਨਹੀਂ ਆਵਨ ਫਿਰ ਆਤਮਾ ਨਿਕਲ ਕੇ ਜਾਂਦੀ ਹੈ ਕਿਸੇ ਨੇ ਦੇਖੀ ਹੈ ਅਲਖੇ ਹੈ ਫਿਰ ਆਤਮਾ ਵੀ ਦਾ ਹੈ ਆਤਮਾ ਨੂੰ ਸਮਝਣ ਕਉ ਦਸਰਤ ਮਕੀ ਕਿਵੇਂ ਜੁੜੀ ਹੋਈ ਹੈ ਸਰੀਰ ਤੋਂ ਇਹ ਛੱਡ ਦੇ ਜੋੜ ਕੇ ਰੱਖ ਕੇ ਦਿਖਾਉਂ ਡਾਕਟਰ ਕੋਈ ਕੋਈ ਰੱਖ ਕੇ ਦਿਖਾਵੇ ਇਹ ਜੋੜ ਕੇ ਅਮਿਤ ਤੇਜ ਅਛੈ ਅਤੋਲ ਅਮਿਤ ਤੇਜ ਹੈ ਲੋ ਤੇਜ ਕਿਨ ਜਿਹੜਾ ਬਿੜਤੀ ਤੋਂ ਪਰੇ ਹੋਵੇ ਉਹਨੂੰ ਅਵਿਪਤ ਕਹਿੰਦੇ ਮਿਣਿਆ ਨਾ ਜਾ ਸਕੇ ਇੱਕ ਤਾਂ ਹੁੰਦਾ ਅਤੁੱਲ ਉਹ ਤੋਲਿਆ ਨਹੀਂ ਜਾ ਸਕਦਾ ਜਿਹੜਾ ਨਾਪਿਆ ਨਹੀਂ ਜਾ ਸਕਦਾ ਉਹਨੂੰ ਅਵਿਪਤ ਕਹਿੰਦੇ ਇੱਕ ਹੁੰਦਾ ਨਾਪੇ ਖੁੰਦਾ ਤੋਲ ਜੇ ਤੋਲ ਹੀ ਹੁੰਦਾ ਤੋ ਲੈ ਜਿਹੜਾ ਨਾਪ ਵੀ ਹੁੰਦਾ ਅਵਿਪਤ ਨਾਪ ਤੋਲੇ ਹੁੰਦਾ ਨਾ ਰੱਪਾਂ ਕਿਹਦੇ ਭਾਂਡੇ ਚ ਪਾ ਕੇ ਤੋਲਾਂ ਦੇ ਤਖੜੀ ਤੇ ਝੜ ਕੇ ਵੱਟੇ ਨਾਲ ਬੇਤਹੁਦਾ ਨਾਪ ਤੋਂ ਪਰੇ ਐ ਨਾ ਪਿਆਰੀ ਜਾ ਸਕਦਾ ਕੋਈ ਐਡਾ ਭਾਂਡਾ ਹੋਵੇ ਦਾ ਨਾਪੇਉ ਤਾ ਪੇਗਾ ਚ ਪਾ ਕੇ ਸੁੰਦਲਾ ਪਾੜੀ ਕਰਨਾ ਪੂ ਕਬਲ ਖਾਇ ਤੇ ਨਾ ਪਾ ਤੋਲ ਅਛਾ ਨਾ ਅਛਾ ਐ ਉਹ ਜਰਾਰਾ ਹੋ ਤੋ ਪਰੇ ਅਛਾ ਹੁੰਦਾ ਜਿਹਦੀ ਜੋ ਜੋ ਤਾਂ ਘਟਦੀ ਦੀ ਹੈ ਤੋਲੇ ਤੋਲੇ ਤੋਲੇ ਲੈ ਜਾ ਸਕਦਾ। ਬਿੱਤ ਹੈ, ਅਤੋਲ ਵੀ ਤੋਲ ਅਤੋਲ ਤੋਲੇ ਲੈ ਜਾ ਸਕਦਾ, ਬਿੱਤ ਨਾ ਪੈ ਨਹੀਂ ਜਾ ਸਕਦਾ। ਛੈ ਵੀ ਹੈ। ਔਰ ਉਹਨੇ ਘਟਣਾ ਵੀ ਹੈ ਦੀ। ਨਾ ਘਟਣਾ ਹੈ ਨਾ ਤੋਲੇ ਜਾ ਸਕਦਾ, ਨਾ ਨਾ ਪੈ ਜਾ ਸਕਦਾ। ਜਿਹੇ ਧਿਆਨ ਕਾਜ ਮੁਨੀ ਜਨ ਅਨੰਤਸ। ਅਸਰਵ ਮੁਨੀ ਜਨ ਬਿਆਨ ਤੋਂ ਧਿਆਨ ਕਾਜ ਲੱਗੇ ਰਹਿੰਦੇ ਨੇ ਧਿਆਨ ਧਰ ਕੇ। ਜੋ ਹੈ ਕੀ ਇਹ ਸਭ ਜਣੂ ਲੱਗੇ ਰਹਿੰਦੇ ਨੇ ਵਾ ਕੀ ਵਸਤੂ ਹੋਈ ਇਹ ਜੀ ਚਰਚਾ ਕਰਦੇ ਰਹਿੰਦੇ ਨੇ ਇੱਕ ਦੂਰੇ ਵਿੱਚ ਕੀ ਹੋ ਸਕਦਾ ਫਿਰ ਹਨਾ ਨਹੀਂ ਬੜਾ ਵੀ ਤੂੰ ਹੋਈ ਆਪਣੇ ਆਪ ਨੂੰ ਦੇਖ ਲੈ ਬਸ ਆ ਨਹੀਂ ਕਿਸੇ ਕਵੀਰ ਨੇ ਜਾਂ ਲਖੋਜਿਆ ਤਾਂ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜੇ ਔਰ ਸਮਝਦਾ ਤੇ ਜਿੰਨਾ ਤਿਆਰਦਾ ਤੂੰ ਆਪ ਆਪਣੇ ਆਪ ਨੂੰ ਖੋਜ ਲੈਂਦਾ ਇਹ ਦੱਸਿਆ ਨਹੀਂ ਕਿਸੇ ਇਹ ਦਸਿਆ ਉਹਨਾਂ ਗ੍ਰੰਥਾਂ ਨੇ ਜਿਹੜੇ ਜਾ ਕੇ ਪੜੇ ਭੰਗਰ ਕਬੀਰ ਨੇ ਵੀ ਬਾਹਰ ਨਹੀਂ ਲੱਭੀ ਜਾਂ ਤਾਂ ਨਹੀਂ ਲੱਭੀ ਜਾਂਦਾ ਕਈ ਕਲਪ ਕਈ ਕਈ ਕਲਪਯੋਗ ਸਾਧਤ ਦੁਰੰਤ ਇਹ ਜਿਹੜੀ ਦੂਰੀ ਹੈ ਨਾ ਸਮਝਣ ਦੀ ਨਹੀਂ ਸਮਝ ਆ ਰਹੀ ਹੈ ਸਮਝਣ ਦਾ ਸਮਝ ਲਿਆ ਨਾਲ ਮਿਲ ਕੇ ਜੁੜ ਕੇ ਬੇਸਮਝੀ ਸਮਝਦੀ ਦੂਰੀ ਦੇ ਮਟਾਉਣ ਵਾਸਤੇ ਕਈ ਕਲਪਯੋਗ ਕਈ ਲੋਕਾਂ ਨੇ ਜੋ ਕਲਪੇ ਹੋਏ ਨੇ ਜੋੜਨ ਦੇ ਸਾਧਨ ਬਹੁਤ ਸਾਰੀਆਂ ਬੱਤਾ ਗਲਪੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਬੱਤਾ ਬਣਾ ਲੀਆਂ ਸੋਚੀਆਂ ਹੋਈਆਂ ਨੇ ਬੜਾਈ ਘੜੀਆਂ ਹੋਈਆਂ ਨੇ ਬੱਤਾ ਕੋਈ ਕਹਿੰਦਾ ਐ ਹੋਜੂ ਉਹਦੇ ਨਾਲ ਬਲਾਬ ਕੋਈ ਕਹਿੰਦਾ ਐ ਹੋਜੂ ਕੋਈ ਕਹਿੰਦਾ ਐ ਹੋਜੂ ਅਨੇਕ ਮੱਤਾ ਬਣ ਗਈਆਂ ਜੋ ਦੇ ਸਾਧਨ ਬਹੁਤ ਸਾਰੇ ਕਲਪਲੇ ਤਨ ਸੀਤ ਕਾਮ ਵਰਖਾ ਸਹੰਤ ਆਪਣੇ ਸਰੀਰ ਦੇ ਉੱਤੇ ਵਰਖਾ ਗਰਮੀ ਸੀਤ ਯਾਨੀ ਘਰ ਨਹੀਂ ਬਣਾਇਆ ਬਾਹਰ ਹੈ ਵਰਖੇ ਦੀ ਮੀਂਹ ਜਵੇ ਧੁੱਪ ਜਿੰਨੀ ਵਰਜੀ ਪਈ ਜਾਵੇ ਜਿੰਨੀ ਮਰਜੀ ਕੋਰਾ ਕੱਕਰ ਪਈ ਜਾਵੇ ਉਹ ਬਾ ਕਿਉਂ ਸਹਰ ਰਹੇ ਦਾ ਸਾਧਨ ਕਾਲੇ ਵਿੱਚ ਜਾਹ ਜਾ ਦੁੱਖ ਦੰਤ ਸਹੀ ਜਾਓ ਪਾਣੀ ਚ ਰਹੋ ਉਹਨੇ ਰੇ ਬਣਾ ਲਿਆ ਕਈ ਕਲਪ ਇੱਕ ਆਸਨ ਬਿਤੰਤ ਕਈਆਂ ਨੇ ਇਹ ਕਲਪ ਲਿਆ ਵੇਖੋ ਹਸਣ ਤੇ ਬੈਠੇ ਰਹਿਣਾ ਢੋਲ ਆਪੇ ਬੜ ਜੂ ਆ ਕੇ ਇਹ ਕਾ ਸੰਦ ਤੇ ਬੈਠੇ ਨੇ ਇਹ ਨਾਲ ਸੁਣ ਤੋਹਰਾਂ ਆਪੇ ਖਬਰ ਲਊ ਆ ਕੇ ਉਹਨਾਂ ਨੇ ਬੰਨ ਲਿਆ ਬੰਨਿਆ ਹੋਇਆ ਕੁਝ ਕੁਝ ਉਹ ਕਹਿੰਦੇ ਭਾਈ ਦਰਖਤ ਉੱਥੇ ਖੜੇ ਰਹਿੰਦੇ ਨੇ ਸਾਰੀ ਉਮਰ ਉਹਨਾਂ ਦਾ ਮਿਲਿਆ ਰਹੀ ਆ ਕੇ ਕਿਸੇ ਨੂੰ ਤੈਨੂੰ ਪਛਾਣ ਹੋਏਗਾ ਪੱਥਰ ਜਿੱਥੇ ਪਿਆਰਾਂ ਦਾ ਉੱਥੇ ਪਿਆਰ ਹੈ ਇਹ ਜਿਹੜੇ ਪਿੱਛੇ ਖੰਡਣ ਕੀਤੇ ਹੈ ਨਾ ਉਹੀ ਗੱਲ ਪਈ ਹੋ ਜੇ ਦੇਖੋ ਇੱਥੇ ਉਹ ਦੱਸਦੇ ਆ ਕੁਝ ਕਰ ਰਹੇ ਤੇ ਪਿੱਛੇ ਖਡੂ ਉਹ ਇਹੀ ਕੀਤੇ ਹੋਏ ਨੇ ਫਿਰ ਪੱਥਰ ਪੈ ਹੀ ਰਹੇ ਨੇ کئی ਕਰ ਰਹੇ ਨੇ ਜੋਗ ਦਾ ਯਤਨ ਕੀ ਹੈ ਵਿਦਿਆ ਵਿਚਾਰ ਨੂੰ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਪੜ੍ਹਨੇ ਪੜ੍ਹ ਜਾਂਦੇ ਨੇ ਯੂਨੀਵਰਸਿਟੀ ਜੀ ਵੀ ਪੜ੍ਹ ਜਾਂਦੇ ਨੇ ਪਰ ਇਹਦਾ ਉਹੀ ਪੜਦੇ ਨੇ ਇਹਨਾਂ ਨੂੰ ਜੋਗ ਤੇ ਕੀ ਲੈਣਾ ਇਹ ਤਾਂ ਆਪਣੇ ਕੋਈ ਕਿਤਾਬ ਲਿਖਣ ਵਾਸਤੇ ਪੜ੍ਹਦੇ ਹੁੰਦੇ ਸੀ ਇਹਨਾਂ ਜੋਗ ਦੋਖੀ ਲੈਣ ਜੋਗ ਧਾਰਮਿਕ ਲੋਕਾਂ ਦਾ ਵਿਸ਼ਾ ਵਿਦਵਾਨਾਂ ਦਾ ਵਿਸ਼ਾ ਜੋਗ ਨਹੀਂ ਹੁੰਦਾ ਵਿਦਵਾਨਾ ਹੁੰਦਾ ਵੀ ਦੋ ਚਾਰ ਕਿਤਾਬਾਂ ਇੱਧਰ ਉੱਧਰ ਪੜ੍ਹੀਆਂ ਕਿਤਾਬ ਲਿਖਤੀ ਚੱਲ ਬਣਾਣਾ ਹੋ ਗਿਆ ਕੁਲੀ ਬਣ ਬਣ ਗਈ ਸਰਕਾਰ ਨੂੰ ਇਹ ਹੋਇਆ ਵੀ ਹਾਂ ਮੈਂ ਇਹ ਉਹ ਕਰਦਾ ਉਹ ਕਰਦਾ ਇੱਜਤ ਹੋ ਗਈ ਐਨਾ ਕੋ ਹੁੰਦਾ ਜਿਆਦਾ ਨਹੀਂ ਹੁੰਦਾ ਇਹਨਾਂ ਸਾਧਨ ਤਦ ਤਦਪ ਪਾਵਤਨ ਪਾਰ ਸਾਧਨ ਤਦ ਤਦ ਤ ਬੜੀ ਸਾਧਨਾ ਕਰ ਰਹੇ ਬਿਓ ਦੀ ਲੋਕ ਬੜੀ ਤਕੜੀ ਸਾਧਨਾ ਕਰ ਰਹੇ ਨੇ ਫਿਰ ਵੀ ਪਾਰ ਨਹੀਂ ਪਾਇਆ ਕੁਛ ਕਰਕੇ ਤਾਂ ਪਾਰ ਨਹੀਂ ਆ ਇਹਨੇ ਚਬਰ ਚਬਰ ਬੋਲੀ ਜਾਂਦੇ ਨੇ ਇਹਨਾਂ ਨੇ ਵਾਰ ਕਰੇ ਉਹ ਧਰਨੀ ਗਾਇ ਵਾਲੇ ਜਿਹੜੇ ਨੇ ਵਿਦਵਾਨ ਨੇ ਕਦੀ ਕਦਾਫ ਪੜ੍ਹ ਕੇ ਲੇ ਕਿ ਭੀ ਅਗਰ ਯਦਨ ਗ੍ਰੰਥਾ ਤੇ ਆਇਨਾ ਕੁਛ ਆਲੇ ਦਾ ਪਤਾ ਨਹੀਂ ਲੱਗਿਆ ਕੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਜਿਹੜੇ ਹੋਰੇ ਤੁਰੇ ਫਿਰਦੇ ਨੇ ਵੀ ਥੇਗੜੂਏ ਇਹਨਾਂ ਥੇਗੜੂ ਨੇ ਸਾਰੇ ਉਹ ਆਇਆਂ ਲਿਖੀਆਂ ਜਾਂਦੇ ਨੇ ਬੋਝੌਲੀ ਮਾਰੀ ਜਾਂਦੇ ਨੇ ਇੰਨਾ ਕੁਛ ਕਰ ਰਹੇ ਨੇ ਲੋਕ ਸਭ ਕੁਝ ਛੱਡ ਕੇ ਉਹਨਾਂ ਨੇ ਬਦੀ પાર ਪਾਇਆ ਤੁਹਾਨੂੰ ਪਤਾ ਲੱਗਿਆ ਗੁਰਨਾਨ ਦੇਵ ਜੀ ਮਤ ਕੀ ਹੈ ਅਜਲੋ ਤੇਰੀ ਆਪਣੀ ਮੱਤ ਹੈ ਉਹ ਨਾਨਕ ਦੀ ਮੱਤ ਨਹੀਂ ਕੋ ਨਾਨਕ ਦੀ ਮੱਤ ਹੈ ਤੈਨੂੰ ਕੋਈ ਜਲੂਜ ਨਹੀਂ ਪਤਾ ਲੱਗਣਾ ਐਦਾਂ ਨਹੀਂ ਪਤਾ ਲੱਗਦਾ ਹੁੰਦਾ ਉਹ ਮਤ ਦਾਡਾ ਜੋ ਕੋਈ ਵਿਆਖਿਆ ਕਰ ਠੀਕ ਵਿਆਖਿਆ ਕਰ ਇਸ ਵੇਲੇ ਹੈ ਹੋ ਨਹੀਂ ਪਤਾ ਲੱਗੂ ਯਾਰ ਕੋਈ ਠੀਕਾ ਕਰੂਗਾ ਠੀਕ ਵਿਆਖਿਆ ਕੀ ਹੈ ਕਈ ਉਰਦ ਬਾਹਾਂ ਦੇਸਨ ਪਰਮੰਤ ਕਈ ਉਰਦ ਬਾਹਾਂ ਦੇਸਨ ਪਰਮੰਤ ਬਾਹਾਂ ਖੜੀਆਂ ਕਰਕੇ ਹੀ ਫਿਰਦੇ ਨੇ ਤੁਰੇ ਥੱਲੇ ਦੀ ਮਾਂ ਕਰਦੀ ਉਰਦ ਬਾਹਾਂ ਖੜੀਆਂ ਵਾਹਾਂ ਕਰਕੇ ਤੁਰਨਾ ਦੇਸਾ ਦੇਸਾ ਬਾਹ ਥੱਲੇ ਹੀ ਨਹੀਂ ਕਰਦੀ ਕਿੱਡਾ ਬੜਾ ਤਪ ਕਰਦੇ ਰਹੇ ਨੇ ਲੋਕ ਦੱਤਾ ਤਰੇ ਦੇ ਉਹਦੇ ਨਾਲ ਹੁੰਦੇ ਸੀ ਬੰਦੇ ਦੱਤਾ ਤਰੇ ਦੇ ਵਾਹ ਖੜੀਆਂ ਕਰ ਗਈ ਤੁੜ ਦੇ ਸਲਵਰ ਬੰਦ ਦੇਖੋ ਨਾਇ ਤਾਂ ਤੁਰਨਾਂ ਵਾਲੇ ਬਾਹੂ ਉੱਤੇ ਖੜੀਆਂ ਇਹਨਾਂ ਉਹਨਾਂ ਸਮਾਨਤਾ ਕੋਈ ਕੋਲ ਹੁੰਦਾ ਨਹੀਂ ਸੀ ਉਹਨਾਂ ਦੇ ਸੰਦਗੀ ਜੇ ਚੱਕਣ ਹੱਥ ਥੱਲੇ ਕਰਦੇ ਤਾਂ ਹੀ ਚੱਕਣ ਨੇ ਕੋ ਮੋਡੇ ਮਾਡੇ ਜਪਾਇਆ ਹੋਵੇ ਤਾਂ ਕਾਇਦੀ ਜਲੇ ਕੋ ਬੜਾ ਮੋਟਾ ਕੋਈ ਚੀਜ਼ ਮੋਡੇ ਜਪਾਲੀ ਹੋਵੇ ਪਾਣੀ ਵੀ ਇੱਥੇ ਕਿਤੇ ਬੜੂ ਤਾਂ ਹੀ ਪੀੜ ਪਾਣੀ ਵੀ ਨੇ ਕੋਲ ਰੱਖ ਸਕਦੇ ਕਈ ਉਰਦ ਮਦ ਪਾਵਕ ਚਲੰਤ ਕਈ ਉਰਦ ਮੁੱਦੇ ਪੈਗੇ ਮੁੱਦੇ ਪੈਲੇ ਨਾ ਜਿਵੇਂ ਫੀਗ ਪਾਈਦੀ ਹੁੰਦੀ ਹੈ ਉਹ ਦੋਲੜੀ ਪੀਂਗ ਨਹੀਂ ਪਾਉਂਦੇ ਬੱਜੇ ਵਾਂਗੂ ਐ ਮੁੱਦਾ ਪੈ ਜਾਣਾ ਪੀਂਗ ਦੇ ਉੱਤੇ ਮਦ ਪਾਵਕ ਚਲੰਤ ਥੱਲੇ ਅਗ ਜਾਂੜਣੀ ਢੂੜੇ ਉੱਤੇ ਚੁਰਨ ਢੂੜੇ ਥੱਲੇ ਅਗ ਦੀਆਂ ਢੋੜੀਆਂ ਲਾ ਕੇ ਨਾ ਚਾਰੇ ਪਾਸੇ ਮਿਚਾਲੇ ਝੂਲਾ ਭਾਲਣ ਬੂਂਦੇ ਬੂ ਥੱਲੇ ਨੂੰ ਪੈ ਜਾਣ। ਉੱਥੇ ਝੋਟਣਾ ਉਹਦੇ ਅੱਗੇ ਧੂਲ ਦੇ ਵਿੱਚ। ਇਹ ਇਆਂ ਕੰਮ ਕਰਦੇ ਸੀ। ਔਖਾ ਕਠਣ ਕੰਮ ਕਰਦੇ ਸੀ ਲੋਕ। ਕਦੇ ਵਾਸਤੇ ਆ ਸਮਝ ਆ ਜਾਵੇ ਘਰ ਕੀ ਹੈ। ਇਹਦੀ ਸਮਝ ਵਾਸਤੇ ਸਿਰਫ ਇਹਨਾਂ ਨੂੰ ਸੁਭਰੇ ਸਮਝ ਆ ਗਈ। ਇਹਨਾਂ ਨੂੰ ਸਮਝ ਨਹੀਂ ਆਈ ਜਿਹੜੇ ਆ ਕੁਛ ਕਰ ਰਹੇ ਨੇ। ਐ ਜਿੰਦਰ ਸੁਰਵਾਰ ਕਾਉਣ ਦੱਸ ਗਿਆ ਇਹਨੂੰ ਰਾਗੀ ਨੂੰ ਇਹਨਾਂ ਨੂੰ ਸੋਭਰ ਵਿੱਚ ਪਤਾ ਲੱਗਿਆ ਜਿਹੜੇ ਬੋਲਦੇ ਨੇ ਦੱਸ ਸੁਰ ਇਹਨਾਂ ਨੂੰ ਕਦ ਪਤਾ ਲੱਗ ਗਿਆ ਕੌਣ ਦੱਸ ਗਿਆ ਇਹਨਾਂ ਨੂੰ ਪਹਿਲਾਂ ਇਹ ਤਾਂ ਦੱਸੋ ਤੁਸੀਂ ਟਿੱਪੜੀ ਬਾਤ ਚਕਾਰ ਲਓ ਪਹਿਲਾਂ ਇਹ ਦੱਸੋ ਗੁਰਮਤੀ ਤੁਹਾਨੂੰ ਸੋਝੀ ਦੱਸੀ ਕਿਨੇ ਹੈ ਪੜੀ ਕਿਦੋਂ ਤੁਸੀਂ ਕਿਸੇ ਨੂੰ ਗੁਰਮਤ ਦਾ ਪਤਾ ਹੀ ਨਹੀਂ ਲਿਖੀ ਹੋਈ ਹੈ ਅਲੱਗ ਗੱਲ ਹੈ ਲਿਖੀ ਹੋਈ ਹੈ ਗੁਰਬਾਣੀ ਚ ਪਈ ਹੈ ਅਲੱਗ ਗੱਲ ਹੈ ਤੁਹਾਨੂੰ ਸਮਝਾ ਉਹਿਆ ਤੁਸੀਂ ਬੈਠ ਕੇ ਪਹਿਲੇ ਇਹ ਸਮਝਾ ਦਿਓ ਸਾਨੂੰ ਫੇ ਤੁਹਾਡੀ ਗੱਲ ਅਸੀਂ ਸੁਣਨਾਗੇ ਪਹਿਲਾਂ ਗੁਰਮਤਿ ਸਮਝਾ ਦਿਓ ਕੀ ਹੈ ਉਹ ਰੌਲਾ ਪਾਈ ਜਾਣਾ ਊੜੇ ਹੜ ਦਾ ਤੁਹਾਨੂੰ ਪਤਾ ਨਹੀਂ ਕੀ ਫਾਇਦਾ ਰੌਲਾ ਪਾਉਂਦੋ ਕੀ ਸੇਵਾ ਕਰ ਰਹੇ ਹੋ ਤੁਸੀਂ ਸਿੱਖੀ ਦੀ ਜੋ ਕੋ ਤੁਸੀਂ ਕਰ ਰਹੇ ਹੋ ਸਾਨੂੰ ਪਤਾ ਹੈ ਕੀ ਕਰ ਰਹੇ ਹੋ ਅਸੀਂ ਬਹੁਤ ਵਾਰ ਖੜੇ ਆ ਤੁਹਾਡੇ ਨਾਲ 50 ਸਾਲ ਦੇ ਗਾਹਾਂ ਖੜੇ ਆ ਇਹਨਾਂ ਲੋਕਾਂ ਦੇ 50 ਸਾਲ ਦਾ ਪਤਾ ਹੈ ਵੇ ਕੀ ਕਰ ਰਹੇ ਨੇ ਪਹਿਲਾਂ ਵੀ ਇਹੇ ਜਿਹੀ ਕਰਦੇ ਤੇ ਉਹ ਸਬਰ ਤਾਂ ਹੋ ਚੁੱਕਿਆ ਉਹ ਗੱਲਾਂ ਦੇ ਮਸਲੇ ਜਿਹੜੇ ਸੀ ਨਾ 50 ਸਾਲ ਪਹਿਲਾਂ ਸਾਨੂੰ ਨਹੀਂ ਸੀ ਪਤਾ ਉਹ ਮਸਲੇ ਹੁਣ ਹੱਲ ਹੋ ਚੁੱਕੇ ਹਾਂ ਚੰਗਾ ਜੇ ਕੋਈ ਤਿਆਰੀ ਕਰਦਾ ਹੈ ਪਹਿਲਵਾਨ ਤਿਆਰੀ ਕਰਦਾ ਹੈ ਦੀ ਤੇ ਛਿੰਝ ਕੋਈ ਹੋਣੀ ਚਾਹੀਦੀ ਹੈ ਤਾਂ ਹੀ ਉਹਦਾ ਪਤਾ ਲੱਗੂਗਾ ਸਾਨੂੰ ਬਿੱਲੀ ਦੇ ਭਾਗਾਂ ਨੂੰ ਛੱਕਾ ਟੁੱਟਿਆ ਤੁਸੀਂ ਬੋਲੇ ਹੋ ਉਹ ਜੇ ਕੋਈ ਸ਼ਿਕਾਰ ਨਿਕਲੂਗਾ ਸ਼ਿਕਾਰੀ ਦਾ ਤਾਂ ਹੀ ਪਤਾ ਲੱਗੂ ਕੁੱਤੇ ਦਾ ਫੜਨ ਵਾਲੇ ਦਾ ਇਹ ਛੇਰੇ ਨੇ ਨਿਕਲੂ ਸ਼ਿਕਾਰੀ ਦਾ ਕੀ ਪਤਾ ਕੁੱਤੇ ਨੇ ਛੇਰ ਨਿਕਲਿਆ ਛੇਰ ਨਾਲ ਸ਼ਿਕਾਰ ਕਰਕੇ ਜੇ ਛੇਰ ਮਰੇ ਹੀ ਨਾ ਸ਼ਿਕਾਰੀ ਦਾ ਟੈਸਟ ਕਦੋਂ ਹੋਊਗਾ ਜੇ ਆਪਣੀ ਬੁਧੂ ਟੈਸਟ ਕਰਨੀ ਹੈ ਆਪਣੀ ਤਲਵਾਰ ਟੈਸਟ ਕਰਨੀ ਹੈ ਆਪਣਾ ਹੌਸਲਾ ਟੈਸਟ ਕਰਨਾ ਆਪਣੀ ਤਾਕਤ ਟੈਸਟ ਕਰਨੀ ਉਹ ਟੈਸਟ ਕਦੋਂ ਕਰੂਗਾ ਇਹ ਤਾਂ ਤੁਸੀਂ ਤਾਂ ਪੈਦਾ ਹੋਏ ਹੋਏ ਹੋਰੇ ਤਲਵਾਰਾਂ ਟੈਸਟ ਹੋੜੀਆਂ ਤੁਹਾਡੇ ਤੇ ਜਵੇਂ ਰੱਖਿਸ਼ਾਂ ਦੇ ਚੰਡੀ ਦੇ ਟੈਸਟ ਹੋਏ ਰੇ ਨਾ ਪਿੱਛੇ ਦੱਸਿਆ ਉਹ ਤੁਸੀਂ ਤਾਂ ਉਹਦੇ ਵਾਸਤੇ ਬਲੀ ਦੇ ਬੱਕਰੇ ਆ ਤੁਸੀਂ ਕੁਝ ਨਹੀਂ ਹੋ ਮੇਰਾ ਬਲੀ ਦੇ ਬੱਕਰੇ ਨੇ ਸਾਰੇ ਇਹਨਾਂ ਕੋਲ ਕੀ ਆ ਵਿਚਾਰਿਆਂ ਕੋ ਇਹਨਾਂ ਦੇ ਪਿੱਛੇ ਹੋਰੇ ਸ਼ਕਤੀਆਂ ਕੰਮ ਕਰਦੀਆਂ ਨੇ ਜਦ ਮੱਤ ਮਾਰਦਾ ਉਹ ਗੱਦੜ ਦੀ ਕਹਿੰਦਾ ਬਹੁਤ ਆਉਂਦੀ ਆ ਨਾ ਪਿੰਡ ਵੱਲੋਂ ਚਲੇ ਜਾਂਦਾ ਪਿੰਡ ਵੱਲੋਂ ਕਿਉਂ ਜਾਂਦਾ ਮੱਤ ਜੋ ਮਾਰਤੀ ਇਹ ਨਾਲੇ ਮੱਤ ਵਾਲੀਆ ਪਰਫੈਸ਼ਨਲ ਨਾ ਇਹ ਬੋਲਦੇ ਨਾ ਸਾਨੂੰ ਟਾਈਮ ਮਿਲਦਾ ਇਹਨੂੰ ਆ ਸਾਨੂੰ ਆ ਕਹਿਣ ਦਾ ਸਭ ਕੁਝ ਕਹਿਣ ਦਾ ਟਾਈਮ ਮਿਲਦਾ ਸਾਡੇ ਵਾਅਦਿਆਂ ਦਾ ਬਹਾਨਾ ਬਣ ਰਹੇ ਦੱਸਣ ਦਾ ਵੀ ਸੱਚ ਕੀ ਹੈ ਅਕਾਲ ਤਖਤ ਦੀ ਲੋੜ ਹੈ ਹੁਣ ਸੱਚ ਦੀ ਦੁਨੀਆ ਦੀ ਲੋੜ ਬਣ ਗਈ ਜੇ ਬੋਲੇ ਇਹ ਤਾਂ ਉਹੀ ਰਾਖੀ ਸੀ ਜਿਹਨਾਂ ਦੀ ਲੜਾਈ ਹੈ ਜਿਹੜੇ ਦੇਵਤਿਆਂ ਦੇ ਚੜ ਕੇ ਆਉਂਦੇ ਹੁੰਦੇ ਨੇ ਨਾ ਫੇਖੋ ਮਟਵਾਲੇ ਦੇ ਨੇ ਤਾਂ ਹੋਰ ਇਹ ਕੁਝ ਨਹੀਂ ਹਨ ਹੋਰ ਇਹਨਾਂ ਦਾ ਕਾਹਦਾ ਖਤਰਾ ਇਹ ਤਾਂ ਚਾਹੀਦੀ ਤੇ ਇਹਨਾਂ ਦੀ ਵੀ ਲੋੜ ਐ ਸੀ ਜੇ ਵਿਜੀਦਾ ਨਾ ਹੁੰਦਾ ਤਾਂ ਸਾਬ ਜਦਾਂ ਦਾ ਵੀ ਜਨਾਉ ਨਾ ਹੁੰਦਾ ਜੇ ਵਿਜੀਦਾ ਨਾ ਹੁੰਦਾ ਸਰਦਾਂ ਵਾਲਾ ਇਹ ਸੁਚਾ ਨਾ ਹੁੰਦਾ ਤਸ ਆਬ ਜੱਦਾ ਨਵੀਂ ਨਾ ਨਾ ਹੁੰਦਾ ਅੱਜ ਕਿਉਂ ਉਹਨਾਂ ਨੇ ਬੜੀ ਕਰ ਦੇਣੇ ਤੇ ਆ ਗੱਲ ਬਣੀ ਹੁੰਦੀ ਸੀ ਜਿਹੜੀ ਅੱਜ ਬਣਦੀ ਹੈ ਇਹ ਤਾਂ ਬਣੀ ਹੁੰਦੀ ਸੀ ਉਹ ਗ੍ਰੈਡਿਟ ਜਿਹੜਾ ਅੱਜ ਆਉਣੀ ਸੀ ਬੁੱਲਣਾ ਇੰਨੀ ਸੀ ਤ ਫਸੇ ਤਾਂ ਉਹ ਬਹਾਨਾ ਇਹ ਤਾਂ ਬਹਾਨਾ ਉਹਦਾ ਬਹਾਨਾ ਵਾਇਦਾ ਕੀਤਾ ਸੀ ਸੱਚਾ ਨਾ ਰਿਕਾਰਡ ਜਿਹੜਾ ਬਣਨਾ ਸੀ ਤਾਂ ਹੀ ਬਣਨਾ ਸੀ ਇਹ ਰਿਕਾਰਡ ਬਣਿਆ ਇੱਕ ਬਹੁਤ ਵੱਡਾ ਛੋਟੜ ਗੌਰ ਨਹੀਂ ਆਦਾ ਹੈ ਇੱਕ ਤਰੂਹ ਨਹੀਂ ਹਾਂਦਾ ਗੱਲਾਂ ਨੇ ਅਸੀਂ ਸੁਣੀਆਂ ਹੋਈਆਂ ਉਹਦਾ ਬਚਾਇਆਗਾ ਹਮ ਪਰਮੇਸ਼ਰ ਇਹ ਨਹੀਂ ਇਸ ਤਰ੍ਹਾਂ ਦੀ ਕਿ ਹਕੀਕਤ ਰਹੀ ਦੀ ਸੀ ਉਹ ਵੀ ਹੋਰ ਕਿਸਮ ਦੀ ਸੀ ਇਹੇ ਜੀ ਦੀ ਸੀ ਹਕੀਕਤ ਰਹੀ ਦੀ ਉਹਨਾਂ ਦਾ ਛੜਿਆ ਅਗਲਾ ਨੇ ਫਤਵਾ ਦੇ ਦਿੱਤਾ ਨਾ ਉਹ ਤਾਂ ਕਾਇ ਬੈਠਿਆ ਸੀ ਬੱਚੇ ਕੱਲ ਉਹ ਹੋਰ ਗੱਲ ਸੀ ਇਹਨਾਂ ਨੇ ਕਿਹਾ ਵਿਜੇ ਤੁਹਾਨੂੰ ਛੱਡ ਦੇ ਕੀ ਕਰੋਗੇ ਸਿੱਖ ਕਹਿੰਦਾ ਵੀ ਸਿੱਖੀ ਦਾ ਪ੍ਰਚਾਰ ਕਰਾਂਗੇ ਅਖੇ ਉਹਵੇਂ ਕਰਾਂਗੇ ਜਿਵੇਂ ਤੁਹਾਡਾ ਪਤਾ ਕਰਦਾ ਸੀ ਹਾਂ ਉਹਵੇਂ ਕਰਾਂਗੇ ਕਹਿੰਦਾ ਲੈ ਲਓ ਸਵਾਦ ਨੂੰ ਛੱਡ ਦੋ ਇਹਨੂੰ ਇਹ ਗੱਲ ਹੋਰ ਹੋਰ ਸਾਨੂੰ ਚੱਲਦੇ ਨੇ ਕਹਿਣਾ ਇਹਦਾ ਉਹ ਤਾਂ ਛੱਡਣ ਦਾ ਤੇ ਉਹ ਤਾਂ ਕਹਿੰਦਾ ਕੋਈ ਕੈਸੇ ਨਹੀਂ ਮੜਦਾ ਹੁੰਦਾ ਖਸੂਰ ਕੋਈ ਨਹੀਂ ਕੀ ਖਸੂਰ ਸੀ ਯਾਰੋ ਕਹਿੰਦੇ ਸੀ ਤਾਂ ਐਵੇਂ ਕਰਾਂਗੇ ਸਾਨੂੰ ਕੋਈ ਭੈੜੀ ਹੈਗੀ ਵੀ ਅਸੀਂ ਕਹਿ ਲਈ ਅੱਜ ਕਹਿ ਲਈ ਨਹੀਂ ਕਰਾਂਗੇ ਕੱਲ ਨੂੰ ਅਸੀਂ ਕਰੀਏ ਤੁਸੀਂ ਛੱਡੋ ਨਾ ਛੱਡੋ ਸਾਡਾ ਕੰਮ ਸਾਨੂੰ ਇਸ ਲਾਈਨ ਤੋਂ ਕੋਈ ਹਟਾ ਨਹੀਂ ਸਕਦਾ ਇਹ ਗੱਲ ਹੋਰ ਹੋਰ ਕਈ ਸਿਮਰਤ ਸਾਸ਼ਤਰ ਉਚਰੰਤ 베ਦ ਕਈ ਸਿਮਰਤ ਸਾਸ਼ਤਰ ਉਚਰੰਤ 베ਦ ਕਈ ਸਾਸ਼ਤਰ ਪੜੀ ਜਾਂਦੇ ਨੇ ਕੋਈ 베ਦ ਪੜੀ ਜਾਂਦੇ ਨੇ ਉਚਰੰਤ ਆਇਆ ਤੇ ਬਾਣੀ ਅਸੀਂ ਪੜਦੇ ਆਂ ਪੜੀ ਜਾਂਨ ਹੋਰ ਗੱਲ ਆ ਵਿਚਾਰਨਾ ਹੋਰ ਗੱਲ ਆ ਆ ਚੱਲਦੇ ਨਾ ਪਾਠ ਲੜੀਵਾਰ ਆਸਾਧਾਂ ਦੇ ਡੇਰਿਆਂ ਤੇ ਸਾਡੇ ਵੀ ਚੱਲਦੇ ਨੇ ਗੁਰਦੁਆਰਿਆਂ ਦੇ ਇਹ ਉਚਾਰਨ ਤੇ ਵੇਖਦੇ ਰਹਾ। ਬਸ। ਪੜਦੇ ਤਾਂ ਹੈ ਉਹ ਉਚਾਰ ਦੇ। ਉਹ ਪੜਨ ਨੂੰ ਉਚਾਰਨ ਹੀ ਕਹਿੰਦੇ ਨੇ। ਪੜਨਾ ਹੋਰ ਗੱਲ ਹੈ ਜਰਨੂ ਵੀ। ਜੇ ਪੜੀਏ ਚੁੱਪ ਕਰਕੇ ਪੜੀਏ ਤਾਂ ਵੀ ਸਮਝ ਚੋਲਦੀ ਹੈ। ਪੜਨੇ ਨਾਲ ਅਸਰ ਵੀ ਪੈਣਾ ਚਾਹੀਦਾ। ਉਚਾਰਨ ਨਾਲ ਅਸਰ ਨਹੀਂ ਪੈਂਦਾ। ਉਚਾਰਨ ਤਾਂ ਅਸੀਂ ਅੰਗਰੇਜ਼ੀ ਦਾ ਅਖਬਾਰ ਪੜ ਸਕਦੇ ਹਾਂ। ਸਭ ਕੁਝ ਆਵੇ ਜੇ ਨਾ ਆਵੇ ਬੇ ਸਮਝੀ ਨਾ ਪੜਨਾ ਵਿਚਾਰਨ ਨੂੰ ਸਮਝਣ ਵਾਸਤੇ ਹੀ ਪੜੀਦਾ ਹੁੰਦਾ ਸੁਝਣ ਵਾਸਤੇ ਉਡਿਆਣੇ ਪੜਨ ਭੇਜਦੇ ਆਂ ਅਸੀਂ ਕਦੇ ਵਾਤੇ ਭੇਜਦੇ ਆਂ ਸੁਣਨ ਵਾਸਤੇ ਉਹਨੂੰ ਉਚਾਰਣ ਉਹਨੂੰ ਪੜਨੋ ਕਹਿੰਦੇ ਤਾਂ ਹੀ ਅਸੀਂ ਪੜਨ ਵਾਸਤੇ ਭੇਜਦੇ ਆਂ ਰੋਜ਼ ਪੜ ਕੇ ਆਉਂਦੇ ਨੇ ਕੋਈ ਲੈ ਕੇ ਆਉਂਦੇ ਨੇ ਘਰ ਨੂੰ ਗਿਆਨ ਜੇ ਰੋਜ਼ ਕੁਝ ਮਿਲਦਾ ਤਾਂ ਪੜ ਰਹੇ ਕਿ ਕੁਝ ਮਿਲ ਨਹੀਂ ਰਿਹਾ ਫਿਰ ਉਚਾਰਣ ਕਰਕੇ ਆ ਜਾਂਦਾ ਕਿ 2011 ਦਾ ਗਿਆਨ ਲੈ ਕੇ ਆ ਜਾਂਦਾ ਕੁਝ ਮਾੜੀ ਮੋਟੀ ਇੱਕ ਦੋ ਪੰਕਤੀਆਂ ਦੀ ਸੋਚੀ ਲੈ ਕੇ ਆ ਜਾਂਦਾ ਤਾਂ ਵੀ ਸਮਝੋ ਪੜ ਗਿਆ ਪੜਿਆ ਹੈ ਪੜਦਾ ਹੀ ਜਾਂ ਪੜਦਾ ਪਾਠ ਕਰਦਾ ਇੱਕ ਦੋ ਚਾਰ ਪੰਕਤੀਆਂ ਦਾ ਤਾਂ ਉਹਨੂੰ ਪਤਾ ਲੱਗੇ ਵੀ ਆਹ ਕੀ ਕਿਹਾ ਹੋਇਆ ਆਹ ਕੀ ਕਿਹਾ ਹੋਇਆ ਸ਼ੱਕ ਪਵੇ ਫਿਰ ਉਹ ਪੜਿਆ ਉਹ ਨਹੀਂ ਉਚਾਰਣੇ ਕੀ ਤਾਂ बस ਉਹ ਪੁੱਛੇ ਰਿਹਾ ਥੱਲੇ ਰਹੀ ਅਸਰ ਪਿਆ ਉਹਦਾ ਇਹ ਕੋਈ ਇਹ ਫਰਕ ਰਹਿੰਦਾ ਉਹਦਾ ਫੜ ਫੜ ਗੱਡੀ ਲੱਦੀ ਵੀ ਕਿਹਾ ਹੋਇਆ ਵੀ ਲਗਾਤਾਰ ਪੜਿਓ ਜਾਣਾ ਪੜਿਓ ਜਾਣਾ ਗੱਡੇ ਲੱਦੀ ਜਾਣੇ ਕਿਤਾਬਾਂ ਡਿਫਰੈਂਟ ਕਿਸਮ ਦੀਆਂ ਕਿਤਾਬਾਂ ਦੀ ਗੱਲ ਹੈ ਉੱਥੇ ਗੱਡੇ ਲੱਦੀਏ ਇੱਕੋ ਅਸੀਂ ਇੱਕੋ ਵਾਰੀ ਪੜਦੇ ਆਂ ਇੱਥੇ ਗੱਡੇ ਲੱਦਣਾਂ ਦੀ ਗੱਲ ਨਹੀਂ ਇਹਨੂੰ ਕਹਿ ਸਕਦੇ ਅਸੀਂ ਉੱਥੇ ਬੇਦ ਪੜੇ ਪੜਫਲ ਦੇ ਤਬੂਏ ਗੱਡੇ ਲੱਦੀਏ ਨਹੀਂ ਆਈ ਉੱਥੇ ਗੱਲ ਪੜ੍ਹਦੇ ਆ ਸਮਝਣ ਵਾਸਤੇ ਹੀ ਪੜ੍ਹਦੇ ਡਿਫਰੈਂਟ ਕਿਸਮ ਦੇ ਗ੍ਰੰਥ ਪੜ੍ਹਨੇ ਉਹ ਡੇਲਦੜ ਵਾਲੀ ਗੱਲ ਹੈ ਜੋ ਯੂਨੀਵਰਸਿਟੀ ਆਲੇ ਪੜ੍ਹਦੇ ਨੇ ਕਿਤਾਬਾਂ ਲਿਖਦੀਆਂ ਛੱਡ ਛੱਡ ਗਿਆਨ ਕੀ ੜਕੇ ਲਗਣੀ ਹੈ ਗੁਰਮਤਿ ਦੇ ਪੰਜਾਬ ਜਗਤਾਂਾਂ ਲਿਖੀ ਬੈਠੇ ਨੇ ਗਿਆਨ ਕੁਛ ਹੋ ਰਿਹਾ ਇਹਨਾਂ ਨੇ ਲਿਖਿਆ ਨੇ ਆਪਣੇ ਨੇ ਮਸਕੀਨ ਨੇ ਵੀ ਲਿਖਿਆ ਨੇ ਆ ਜਿਹੜਾ ਸੀ ਆਪਣੇ ਟੀਕਾ ਕੀਤਾ ਸਾਬ ਸਾਨੂੰ ਵੀ ਲਿਖਿਆ ਨੇ ਕਿੰਨੀ ਕਿਤਾਬ ਸਾਰੀ ਹੈ இந்து ਮਤ ਪੁਰਬਾਪ ਨੂੰ ਉਹ ਵੀ ਬਣੀ ਜਾਂਦਾ ਪੁਰਬਾਪ ਯੋਨ ਆਲਾ ਬਣੀ ਜਾਂਦਾ ਹੈ ਦੇਰ ਗੁਣ ਸਰਗੁਣ ਵੀ ਯੋਨ ਆਲਾ ਬਣੀ ਜਾਂਦਾ ਚਾਰੇ ਯੁਗ ਵੀ ਇਦੂ ਆਲੇ ਬਣੀ ਜਾਂਦਾ ਸਮਝਿਆ ਨਹੀਂ ਸਾਰਾ ਕੁਝ ਉਹਨਾਂ ਆਲਾ ਅਜਾ ਮਾਂ ਬਾਪ ਵੀ ਉਹ ਜਿਹਾ ਹੀ ਜਾਂਦਾ ਇਹ ਤੇ ਆਈ ਤੇ ਕਿਤੇ ਵੀ ਨਹੀਂ ਹੈ ਅਸਲ ਤਾਂ ਮੈਂ ਦੋਨੇ ਡਿਜ਼ਾਈਨ ਕੀਤਾ ਠੀਕਾ ਤਾਂ ਉਹਨੇ ਨਕਲ ਕੀਤੀ ਹੈ ਠੀਕਾ ਨਹੀਂ ਕੀਤਾ ਕਿਸੇ ਨਾਮ ਬਾਕੀ ਕਾਪੀ ਐ ਸਭ ਕੀਤੀ ਕਈ ਕੋਕ ਕਾਬ ਕਈ ਕੋਕ ਤੇ ਬਾਦ ਕੋ ਆ ਜਾਂਦਾ ਜਦ ਕਈ ਸਿਮਰਤ ਸਾਸਤਰ ਉਚਰੰਤ ਵੇਦ ਉਚਰੰਤ ਵੇਦ ਵੇਦਾਂ ਨਾਲ ਵਿੱਚ ਬਾਜੀ ਕੋਕ ਕਾਵ ਕਥਤ ਖਤੇਬ ਹੇ ਨਾਲ ਕੋਕਾ ਵਾ ਗਿਆ ਵੇਦ ਦੇ ਮੁਕਾਬਲੇ ਜੇ ਕੋਕਾ ਵੇਦ ਖੜਾ ਹੈ ਕਤੇ ਦੇ ਵਿੱਚ ਖੜਾ ਹੈ ਇਹ ਇੱਕ ਜੱਟ ਬਏ ਤੇ ਬਰੋਚੇ ਖੜਾ ਹੈ ਕੋਈ ਕਲਪਨਾ ਨੂੰ ਕਾਪਨਾ ਕੀ ਹੁੰਦੀ ਹੈ ਕਲਪਨਾ ਹੁੰਦੀ ਹੈ ਕਲਪਨਾ ਹੀ ਨਾਮ ਦਾ ਵਿਰੋਧ ਕਰ ਰਹੀ ਹੈ ਜਿੰਨਾ ਜਰ ਕਲਪਨਾ ਹੈ ਕਲ ਸਾਡੇ ਅੰਦਰ ਬਾਸ਼ਨਾ ਕਿ ਸੱਚੀ ਦੀ ਵੀ ਹੈ ਜਾਂ ਕਲਪਨਾ ਦੇ ਪਿੱਛੇ ਬਾਸ਼ਨਾ ਕੋਈ ਨਾ ਕੋਈ ਕਲਪਨਾ ਦੇ ਪਿੱਛੇ ਕੋਈ ਬਾਸ਼ਨਾ ਹੋਵੇ ਚਾਹੇ ਬਾਸ਼ਨਾ ਹੈ ਸਮਝਿਆ ਨਹੀਂ ਕੋ ਕਾਲੀ ਬਾਸ਼ਨਾ ਵੀ ਇੱਕ ਬਾਸ਼ਨਾ ਹੀ ਹੈ ਇਹ ਇਹ ਜਿੰਨਾ ਚਿਰ ਕਲਪਨਾ ਚੱਲਦੀ ਹੈ ਉਹਨਾਂ ਇੱਥੇ ਨਾਮ ਪ੍ਰਗਟ ਨਹੀਂ ਹੋ ਸਕਦਾ ਕਲਪਨਾ ਬੰਦ ਹੋਏ ਜੋਗੀ रहे? ਕਰ ਰਹੇ ਕਲਪਨਾ ਹੀ ਤਾਂ ਬੰਦ ਕਰ ਰਹੇ ਨੇ ਉਹਨਾਂ ਨੂੰ ਪਤਾ ਵੀ ਇਹਦੇ ਵਿਰੁੱਧ ਇਹ ਕੀ ਹੈ ਕਲਪਨਾ ਦੇ ਹੱਕ 'ਚ ਉਹ ਖੜਾ ਕਲਪਨਾ ਨੂੰ ਜੇ ਮਾਲ ਨਾਲ ਤੇ ਜੱਜ ਜ਼ਰੂਰੀ ਹੈ ਉਹਨਾਂ ਨੇ ਮੰਨ ਲਿਆ ਜੋ ਕਿ ਆ ਨਾ ਮੰਨ ਲਿਆ ਹਾਂ ਵੀ ਕੋ ਕੋ ਕਹਿੰਦੇ ਹੱਕ じゃ ਕਲਪਨਾ ਦੇ ਨੂੰ ਛੱਡਣੀ ਨਹੀਂ ਦੇਣੀ ਇਹਦਾ ਇੱਥੋਂ ਹੀ ਫਾਸਾ ਵੱਢੀਏ ਉਹਨਾਂ ਨੇ ਆਪਣੀ ਵੱਤ ਤਸਵੀਰ ਬਨ ਲਈ ਪਰ ਗੁਰਮਤਿ ਨਾਲ ਇਹ ਗੱਲ ਰੱਦ ਕਰਤੀ ਇਹਦੀ ਰਸਤਾ ਸੀ ਗੁਰਵਾਤਨ ਰੱਦ ਕੀਤਾ ਹੈ ਕਹਿੰਦੇ ਜਤੀ ਸਦਾਇ ਯੁਗਤ ਨਾ ਜਾਣੇ ਛੱਡ ਬਹੇ ਘਰਬਾਰ ਇਤੋਂ ਯੁਗਤੀ ਭੁੱਲ ਗਏ ਤੁਸੀਂ ਇਹ ਯੁਗਤੀ ਉਲਟੀ ਕਰ ਲਈ ਤੁਸੀਂ ਇਹ ਯੁਗਤੀ ਨਹੀਂ ਸੀ ਉਹ ਨਾਲੀ ਗੱਲ ਜੋਗੀਆਂ ਦੀ ਕੱਟੀ ਉਥੋਂ ਯਤੀ ਸਦਾਇ ਯੁਗਤ ਨਾ ਜਾਣੇ ਇਹ ਸੰਸਾਰ ਪੈਰਾ ਕਰਨਾ ਤਿੰਨ ਗੁਣ ਤੇਰੇ ਜਨ ਪੈਦਾ ਕੀਤੇ ਪੈਦਾ ਵੀ ਤਾਹ ਕਰਨਾ ਸੰਸਾਰ ਮਾਰਨਾ ਵੀ ਤਾਹ ਸੰਸਾਰ ਹੈ ਪਰਣਾ ਵੀ ਤਾਹ ਸੰਸਾਰ ਹੈ ਕਰੋੜਾ ਤੇ ਤੋਂ ਪਰਮੇਸ਼ਰ ਵੀ ਚੱਲ ਇੱਥੋਂ ਪਾਣੇ ਤੋਂ ਤੁਸੀਂ ਹਟ ਗਏ ਉਹਨੇ ਜਦ ਤਾਹ ਕੀਤਾ ਪਾਣੇ ਦਾ ਵਿਰੋਧ ਕੀਤਾ ਉੱਥੇ ਉਹਨਾਂ ਨੇ ਆ ਗੱਲ ਕਹੀ ਹੋਈ ਉੱਥੇ ਇਹਨੂੰ ਕਹਿੰਦੇ ਨੇ ਧਰਮ ਦੀ ਪੜਾਈ ਇਹਨਾਂ ਨੂੰ ਕੀ ਬਦਾ ਧਰਮ ਦੀ ਬਣਾਈ ਕੀ ਹੁੰਦੀ ਹੈ ਇਹ ਤਾਂ ਵਿਰੋਧ ਹੋ ਗਿਆ ਜੇ ਡਿਊਟੀ ਸਾਡੀ ਹੈ ਇਹ ਕਰੋਨਾ ਸਾਤੇ ਹੁਕਮ ਹੈ ਇਹ ਹੈ ਹੁਕਮ ਦਾ ਵਿਰੋਧ ਹੈ ਕੋਈ ਨਾ ਵਿਰੋਧ ਅਸੀਂ ਕਿਤੇ ਨਹੀਂ ਕਰ ਸਕਦੇ ਕਿਤੇ ਵੀ ਗੱਲ ਹੁਕਮ ਦਾ ਵਿਰੋਧ ਸੁਖਮ ਜੀ ਰਹਿ ਗਏ ਤੁਸੀਂ ਕੁਝ ਵੀ ਕਰੋ ਕੋਈ ਪੁਰਬਾਪ ਨਹੀਂ ਉਹ ਕੋਨੇ ਬਾਹਰ ਜਾ ਜਾਓਗੇ ਪਰ ਪੁਰਬਾਪ ਗੁਰਬਾਣੀ ਪੁਰਬਾਪ ਨੂੰ ਮੰਦੀ ਦੀ ਸਾਬ ਸੋ ਪੁਰਬਾਪ ਹੁੰਦਾ ਉਹ ਰਣਿਤ ਮੰਨਦੇ ਨਹੀਂ ਉਹ ਤਾਂ ਮੰਨਦਾ ਕਿਉਂਕਿ ਬਾਂਬਣ ਬੰਦਦਾ ਤਾਂ ਬੰਦਦਾ ਅੱਜ ਦਾ ਸਿੱਖ ਸਾਰਾ ਪੱਟੜ ਦਾ ਕੇਲਾ ਹੈ ਇਹ ਹੀ ਇਹਨਾਂ ਦਾ ਰੰਗ ਚੜਿਆ ਹੋਇਆ ਜਿਹੜੇ ਵੱਡੇ ਵਿਦਵਾਨ ਕਹਾਂਗੇ ਨਾ ਆਪਣੇ ਆਪ ਨੂੰ ਅਸਲ ਚ ਪੱਟੜ ਦੇ ਕੇਲੇ ਨੇ ਉਹੀ ਬਾਤ ਉਹਨਾਂ ਨੇ ਪੜ੍ਹੀ ਹੋਈ ਹੈ ਉਹੀ ਲਾਹ ਰਹਿ ਰਹੀ ਚੀਜ਼ ਦਸਮ ਦੇ ਵਿੱਚ ਆ ਉਹ ਜਿਹੜਾ ਰੰਗ ਚੜਿਆ ਹੈ ਉਹ ਲਾਹ ਰਹਿ ਨੇ ਅਸਲ ਦੇ ਵਿੱਚ ਦਸਮਗਣਾ ਚ ਪੂਰਾ ਈ ਲਾਹਤਾ ਹੋ ਆਦ ਵਿੱਚ ਵੀ ਲਾਹ ਅਈ ਤੇ ਬਿਲਕੁਲ ਐ ਫੱਟੀ ਪੋਜਦੀ ਥਲੇ ਤੱਕ ਉਹਨਾਂ ਨੂੰ ਕੀ ਪਤਾ ਕੀ ਸਮਝ ਐ ਇਹਨਾਂ ਨੂੰ ਵੀ ਗੱਲ ਕੀ ਐ ਤਰਬਾ ਗਿਆਨ ਹੋਵੇ ਤਾਂ ਪਤਾ ਲੱਗੇ ਕੱਲ ਫੇਰ ਉਹਨਾਂ ਲਿਖਦਾ ਸੁਭੋਗਦਮਨ ਅਗੈ ਜਿਹੜਾ ਧਰੂਦਾਰਾ ਇਹਦਾ ਉਸੇ ਦਾ ਕਾਲਾ ਭਗਾਨਾ ਸਿੱਖੀ ਦਾ ਧਰੂਦਾਰਾ ਉਹ ਜਿਹੜਾ ਸਿੱਖੀ ਦਾ ਧਰੂਦਾਰਾ ਉਹਨੂੰ ਮੰਨਦੇ ਹੋ ਤਾਂ ਤੁਸੀਂ ਕਿਹੜੇ ਤਾਰੇ ਹੋਏ ਇਹ ਹੁਣ ਸਾਨੂੰ ਪਤਾ ਲੱਗ ਗਿਆ ਉਹਨੂੰ ਦੋਦਾਰਾ ਬੰਦੇ ਉਹਦੇ ਕੇਲੇ ਨੇ ਫਿਰ ਉਹਦਾ ਡੇਰਾ ਹੀ ਉਹਦਾ ਤਾਂ ਪਤਾ ਹੀ ਆ ਵੀ ਕੀ ਸੀ ਜਿਹਨੂੰ ਇਹ ਪਤਾ ਨਹੀਂ ਪਤਾਸਿਆਂ ਦੀ ਮਿਠਾਸ ਨਾਲ ਦੀ ਮਿਠਾਸ ਕੋਈ ਜੀ ਹੁੰਦੀ ਆ ਵੀ ਫਰਕ ਆ ਇਹ ਤਾਂ ਉਹਨੂੰ ਪਤਾ ਨਹੀਂ ਇਹ ਉਹਨੂੰ ਦਰਉ ਤਾਰਿਆ ਗਏ ਨੇ ਉਹਦੇ ਕੇਲੇ ਨੇ ਫਿਰ ਇਹ ਕਈ ਕੋ ਕਾਵ ਕਥਤ ਕਈ ਕੋ ਕਾਵ ਕਥਤ ਕਤੇਵ ਤੇ ਮੈਨਾਂ ਨੇ ਕਥੀ ਹੈ ਕੁਰਾਨ ਕਈ ਕੋ ਕਾਮ ਕਰਦੇ ਨੇ ਕਈ ਕੁਰਾਨ ਦੀ ਉਹ ਕਰਦੇ ਨੇ ਕਈ ਅਗਨੋ ਹੋਤਰ ਕਈ ਪੌਣ ਆਹਾਰ ਕਈ ਅਗਨ ਦੇ ਵਿੱਚ ਉਹ ਹੋ ਕਰੀ ਜਾਂਦੇ ਨੇ ਕਈ ਪੌਣ ਹਰੀ ਦੇ ਕਈ ਕਰਤਕੋਟ ਮ੍ਰਿਤਕੋ ਆਹਾਰ ਕਈ ਮ੍ਰਿਤਕੋ ਆਹਾਰ ਮ੍ਰਿਤ ਨੂੰ ਮਿੱਟੀ ਲਿਖਿਆ ਇਹਨਾਂ ਤੇ ਮਿੱਟੀ ਦੀ ਹੁੰਦਾਂ ਬਰਤਾਂ ਮਦਦ ਨਾਲ ਬਸ ਦੇ ਮਰਦ ਹੋ ਜਾਂਦੀ ਹੈ ਨਾ ਸਰੀਰ ਮਰਤ ਹੋ ਜਾਂਦਾ ਜਿਉਂਦਾ ਤਾਂ ਖਾਣਾ ਮਰਤ ਯਾਨੀ ਮਾਸahari ਜਿਹੜੇ ਮੱਛੀਆਂ ਨੇ ਜਲਦੇ ਵੀ ਜੀਵ ਨੇ ਬਾਹਰ ਵੀ ਐਸੇ ਆਦਮੀ ਨੇ ਮੁਸਲਮਾਨ ਨੇ ਮਾਸahari ਨੇ ਸਾਰੇ ਅੰਗਰੇਜ਼ ਨੇ ਮਾਸahari ਨੇ ਕਈ ਐਸੇ ਨੇ ਜਿਹੜੇ ਸ਼ਬੀਹ ਕੇਲੇ ਮਾਸahari ਨੇ ਬਹੁਤ ਖੁੰਦੇ ਮਾਸ ਰਹੇ ਉਹ ਜੋ ਕਰਦੇ ਨੇ ਬਿਰਤਕੋ ਆਰ ਕਈ ਸ਼ਬਿਆਂ ਸ਼ਬਿਆਂ ਵਿੱਚ ਜਾ ਕੇ ਮੁਰਦੇ ਦੇ ਵਿੱਚੋਂ ਗਮਾਸ ਖਾ ਜਾਂਦੇ ਨੇ ਜਲਦੇ ਚੋਂ ਕੱਢ ਕੇ ਐਸੇ ਵੀ ਹੋਇਆ ਇੱਥੇ ਕੋਈ ਕਈ ਸਾਗ ਜਿਹੜਾ ਹੁੰਦਾ ਸਬਜ਼ੀਆਂ ਹੀ ਚਾਹ ਪੱਤੇ ਹੀ ਪੈਣ ਇਹਦੇ ਗੁਜ਼ਾਰਾ ਕਰਦੇ ਦੇਖੋ ਉਧਰ ਮਾਸਖਾਨ ਵਾਲਿਆਂ ਨੇ ਇੱਥੇ ਹੈ ਉਹ ਵੀ ਮਾਸ ਪੱਤੇ ਵੀ ਪੱਤਿਆਂ 'ਚ ਕਹਿੰਦੇ ਜੀਵ ਨਹੀਂ ਉਹ ਪੱਤਾ ਦਾ ਜਿਉਂਦਾ ਪਾਤੀ ਪਾਤੀ ਜਿਉ ਪਾਤੀ ਤੋੜੇ ਮਾਲੜੀ ਜਿਸ ਬਾਹਨ ਕੋ ਪਾਤੀ ਤੋੜਨਾ ਸੋ ਪਾਹਨਰ ਜਿਉ ਓਏ ਉਹਦਾ ਮਰੇ ਨੂੰ ਖਾਂਦੇ ਨੇ ਤੁਸੀਂ ਜਿਲਦੇ ਰੁਖਾਈ ਜਾਂਦੇ ਹਮ ਅਕ ਗਿਆਨ ਦੀ ਘਾਟ ਹੈ ਸਿਰਫ ਗੱਲ ਕੀ ਸੀ ਧਰਮ ਬਿਸ਼ਾ ਖਿਆਲ ਦਾ ਇਹ ਗਿਆਨ ਨਹੀਂ ਉਹ ਧਰਮ ਹੈ ਜੀ ਇਹਨਾਂ ਲੋਕਾਂ ਕੋ ਗਿਆਨ ਬਿਲਕੁਲ ਜੜੇ ਰੌਲਾ ਪਾਉਂਦੇ ਨੇ ਵਿਦਵਾਨ ਗਿਆਨ ਇਹਨਾਂ ਕੋਲ ਹੋਵੇ ਤਾਂ ਸਾਬਤ ਹੋ ਜਾਣਾ ਵੀ ਇਹਨਾਂ ਕੋਲ ਗਿਆਨ ਦੀ ਸਾਬਤ ਕਰ ਦੇ ਗਿਆਨ ਹੈ ਤੁਹਾਡੇ ਕੋਲ ਗਿਆਨ ਸਾਬਤ ਕਰ ਦੇਣਾ ਸੀ ਸਾਰੀਆਂ ਗੱਲਾਂ ਇਹਨਾਂ ਦੀ ਮੰਨ ਲਾਂਗੇ ਤੁਹਾਨੂੰ ਧਰਮ ਦਾ ਗਿਆਨ ਹੈ ਸਾਬਤ ਕਰ ਦੇ ਸਭ ਕੁਝ ਮੰਨ ਲਾਂਗੇ ਅਸੀਂ ਕੋਈ ਰੌਲਾ ਨਹੀਂ ਬਣੂਗਾ ਆ ਗਿਆਨ ਨਾਲ ਬਰੋਦੀਆਂ ਗੋਲ ਵੀ ਨਹੀਂ ਹੈ ਇਹ ਵੀ ਗੱਲ ਹੈ ਚਾਹੇ ਉਹ ਦਸਦੇ ਹੱਕ ਚ ਇਹਨੇ ਗਿਆਨ ਉਹਨਾਂ ਨੂੰ ਵੀ ਨਹੀਂ ਹੈ ਸ਼ਰਧਾ ਹੈ ਉਹਨਾਂ ਕੋਲ ਖਰਦਾ ਹੈ ਵੀ ਭਾਈ ਖਾਲਸੇ ਨੇ ਜਿਹੜਾ ਫੈਸਲਾ ਕੀਤਾ ਸੀ ਠੀਕ ਹੈ ਕੀਤਾ ਸੀ ਜਾਂ ਸਰ ਲੈ ਤੇ ਤਾਂ ਹੀ ਕੀਤਾ ਸੀ ਤੂੰ ਗਿਆਨ ਨਹੀਂ ਉਹਨਾਂ ਕੋ ਖੜਦਾ ਹੈ ਉਹ ਉਸ ਗੱਲ ਤੇ ਖੜੇ ਨੇ ਇਹ ਉਹਦੇ ਵੀ ਨਹੀਂ ਖੜੇ ਇਹ ਉਹਦੇ ਵੀ ਨਹੀਂ ਖੜੇ ਇਹ ਰਾਖਸ਼ ਬੁੱਧੀ ਵਾਲੇ ਨੇ ਨਹੀਂ ਤਦਪੋ ਤਾਂ ਵੀ ਕਹਿੰਦੇ ਦੇਵ ਪ੍ਰਤੱਖ ਦਰਸ਼ਨ ਦੇ ਰਿਹਾ ਉਹਨਾਂ ਨੂੰ ਹੋ ਕੇ ਪੱਤਰ ਪਛ ਕਰਦੇ ਨੇ ਫੜਵਰੀ ਘੱਦੇ ਫੇਰ ਵੀ ਦੇਵਤਾ ਪ੍ਰਤਖ ਹੋ ਕੇ ਦਰਸ਼ਨ ਨਹੀਂ ਦੇ ਰਿਹਾ ਕਈ ਗੀਤ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕਈ ਗੀਤ ਗਾਉ ਸਾਰੇ ਧਰਮ ਕਾਦਮੀ ਨਹੀਂ ਜਿਹੜੇ ਕਾਮਯਾਬ ਨਹੀਂ ਹੋ ਰਹੇ ਇੰਨਾ ਕੁਝ ਕਰਕੇ ਇਹ ਘਰ ਬੈਠੇ ਕਾਮਯਾਬ ਹੋਏ ਇਹਨਾਂ ਨੂੰ ਸੁਭਰਾਂ ਜੇ ਪਦਾਂ ਦੇ ਦਰਸ਼ਨ ਹੋ ਗਏ ਸੁਭਨ ਕਈ ਗੀਤ ਕਾਹਨ ਗੰਧਰਵ ਰੀਤ ਕਈ ਗੀਤ ਕੋਦੇ ਨੇ ਗੰਧਰਵ ਰੀਤ ਹੈ ਜਿਵੇਂ ਰਾਗ ਵਿਦਿਆ ਰੰਗ ਵਿਦਿਆ ਸਕਦੇ ਨੇ ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ ਕਈ ਵੇਦ ਸ਼ਾਸਤਰਾਂ ਦੀ ਵਿਦਿਆ ਦਾ ਵਿਦਿਆ ਦੇ ਉੱਤੇ ਭਰੋਸਾ ਰੱਖਦੇ ਨੇ ਵੀ ਇਹ ਵਿਦਿਆ ਲੈ ਕੇ ਗਾਨ ਇਸ ਗਾਨ ਦਾ ਕਲਿਆਣ ਹੋ ਜੂ ਕਬੀਰ ਵੀ ਇਹੀ ਗੱਲ ਕਰਦਾ ਕਹਿੰਦਾ ਮੈਂ ਜਾਣੋ ਪੜਬੋ ਭਲੋ ਮੈਂ ਤਾਂ ਇਹਨ ਮੈਨੂੰ ਤਾਂ ਇਹ ਦੱਸਿਆ ਗਿਆ ਸੀ ਵੀ ਪੜਨ ਵਾਲੇ ਕਲਿਆਣ ਹੋ ਜਾਣ ਆਹੀ ਗੱਲ ਹੈ ਆਏ ਹੈਗਾ ਮੈਂ ਜਾਣੋ ਪੜਬੋ ਭਲੋ ਪਰ ਜਦ ਪੜ ਗਿਆ ਸਾਰਾ ਕੁਝ ਫਿਰ ਹੁਣ ਪਤਾ ਲੱਗਾ ਪੜਬੋ ਸੇ ਭਲੋ ਜੋਗ ਜਿਨਾ ਜਰ ਮਲਾਪ ਨਹੀਂ ਹੁੰਦਾ ਉਹਨਾਂ ਜਰ ਪੜਾਈ ਨਾਲ ਕੀ ਬਣੂਗਾ ਜਿਦਾਂ ਜਿਹੜਾ ਅਵਸਥਾ ਰੋਲ ਨਹੀਂ ਹੁੰਦੀ ਬਨਾਰਚਤ ਹਮੇਸ਼ਾ ਵਾਂਟੇ ਇਕੱਲੇ ਰਹਦੇ ਪਰ ਪੜ੍ਹਾਈ ਦਾ ਤਾਂ ਕੁਝ ਨਹੀਂ ਪੜਨਾ ਪਰ ਕਹਾਂ ਹੁੜਪਤਾਲ ਕੇ ਪੜਬੋਸੇ ਭਲੋ ਜੋਗ ਹੁਣ ਜੋਗ ਹੋ ਗਿਆ ਭਲਾ ਵੀ ਹੋ ਗਿਆ ਪਤਾ ਲੱਗਿਆ ਪੜਬੋਸੇ ਭਲੋ ਜੋਗ ਜੋਗ ਹੋਇਆ ਉਹਦਾ ਇੱਕ ਬੰਦਾ ਕਿਤੇ ਹੋਇਆ ਖੜਾ ਤਾਂ ਕਹਿ ਰਿਹਾ ਵੀ ਅਸਲ ਦੇ ਵਿੱਚ ਪੜਬੋਸੇ ਭਲੋ ਜੋਗ ਹੈ ਪੜਬੋ ਭਲੋ ਨਹੀਂ ਸੀ ਹਣ ਕਹਿੰਦਾ ਭਗਤ ਨੂੰ ਛੋਡੂ ਆਰਾਮ ਕੀ ਭਾਵੇਂ ਦੋ ਲੋਕ ਹੁਣ ਮੈਂ ਭਗਤੀ ਨਹੀਂ ਛੱਡਦਾ ਪਾਪੋ ਮੇਰੀ ਰੱਦਿਆ ਖਰੀ ਜਾਓ ਰੱਦਿਆ ਕਰਦੇ ਹੀ ਸੀ ਵਿਦਵਾਨ ਦੰਦਿਆ ਕਰਦੇ ਹੀ ਸੀ ਸਾਰੇ ਕਾਸ਼ੀ ਦੇ ਉਹਨਾਂ ਦੇ ਖਲਾਫ ਬੋਲਦਾ ਸੀ ਆਇੜੇ ਵਿਦਵਾਨ ਬੋਲਦੇ ਨੇ ਨਾ ਇਹ ਜੇ ਇਦੋਂ ਦਾ ਬਹੁਤ ਚੰਗੇ ਤੇ ਕਾਸ਼ੀ ਵਾਲੇ ਉਹ ਤਾਂ ਕੁਝ ਕਰਦੇ ਸੀ ਉਹ ਤਾਂ ਸ਼ਾਸਤਰਾਂ ਦਾ ਗਿਆਨ ਰੱਖਦੇ ਸੀ ਇਨਾ ਤਾਂ ਘਾਸਦਾ ਵੀ ਨਹੀਂ ਪਤਾ ਪੜਿਆ ਹੀ ਕੁਝ ਨਹੀਂ ਇਹਨਾਂ ਤਾਂ ਕਹੂੰ ਬੇਦਰੀਤ ਜਗ ਆਦ ਕਰਮ ਕਹੂੰ ਬੇਦਰੀਤ ਜਗ ਆਦ ਕਰਮ ਕਿਤੇ ਬੇਦਰੀਤ ਹੈ ਜਗ ਆਦ ਕਰਮ ਨੇ ਕਰਮ ਹੈ ਨੇ ਕਰਨਾ ਹੈ ਜਗ ਆਦ ਕਰਮ ਕਰਦੇ ਜਗ ਦਾ ਵਿਦਾਨਪਨ ਕਰਨਾ ਲੋਕਾਂ ਨੂੰ ਗਰੀਬ ਹੁੰਦੇ ਸੀ ਲੋਕ ਜਗ ਕਰਨੇ ਜਾਹੇ ਪਬਲਿਕ ਤੋਂ ਇਕੱਠੇ ਕਰਕੇ ਪੈਸੇ ਕਰਦੇ ਸੀ ਯਾਨੀ ਉਹਨਾਂ ਨੇ ਆਪ ਨਹੀਂ ਸੀ ਕੁਝ ਵੀ ਉਹਦੇ ਵਿੱਚ ਰੱਖਦੇ ਪ੍ਰੇਰ ਕਈ ਕਰਦੇ ਸੀ ਪਬਲਿਕ ਨੂੰ ਦਾ ਚਰੋ ਦਾਨ ਹੁੰਦਾ ਹੀ ਹੈ ਅਮੀਰਾਂ ਕੋਲੋਂ ਲੈ ਲੈਣਾ ਜੀ ਨਾ ਕੋ ਸੀ ਵੀ ਭਾਈ ਗਰੀਬਾਂ ਨੂੰ ਪ੍ਰੇਰ ਕੇ ਵੀ ਗਰੀਬਾਂ ਨੂੰ ਦਿਓ ਦਾਨ ਕਰੋ ਕਹੂੰ ਮਗਨ ਹੋਤਰ ਕਹੂੰ ਤੀਰਥ ਧਰਮ ਕਿਤੇ ਅਗੰਦੇ ਵਿੱਚ ਉਹੀ ਅਗੰਦੇ ਵਿੱਚ ਪਾਉਂਦੇ ਨੇ ਕਿਉਂ ਤੇ ਕਿਉਂ ਦੇ ਪਦਾਰਥ ਅਗਰ ਚ ਪਾਈ ਜਾਂਦੇ ਨੇ ਗਰੀਬ ਚਾਹੇ ਭੁੱਖੇ ਮਰ ਜਾਂਣ ਕਿਉਂ ਉਹ ਲੈ ਟੀਨਾਂ ਦੇ ਟੀਨ ਪਾ ਲੈਣ ਗਰੀਬਾਂ ਨੂੰ ਦੇਣੇ ਨਹੀਂ ਉਹਨਾਂ ਦੇ ਬੱਚਾ ਦੇਣੇ ਵੀ ਤੁਸੀਂ ਦੁੱਧ ਨਹੀਂ ਸਾੜ ਦੇਣਾ ਉਹਨਾਂ ਵਾਲਾ ਦੇ ਪੂਜੋ ਖੋਲਣ ਇਹ ਪੁੱਠਾ ਕੰਮ ਗੁਰਮਤਿ ਨੇ ਰੱਦ ਕਰਤੇ ਸਾਰੇ ਕੰਮ ਇਹ ਨਹੀਂ ਕਰ ਕਹੂੰ ਤੀਰਥ ਧਰਮ ਉਹ ਉਹਨਾਂ ਦੇ ਜਾਨਵਰਾਂ ਦੇ ਬੱਚਿਆਂ ਨੂੰ ਪੀਣਨ ਤੋਂ ਦੁੱਧ ਫਿਰ ਉਹਨਾਂ ਦੇ ਮੂੰਹ 'ਚੋ ਵੀ ਖੋਲਿਆ ਆदमी ਦੇ ਬੱਚਿਆਂ ਦੇ ਮੂੰਹ 'ਚੋ ਵੀ ਖੋਲਿਆ ਉੱਥੇ ਰੋੜ ਦਿੱਤਾ ਅਗਰੇ ਵਿੱਚ ਇਹ ਮੂਰਖਾਂ ਨੇ ਕੰਮ ਕੀ ਸਾਰੇ ਰਿਸ਼ੀਮੁਰੇ ਇਹ ਕਰਾਉਂਦੇ ਜਿਹਨਾਂ ਦੀ ਬਹੁਤੀ ਇੱਜ਼ਤ ਕਰਦੇ ਨੇ ਅੱਜ ਇਹ ਅਧਾਰੇ ਰਿਸ਼ੀਮੁਰੇ ਆਹੀ ਕੁਛ ਕਰਦੇ ਸੀ ਭਗਤਾਂ ਦੇ ਰਿਸ਼ੀਮੁਰੇ ਨੂੰ ਕਾਸ ਵੀ ਗੇਰੀ ਹੋਈ ਬਰਬਤਰੀ ਕਾਖ ਦੇ ਦਈਆਂ ਇਹਨਾਂ ਨੂੰ ਰਿਸ਼ੀਮੁਰਿਆਂ ਨੂੰ ਹੈ ਤਾਂ ਵਿਦਵਾਨ ਨੇ ਮੰਨਦਾ ऋषि मुनिया ਦੇ ਖਿਲਾਫ ਬੋਲਦੇ ਸੀ ਭਗਤਾਂ ਉਹਨਾਂ ਨੇ ਦੰਦਿਆ ਕਰਦੇ ਸੀ ਇਹ ऋषि मुनिਆ ਦੇ ਕਬੀਰ ਕਹਿੰਦਾ ਕੌਣ ਬੁਰੀ ਜੋ ਮਨ ਕੋ ਮਾਰਾ ਹੈ ਕਿਹੜਾ ਬੁਰੀਆ ਤੁਹਾਡਾ ਜੀ ਨੇ ਮਨ ਨੂੰ ਮਾਰਿਆ ਹੋਵੇ ਦੱਸੋ ਮੈਨੂੰ ਸਾਰੇ ਮਨਮੁਖ ਸੀ ਕਹਿਣ ਲੱਗ ਪੜਾ ਸਾਰੇ ਰਿਸ਼ੀ ਮਨਮੁਖ ਸੀ ਐਡੀ ਬਣੀ ਗੱਲ ਉਹਨੇ ਕਾਸ਼ੀ ਬੈਠ ਕੇ ਕਹਿਤੀ ਕਿਵੇਂ ਬਰਦਾਸ਼ਤ ਕਰਦੇ ਤਾਂ ਦੋ ਲੋ ਘਰ ਲੋਕ ਰੱਦਿਆ ਕਰਦੇ ਲੋ ਜੀ ਤਾਂ ਰਿਸ਼ੀਆ ਬੁਰੀ ਨੂੰ ਮਾਰੇ ਕਹਿ ਰਿਹਾ ਵਾੜੇ ਕਾ ਨੂੰ ਕਹਿ ਰਿਹਾ ਉਹਨੇ ਬਾੜੇ ਨਹੀਂ ਗਿਆ ਉਹ ਕਹਿੰਦਾ ਮੈਂ ਦੱਸੋ ਕੀ ਨਾ ਮਨੂ ਵਾਰਿਆ ਪੁੱਛ ਰਿਹਾ ਤੋ ਤੇ ਕੁਝ ਤੂੰ ਹੀ ਕਹ ਰਿਓ ਦੁਬਿਆ ਕਰੇ ਸਾਡੇ ਸਾਥ ਦੇ ਦਾਦਣ ਕਿਹੜਾ ਆ ਕੀ ਨਾ ਮਨੂ ਵਾਰਿਆ ਮਨੂ ਦੀ ਕਿਹਨਾਂ ਗੱਲ ਕੀਤੀ ਹੈ ਬਾੜਾ ਫੇਰ ਦੀ ਗੱਲ ਕੀਤੀ ਹੈ ਬਾੜਾ ਦਾ ਗੁਰਮਤ ਘਟਦੀ ਹੈ ਨਾਮ ਜਪਣ ਦੀ ਗੱਲ ਕੀਤੀ ਹੈ ਨਾਮ ਉਹਦਾ ਕੋਈ ਹੁੰਦਾ ਹੀ ਨਹੀਂ ਫੇ ਕੀ ਕਰਦੇ ਰਹੇ ਬੈਠੇ ਭੋਰਿਆਂ ਜੀ ਦੱਸਣ ਕੀ ਕਰਦੇ ਰਹੇ ਉਹ ਨਹੀਂ ਦੱਸਿਆ ਨਾ ਛੇਲੇ ਦਾਦਣ ਕੀ ਕਰਦੇ ਰਹੇ ਕੀ ਪ੍ਰਾਪਤੀ ਹੋਈ ਤੁਹਾਨੂੰ ਕੀ ਦੇਗੇ ਹੋ ਚਲੋ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਦੇਗੇ ਗੁਰਨਾਰਗ ਅੱਗਰ ਦੂ ਦੇ ਗਿਆ ਲੱਖ ਖਿਆਨਾਂ ਦੇ ਗਿਆ ਦੇ ਗਿਆ ਨਾ ਦੇ ਗਿਆ ਅਗਰ ਨਬਰਾ ਸੁ ਦੇ ਗਿਆ 10 ਪੀੜੀਆਂ ਤੱਕ ਚੱਲਿਆ ਖਿਆਨ ਤੁਸੀ ਉਹਨਾਂ ਦੇ ਦਿਲ ਦੀ ਵਜਾਇ ਆਪਣੇ ਦੇ ਰਹਿਆ ਤੇ ਆਪਣੇ ਜਿਹੜੇ ਸੱਤ ਸੀ ਉਹਨਾਂ ਦੇ ਦਿਲ ਬਣਾਉ ਰਹੇ ਉਹਨਾਂ ਦੇ ਮੁਕਾਬਲੇ ਚ ਦੱਸੋ ਤੁਹਾਨੂੰ ਕੀ ਦੇਗੇ ਦਿਖਾਓ ਉਹਨਾਂ ਨੇ ਤਾਂ ਸਾਨੂੰ ਕੁਰਬਾਨੀ ਦੇ ਦਿੱਤੀ ਕਾਨੂੰ ਵੀ ਦੇ ਤੀ ਤੁਸੀਂ ਤੁਹਾਨੂੰ ਦੱਸੋ ਕੀ ਦੇਗੇ ਉਹ ਦਿਖਾਓ ਕੀ ਹੈ ਕੋਈ ਲੜਾਈ ਵਾਲੀ ਗੱਲ ਨਹੀਂ ਦਿਖਾਓ ਕੀ ਹੈ ਜੇ ਕੁਝ ਹੈ ਤਾਂ ਅਸੀਂ ਮੰਨਾਂਗੇ ਜਾਇ ਤੁਹਾਡੇ ਦਨ ਬਲੋੜੇ ਉਹਨਾਂ ਦੇ ਜੇ ਸਿਰਫ ਆ ਬਣਾ ਕੇ ਨਾ ਰੋਟੀ ਦਾ ਸਾਧਨ ਦੇਗੇ ਤੁਹਾਨੂੰ ਬਣਾ ਕੇ ਡੇਰਾ ਇਹ ਤਾਂ ਰੋਟੀ ਬਣਦੀ ਹੈ ਸੰਗ ਦੇ ਕੇ ਇੱਕ ਬਣਾ ਕੇ ਉਹ ਤਾਂ ਤੁਹਾਨੂੰ ਪੈਸੇ ਬਣਦੇ ਨੇ ਫੇਰੇ ਫਰਾਡ ਹੈ ਫਿਰ ਆਪਣਾ ਜੀਵਨ ਖਰਾਬ ਕਰਕੇ ਤੁਹਾਡਾ ਖਰਾਬ ਹੋ ਰਿਹਾ ਫੇ ਤਾਂ ਮਾਇਦਾਰੀ ਹੋ ਸੀ ਆਪ ਡੁੱਬੇ ਸੀ ਥੋੜੂ ਡੋਬ ਗਏ ਆਪ ਜਦ ਡੁੱਬੇ ਚੋਂ ਫੇਰ ਮੈਂ ਚੇਲੇ ਦੀਏ ਵਾਹੇ ਆਪ ਡੁੱਬੇ ਹੋਏ ਸੀ ਤੁਹਾਨੂੰ ਡੋਬ ਗਏ ਫਿਰ ਇਹ ਗੱਲ ਆ ਦੱਸੋ ਕੀ ਸੀ ਇਦਾਂ ਤੁਸੀਂ ਲੋਕਾਂ ਨੂੰ ਘਬਰਾਜੋ ਕਰ ਰਹੇ ਹੋ ਇਹ ਰੂਗ ਲਾ ਕੇ ਦੱਸੇ ਰਹੋ ਕੀ ਸੀ ਸਾਨੂੰ ਵੀ ਤਾਂ ਪਤਾ ਲੱਗੇ ਅਰੇ ਝਗੜੇ ਪਏ ਨੇ ਡੇਰਿਆਂ ਤੇ ਖਿਲਾਫ ਲੋਕ ਬੋਲਦੇ ਨੇ ਇਹ ਤਾਂ ਟਿਕ ਜਾਣ ਫੈਸਲਾ ਤਾਂ ਹੋਵੇ ਯਾਰ ਤੁਸੀਂ ਛੱਡ ਦਿਓ ਇਹ ਆਸੀਂ ਵੀ ਤੁਹਾਨੂੰ ਬੋਲਣ ਲੱਗੀ ਜਾਂ ਤਾਂ ਤੁਸੀਂ ਛੱਡ ਕੇ ਆ ਜਾਓ ਇੱਧਰ ਇਹ ਆਸੀਂ ਤੁਹਾਨੂੰ ਬੋਲਣ ਲੱਗ ਜੀ ਪਿੱਛੇ ਮਾਰ ਲਈਏ ਸਾਰੇ ਸਾਤਾਂ ਨੂੰ ਅਰਦਾਸ ਦੇ ਜੇ ਗੁਰੂ ਸੀ ਦੱਸੋ ਤਾਂ ਸਹੀ ਤੁਹਾਡੇ ਕੋਲ ਦਿਖਾਓ ਕੀ ਹੈ ਕੁਛ ਦੀ ਕੋਲ ਕੀ ਆ ਪਖੰਡ ਹੈ ਹੋਰ ਕੁਛ ਹੋਰੀ ਕਹੂੰ ਤੀਰਥ ਧਰਮ ਇਹ ਹਣ ਪੜਾਉਦਾ ਹੀ ਨਹੀਂ ਨਾ ਉਹ ਜਿੱਥੇ ਮਰਜੀ ਬਹਿ ਕੇ ਚਰਚਾ ਕਰ ਲੈਣ ਕਰਦਾ ਹੀ ਆ ਅਰਥ ਬੁਲਾ ਕੇ ਦੇਖ ਲੈ ਸਾਨੂੰ ਦੱਸਣ ਕਿਥੋਂ ਗਲਤ ਨੇ ਅਸੀਂ ਦੱਸਦੇ ਐ ਕਿਥੋਂ ਗਲਤ ਨੇ ਤੁਹਾਡੇ ਉਹ ਜਿਹੜੇ ਪੜ੍ਹਾਈ ਨੂੰ ਗਲਤ ਪੜਾ ਕੇ ਜਿਹਨੂੰ ਗੁਰਬਾਨੀ ਦੀ ਸਮਝ ਆਈ ਸੀ ਉਹ ਰਾਹ ਗੁਰਬਾਨੀ ਦੇਖ ਕੇ ਚੱਲ ਪਿਆ ਇਹਨ ਡਕਸ਼ਾ उल्टा ਫੜਿਆ ਆਇਆ ਸੀ ਜਿਹਨੂੰ ਡਕਸ਼ਾ ਹੀ ਉਲਟਾ ਸਮਝ ਆਇਆ ਉਹ ਟਿਕਾਣੇ ਤੇ ਮੈਂ ਪਹੁੰਚ ਗਿਆ ਗੁਰਬਾਨੀ ਦਾ अर्थ उल्टे ਲਈ बैठे हो ਤੁਸੀਂ ਉਹੀ ਉਹਦੇ ਉਹ ਸੈਰਸ ਤੇ ਜਾਊਗਾ ਜਿਹੜੇ ਰਸਤੇ ਦੇ ਅਰਥ ਨੇ ਤਕ ਪੁੱਤ ਬਾਬਰੂ ਤੁਸੀਂ ਬੰਦੇ ਹੋ ਪੁੱਤ ਬਾਬਰੂ ਉਹ ਬੰਦੇ ਤੇ ਗੁਰਬਾਨੀ ਨਹੀਂ ਵਰਦੀ ਤੁਹਾਡਾ ਗੁਰਬਾਨੀ ਵਾਲਾ ਰਸਤਾ ਹੈ ਹੀ ਮਾੜਾ ਤੋਂ ਸਾਰੇ ਸੰਤ ਭਗਤ ਖਿਲਾਫ ਨੇ ਗੁਰਮਤੀ ਮਾੜਾ ਵਾਸਤੇ ਕੋਈ ਜਗ੍ਹਾ ਨਹੀਂ ਤੁਸੀਂ ਜੇ ਮਾੜਾ ਫੜੀ ਫਿਰਦੇ ਹੋ ਨਾ ਮਤਲਬ ਰਸਤਾ ਹੀ ਤੁਹਾਡਾ ਇਹਦੂ ਮਟਾੜਾ ਰਸਤਾ ਕਿਹੜਾ ਘੜੀ ਜਨਾ ਜਬ ਉਹ ਰਸਤਾ ਵੀ ਤੁਹਾਡਾ ਲੋਟੇ ਹੱਥ ਨੇ ਭੱਗ ਓਏ ਹਰ ਕੇ ਸੰਤਾਂ ਆਖੀਏ ਬਨਾਰਸ ਠੱਗ ਫਿਰ ਉਹ ਰਸਤਾ ਤੁਹਾਡਾ ਔਰ ਹੈ ਹੁਣ ਤੁਹਾਡੇ ਕਰਮ ਤੋਂ ਵੀ ਸਾਫਦ ਹੋ ਗਿਆ ਵੀ ਠੱਗ ਹੈ ਪ੍ਰੈਕਟੀਕਲ ਵੀ ਸਾਬਤ ਹੋ ਗਿਆ। ਪ੍ਰਿੰਸੀਪਲ ਵੀ ਸਾਬਤ ਹੋ ਗਿਆ ਵੀ ਠੱਗ ਹੈ। ਕਹੂੰ ਤੀਰਥ ਧਰਮ ਕਹੂੰ ਤੀਰਥ ਧਰਮ ਕਹੂੰ ਤੀਰਥ ਧਰਮ ਕਿਤੇ ਤੀਰਥਾਂ ਦੇ ਉੱਤੇ ਜਿਹੜਾ ਧਰਮ ਦੱਸਿਆ ਜਾਂਦਾ। ਤੀਰਥ ਕੁਤੇ ਨਹਾਉਣਾ, ਇਸ਼ਨਾਨ ਕਰਨਾ, ਤੀਰਥਾਂ 'ਤੇ ਜਾਣਾ, ਦਾਨ ਪੂਰਨ ਕਰਨਾ, ਜੋ ਵੀ ਹੈ ਉਹ ਧਰਮ ਧੜਨ ਕੀਤਾ ਹੈ। ਕਿਤੇ ਕੁਝ ਲੋਕਾਂ ਦਾ ਕਈ ਦੇਸ਼ ਦੇਸ਼ ਭਾਖਾ ਰਟੰਤ ਕਈ ਦੇਸਾਂ ਦੇ ਬੋਲੀਆਂ ਪੜਦੇ ਹਰ ਦੇਸ਼ ਦੇਸ਼ ਵਿਦਿਆ ਪੜੰਤ ਕਈ ਦੇਸ਼ ਦੇ ਵਿਦਿਆ ਪੜ ਰਹੇ ਨੇ ਫੁੱਲ ਵੀ ਪੜਦੇ ਹੀ ਕਈ ਕਰਤ ਭਾਤ ਭੰਤਨ ਵਿਚਾਰ ਕਈ ਭਾਂ ਭਾਂ ਕਰ ਰਹੇ ਪਾਂ ਪਾਂ ਦਾ ਵਿਚਾਰ ਕਰਦੇ ਨਹੀਂ ਨੈਕ ਤਾਸ ਪਾਇੰਤਨ ਪਾਰ ਥੋੜੀ ਜਿਹੀ ਗੱਲ ਦੀ ਸਮਝ ਨਹੀਂ ਆ ਰਹੀ ਕਿਸੇ ਨੂੰ ਨੈਕ ਦਾ ਮੰਨ ਥੋੜੀ ਜਿਹੀ ਜਰਾ ਜਰਾ ਵੀ ਸਮਝ ਨਹੀਂ ਕਿਸ ਨੂੰ ਆ ਰਹੀ ਰੱਤੀ ਜਨਾ ਵੀ ਸਮਝ ਨਹੀਂ ਆ ਰਹੀ ਗੱਲ ਕੀ ਹੈ ਦੇਰਾਕਾਰ ਦਾ ਭੇਤ ਰੱਤੀ ਲੱਗ ਰਿਹਾ ਤੀਰਥਾਂ ਤੀਰਥਾਂ ਚਲੇ ਹੋਏ ਨੇ ਆਹ ਤੀਰਥ ਛੱਡਦਾ ਦੂਏ ਤੇ ਦੂਏ ਤੇ ਦਿੱਤੀਏ ਤੇ ਜਾਂਦੇ ਨੇ ਕਈ ਅਗਨੋ ਹਉਤਰ ਕਈ ਦੇਵ ਕਰਮ ਕਈ ਅਰ ਦੇ ਵਿੱਚ ਦੇਵਤਿਆਂ ਹੋ ਕਿਵੇਂ ਦੇਵਤੇ ਉਤਿਆ ਪਉਦੇ ਨੇ ਸ਼ਿਵ ਜੀ ਦੀਆਂ ਉਹਦੀਆਂ ਸਾਰਿਆਂ ਦੀ ਉਹ ਕਰਦੇ ਨੇ ਦੇਵਤਿਆਂ ਵਾਲੇ ਹਵਲ ਕਰਦੇ ਨੇ ਕਈ ਕਰਤ ਵੀਰ ਵਿਦਿਆ ਵਿਚਾਰ ਵਿਦਿਆ ਵਿਚਾਰ ਵਿਦਿਆ ਦੀ ਕਈ ਵਿਚਾਰ ਕਰਦੇ ਨੇ ਸ਼ਾਸਤਰ ਵਿਦਿਆ ਪੜ੍ਹਦੇ ਨੇ ਪੜ੍ਹਾਉਂਦੇ ਨੇ ਨਹੀਂ ਤਦ ਬਤਾਸ ਪਾਏ ਤਨਾ ਵੀ ਕਹਿੰਦੇ ਉਹਦਾ ਪਤਾ ਨਹੀਂ ਲੱਗ ਰਿਹਾ ਕਿਸੇ ਤਾਂ ਜਿਵੇਂ ਦਾ ਪਾਲ ਨਹੀਂ ਪਾਇਆ ਜਾ ਸਕਿਆ ਜੋ ਹੋ ਰਿਹਾ ਸੀ ਪਿੱਛੇ ਸਾਰਾ ਰਖਸ਼ਾ ਦੇਖੋ ਕਿਸ ਤਰੀ ਆਹਾਂ ਜੇ ਬੜੀਏ ਤੁਹਾਨੂੰ ਪਿਛਲੇ ਧਰਮ ਦਾ ਕੋਈ ਪਤਾ ਲੱਗੂਗਾ ਪਿੱਛੇ ਧਰਮ ਦੇ ਕੀ ਲੋਕ ਕਰ ਰਹੇ ਸੀ ਜੇ ਆ ਬਿਦਾਰਨਾ ਬੜੀਏ ਕੀ ਪਤਾ ਲੱਗੂ ਪਿੱਛੇ ਕੀ ਹੋ ਰਿਹਾ ਸੀ ਇਹ 4000 ਸਾਲ ਪਿਛਲੀ ਪੜਾਈ ਹੈ ਧਰਮ ਦੀ ਤੁਹਾਡੇ ਉਗਰੇ ਰਖਸ਼ਾ ਰਖਤਾ ਿਆ ਕੁਝ ਹੋ ਰਿਹਾ ਆ ਅੱਧਵੀ ਤੱਕ ਲਾਈ ਨਹੀਂ ਲਿਖੀ ਹੋਈ ਫੁਰਬੀਦ ਲੋ ਕਰ ਰਹੇ ਨੇ ਕਿਸੇ ਦਾ ਤੁਸੇ ਪ੍ਰਭਾਵ ਨਹੀਂ ਹੋ ਸਕਦੇ ਇਹ ਜਾਂ ਕਿਉਂ ਤੁਹਾਨੂੰ ਇੱਥੇ ਪੜ੍ਹਾਤਾ ਮੈਂ ਕਿਸੇ ਨੂੰ ਕੁਝ ਨਹੀਂ ਮਿਲਿਆ ਨਹੀਂ ਦੇਖ ਕੇ ਹੋ ਸਕਦਾ ਕਿਸੇ ਤੇ ਪ੍ਰਭਾਵਿਤ ਹੋ ਜਾऊं ਕੁਝ ਨਹੀਂ ਕਿਸੇ ਨੂੰ ਮਿਲ ਰਿਹਾ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਹੂੰ ਰਾਜ ਰੀਤ ਕਿਤੇ ਰਾਜ ਵਾਲੀ ਰੀਤੀ ਹੈ ਕਿਤੇ ਜੋਗੀ ਵਾਲਾ ਧਰਮ ਕਿਤੇ ਵਿਚਾਰਧਾਰਾ ਸ਼ਿਵਜੀ ਵਾਲੀ ਹੈ ਕਿਤੇ ਵਿਸ਼ਨੂ ਵਾਲੀ ਹੈ ਵਿਸ਼ਨੂ ਵਾਲੀ ਜਿਹੜੀ ਵਿਚਾਰਧਾਰਾ ਰਾਜਨੀਤ ਉਹ ਪੰਡਤ ਹੈ ਉਹਦਾ ਪ੍ਰਚਾਰਕ ਪੰਡਤ ਜਗਤ ਕਾ ਉਹ ਦੀ ਜਿਹੜੀ ਪੜ੍ਹਾਈ ਹੈ ਉਹਦਾ ਰਾਜਨੀਤ ਪੰਡਤ ਦੀ ਸ਼ਿਵਜੀ ਜਿਹੜੀ ਜੋਗੀਆਂ ਵਾਲੀ ਪੜ੍ਹਾਈ ਹੈ ਜੋਗ ਤਰਮ ਕਈ ਸਿਮਰਤ ਸ਼ਾਸਤਰ ਉਚਰਤ ਸੁਕਰਮ ਕਈ ਸ਼ੁਭ ਕਰਮਾਂ ਨੂੰ ਸ਼ਬਰਤ ਸ਼ਾਸਤਰ ਸ਼ੁਭ ਕਰਮ ਉਚਾਰਨ ਕਰਦੇ ਨੇ ਐ ਕਰ ਬਚਦੇ ਨੇ ਐ ਕਰ ਮਾੜੇ ਨੇ ਜਿਹਦੇ ਬਾੜੇ ਕਮਨਾਂ ਨਾਲ ਡਰਨਾ ਕਰਕੇ ਸਬਰਤ ਸ਼ਾਸਤਰ ਦੱਸਦੇ ਨੇ ਐ ਕੰਮ ਕਰਨੇ ਚਾਹੀਦੇ ਨੇ ਐ ਨਹੀਂ ਕਰਨੇ ਚਾਹੀਦੇ ਨਿਯੋਲੀ ਆਦ ਕਰਮ ਕਹੁ ਹਸਤਦਾਨ ਕਿਤੇ ਡਿਓਲੀ ਕਰਮ ਕਰਦੇ ਨੇ ਸਰੀਰ ਦੀ ਸਪਾਈ ਕਰਦੀ ਫਿਰ ਉਹ ਪ੍ਰਾਣਯਾਂ ਕਰਨ ਕਈ ਹੱਥ ਤੋਂ ਧਾਨ ਦੀ ਗੱਲ ਕਰ ਰਹੇ ਨੇ ਵੀ ਜਿੰਨਾ ਹੱਥ ਨਾਲ ਦਾਨ ਦੇਤਾ ਇਹਦੇ ਵਰਗੀ ਕੋਈ ਚੀਜ਼ ਇਹਦੀ ਹੈ ਹਰੇਕ ਆਪਣੇ ਆਪਣੇ ਕਰਮ ਨੂੰ ਆਪਣੇ ਆਪਣੇ ਤਰੂ ਰੂਪ ਸਭ ਤੋਂ શ્રેષ્ઠ ਮੰਨਦਾ ਹੈ ਘਟਿਆ ਨਹੀਂ ਮੰਨਦਾ ਆਪਣੇ ਨੂੰ ਵਧੀਆ ਹਰੇਕ ਮੰਨਦਾ ਵੀ ਇਹ ਜਿਹੜਾ ਧਨ ਦੇਤਾ ਆਪਣੇ ਹੱਥ ਨਾਲ ਗਾਂਵੜੂ ਗਾਂਵੜੂ ਦਾ ਗਾਂਝਲ ਵੀ ਹੋਊਗਾ ਜੇ ਗਾਂਵੜੂ ਦਾ ਗਾਂਝਲ ਵੀ ਹੋਏ ਪੁੱਤ ਉਹ ਵੀਜਿਆ ਗਿਆ ਉਹਨੂੰ ਵੀਜਿਆ ਗਿਆ ਕਹਿੰਦਾ ਵੀਜੇ ਸੋਲੋਣੇ ਜੇ ਦਾ ਨਾਮ ਬੀਜੇਗਾ ਤਾਂ ਦਾ ਨਾਮ ਬੀਜੂਗੀ ਫਸਲ ਪੱਕ ਜੂਗੀ ਜੇ ਦੁਨਿਆਵੀ ਬਿਦਾਰਥ ਬੀਜਦੇ ਗਏ ਵਾਇਆ ਪੱਕ ਜੂਗੀ ਗਾ ਉਹ ਖਾੜੀ ਪਊ ਛਰੀਰ ਲੈ ਕੇ ਖਾਣੀ ਪਊ ਤਾ ਜਨਮ ਲੈ ਕੇ ਹੀ ਖਾਣੀ ਅਗਲੇ ਜਨਮ ਬੀਜ ਲਿਆ ਅਗਲੇ ਜਨਮ ਦਾ ਕਿਤੇ ਅਸ਼ਵ ਮੇਦ ਅੱਗ ਮੱਖ ਜੱਗ ਨੂੰ ਕਹਿੰਦੇ ਨੇ ਅਸ਼ਵ ਮੇਦ ਮੇਦ ਚਰਪੀ ਹੁੰਦੀ ਅਸ਼ਵ ਘੋੜਾ ਹੁੰਦਾ ਉਹnabla ਖਾਨ ਕਰਦੇ ਨੇ ਵੀ ਐ ਨਹੀਂ ਵੀ ਐ ਕਰਨਾ ਚਾਹੀਦਾ ਅਸੇ ਲੋਕ ਕਹਿੰਦੇ ਐ ਨਹੀਂ ਜਿਵੇਂ ਖੱਡ ਪਾੜਦਿਆਂ ਵਿਧੀਆਂ ਨੇ ਦੂਏ ਪਾਠਾਂ ਦੀਆਂ ਵੀ ਵਿਧੀਆਂ ਨੇ ਸੰਤਾਂ ਦੀ ਅੱਡ ਅੱਡ ਬਣਾਈਆਂ ਉੱਥੇ ਸੀ ਸੀ ਇੱਥੇ ਉਹ ਸੰਤ ਉੱਥੇ ਲੈ ਲੈ ਆ ਗਏ ਇੱਥੇ ਵੀ ਕਰਨ ਲੱਗੇ ਉਹੀ ਕੰਮ ਐਸ ਵਿਧੀ ਨਾਲ ਹੀ ਕਰੇ ਪਾਠ ਐਸ ਵਿਧੀ ਸਮਝਣ ਵਾਲੀ ਵਿਧੀ ਛੱਡਤੀ ਪਾੜ ਵਾਲੀ ਵਿਧੀ ਹੋਰ ਹੋਰ ਬਣਾ ਲਈ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਿਤੇ ਬ੍ਰਹਮ ਵਿਦਿਆ ਦੀ ਵਿਚਾਰ ਹੁੰਦੀ ਹੈ ਦੇਖੋ ਬ੍ਰਹਮ ਵਿਦਿਆ ਇੱਥੇ ਆਈ ਹੋਈ ਹੈ ਗੁਰੂ ਗ੍ਰੰਥ ਸਾਹਿਬ ਉੱਥੇ ਲਫ਼ਜ਼ ਬ੍ਰਹਮ ਵਿਦਿਆ ਮੋਦੀ ਨਹੀਂ ਆਈ ਬਾਰ-ਬਾਰ ਆ ਰਹੀ ਬ੍ਰਹਮ ਵਿਦਿਆ ਮੈਂ ਲਿਖਦਾ ਉਹਨਾਂ ਬ੍ਰਹਮ ਵਿਦਿਆ ਉਹ ਦੇਖਣਾ ਬ੍ਰਹਮ ਵਿਦਿਆ ਕੀ ਚੀਜ਼ ਹੈ ਉਹਨਾਂ ਜੇ ਤਾਂ ਪੜਿਆ ਹੋਵੇ 10 ਬਰੰਤ ਫਿਰ ਤਾਂ ਪਤਾ ਹੋਵੇ ਬ੍ਰਹਮ ਵਿਦਿਆ ਪ੍ਰਭ ਵਿਦਿਆ ਉਹ ਤੇ ਆ ਜੀ ਪ੍ਰਭ ਗਿਆਨ ਲਿਖਿਆ ਜਾ ਸਕਦਾ ਸਮਝਾਇਆ ਜਾ ਸਕਦਾ ਪ੍ਰਭ ਵਿਦਿਆ ਦੀ ਵਿਚਾਰ ਕਰਦੇ ਨੇ ਤੇ ਵਿਚਾਰ ਪੈਂਦੀ ਹੈ ਪੜ੍ਹਨੀ ਵਿਦਿਆ ਬੜੀ ਹੁੰਦੀ ਹੈ ਹਾਂਜੀ ਜੋ ਕਹੂੰ ਕਹੂੰ ਰੀਤ ਕਹੂੰ ਵਿਰਧਚਾਰ ਕੋ ਜੋਗ ਰੀਤ ਕਹੂੰ ਵਿਰਧਚਾਰ ਕੋ ਸਿਆਣਫ ਦੇ ਕਾ ਵਿਰਧਿਆ ਨੂੰ ਦੇ ਸਾਵਣ ਪਤਾ ਨਾਲ ਕੰਮ ਗੱਲ ਯੋਗ ਰੀਤ ਦੇ ਵਿੱਚ ਸਮਝਦੇ ਕੋਈ ਗੱਲ ਨਹੀਂ ਹੈ ਉਹ ਤਾਂ ਸਮਝਦੀ ਲਾਉਣੀ ਹੈ ਉੱਤੇ ਦੇਖੋ ਯੋਗ ਰੀਤ ਦੇ ਵਿੱਚ ਅਕਲ ਦਾ ਕੋਈ ਕੰਮ ਨਹੀਂ ਅਕਲ ਨੂੰ ਕਹਿੰਦਾ ਤੂੰ ਪਾਸੇ ਬਹਿ ਜਾ ਇਹ ਜਿਹੜੀ ਦੁਆ ਇਹ ਅਕਲ ਦਾ ਕੰਮ ਚਾਰ ਹੈ ਸਿਆਣੇ ਨੂੰ ਕਹਿੰਦੇ ਨਾ ਦਾ ਕੰਮ ਅਕਲ ਦਾ ਕੰਮ ਕਿਤੇ ਅਕਲ ਨਾਲ ਸੋਚਿਆ ਜਾਂਦਾ ਜੋ ਕਿਵੇਂ ਹੋਊ ਕਿਤੇ ਉਹ ਕਹਿੰਦੇ ਆ ਪਰੋ ਜੂ ਚਲੋ ਦੱਬੀ ਚਲੋ ਸਮਾਧੀ ਲਈ ਚਲੋ ਇਹ ਬੇਖਲੀ ਦਾ ਕੁੱਤ ਕਹੂੰ ਕਹਾਣੀਆਂ ਕਥਾ ਕਹਣ ਜਾਬੇ ਰਾਜੇ ਰਾਣੀਆਂ ਦੇ ਬੋਲੇ ਆਲਪਤਾਲ ਲਖ ਟਕਿਆਂ ਕੇ ਬੁੰਦੜੇ ਲਖ ਸਕਿਆਂ ਕੇ ਹਾਰ ਇਹੀ ਸੁਣੀ ਜਾਂਦੇ ਜਿਵੇਂ ਆ ਰਾਮਲੀਲਾ ਕ੍ਰਿਸ਼ਨ ਲੀਲਾ ਸੁਣਦੇ ਸੀ ਹਾਂਜੀ ਕਹੂੰ ਧੂਪ ਦੀਪ ਕਹੂੰ ਅਰਗਦਾਨ ਕਹੂੰ ਧੂਪ ਦੀਪ ਧੂਪ ਦਿੰਦੇ ਨੇ ਦੀਵੇ ਜਲਾਉਂਦੇ ਨੇ ਅਰਗਦਾਨ ਦਿੰਦੇ ਨੇ ਅਰਗ ਹੁੰਦਾ ਹੈ ਪਾਣੀ ਦੇ ਵਿੱਚ ਉਹ ਜਿਹੜੇ ਜਲ ਚੜਾਉਂਦੇ ਨੇ ਦੇਵਤੇ ਨੂੰ ਪਾਣੀ ਚੜਾਉਂਦੇ ਨੇ ਜਿਵੇਂ ਸ਼ਿਵ ਦੇ ਉੱਤੇ ਪਾਣੀ ਦਿੰਦੇ ਨੇ ਉਹਨੂੰ ਅਰਗਦਾਨ ਕਹਿੰਦੇ ਨੇ ਅਰਗੋ ਜਨਾਨੀਆਂ ਵੀ ਦਿੰਦੀਆਂ ਹੁੰਦੀਆਂ ਨੇ ਯਾਦ ਕਰੂਆ ਰੱਖਦੀਆਂ ਨੇ ਉਹ ਪਾਣੀ ਉਹ ਵੀ ਪਾਣੀ ਹੁੰਦਾ ਚਦਰ ਵਿੱਚ ਉਹ ਜੇ ਪਾਣੀ ਦੇ ਵਿੱਚ ਪਾ ਲੈਂਦੇ ਨੇ ਦੁੱਧ ਪਾ ਲਿਆ ਕੇਸਰ ਪਾ ਲਿਆ ਜਾਏ ਜਾਂ ਵੀ ਕੁਝ ਕਿਸੇ ਨੂੰ ਕੁਝ ਜੋ ਪਾ ਲੇ ਚੌੜ ਧਾਨ ਪਾ ਲੇ ਇਹ ਜਾਂ ਕੁਝ ਪਾ ਕੇ ਨਾ ਉਹ ਪਾਣੀ ਦੇ ਵਿੱਚ ਫਿਰ ਉਹ ਉਹ ਛੜ ਧਾਰ ਜੀ ਛੜ ਦਿੰਦੀ ਕੋਹੂੰ ਕਿਤੇ ਪਿਤਰ ਕਰਮ ਪਿਤਰ ਕਰਮ ਪਿਤਰਾਂ ਨੂੰ ਉਹ ਕੁਝ ਵਾਸਤੇ ਦਾਨ ਕਰਨਾ ਪਿਤਰਾਂ ਵਾਸਤੇ ਪਾਠ ਕਰਾਉਣੇ ਜਿਵੇਂ ਅਸੀਂ ਵੀ ਬਾਅਦ ਚ ਵਰਸੀਆਂ ਨੇ ਮਨਾਉਂਦੇ ਇਹ ਜਿਹੜੇ ਮਨਾਉਂਦੇ ਆ ਅਸੀਂ ਪਿਤਰ ਕਰਮ ਹੈਰੇ ਵਰਸੀ ਬਣਾਉਂਦੇ ਸਾਲ ਬਾਅਦ ਭੋਗ ਹੋਉਂਦੇ ਨੇ ਉਹ ਪੇਦ ਕਰਮ ਹੈ ਪੇਦ ਹੁੰਦਾ ਹੀ ਨਾ ਮਰ ਗਿਆ ਉਹਦਾ ਪਿੱਛੋਂ ਕਰਨਾ ਇਹ ਵਰਸੀਆ ਬਣਾਉਣੀ ਉਹ ਪੇਦ ਕਰਮ ਹੈ ਗੁਰਮਤਿ ਚ ਨਹੀਂ ਆਇਆ ਪਰਮਾਨ ਅਸੀਂ ਗੁਰੂਆਂ ਦੇ ਵੀ ਜਿਹੜੇ ਬਣੂ ਨੇ ਇਹ ਵੀ ਗਲਤ ਹੈ ਇਹ ਵੀ ਪੇਦ ਹੈ ਨਾਲੇ ਉਹਦਾ ਜੋਦੇ ਨੇ ਜੋਦੇ ਦਾ ਮਰਾਈ ਦਾ ਪੇਦ ਤਾਂ ਕਰੀਦਾ ਵੀ ਉਹ ਨਰਕਾਂ ਚ ਨਹੀਂ ਉਹਨਾਂ ਨੂੰ ਵਿਚਾਰ ਕੋਈ ਫਾਇਦਾ ਹੋ ਜਾਏ ਇਹ ਜਿਹੜਾ ਬਣਾਉਣਾ ਸੀ ਅਸੀਂ ਉਸ ਹਿਸਾਬ ਨਾਲ ਨਹੀਂ ਬਣਾ ਸਕਦੇ ਗੁਰੂ ਆਨੇਕ ਦੋਇ ਤਾਹੀਦੀ ਬਣਾਇਆ ਇਹ ਖੰਡਣ ਕੀਤਾ ਹੋਇਆ ਤੇਰ ਕਰ ਕੋਈ ਹੋਰ ਦਿਨ ਬਣਾ ਲਓ ਤੁਸੀਂ ਪਿਛਾ ਜਦੋਂ ਉਹ ਹੀ ਜਦੋਂ ਇਹ ਤਾਂ ਕੈਰੋ ਨੂੰ ਪਿਤਰ ਕਰ ਕਹੂੰ ਬੇਦਰੀਤ ਕਹੂੰ ਬੇਦਰੀਤ ਹੈ ਬੇਦਰੀਤ ਪਿਤਰ ਤੇ ਉਲਟਾ ਬੇਦਰੀਤ ਯਾਦ ਨਹੀਂ ਦਿੱਦੀ ਪਿਤਰ ਕਰ ਪਿਤਰ ਬੇਦੀਤ ਗੁਰਮਤਿ ਗੁਰਮਤਿ ਵਿੱਚ ਪੈਦਰ ਕਰਬ ਰਹੀਉਂਦੋ ਕਿਤੇ ਬੇਦੀਤ ਹੈ ਕਿਤੇ ਪੈਦਰ ਕਰਬ ਸਿੱਖਨਾ ਜਿਵੇਂ ਪੈਦਰ ਕਰਬ ਨਹੀਂ ਹੋ ਸਕਦਾ ਅਰੇ ਪਾੜ ਕਰਦਾਂ ਨਾ ਅਸੀਂ ਪਿੱਛੋਂ ਭੋਗ ਬੋਰਿਆ ਇਹ ਵੀ ਪੈਦਰ ਕਰਬ ਸਿਖਾਜੇ ਪ੍ਰਮਾਣ ਦੀ ਹਰ ਬਾਰੀ ਅਰਦਾਸ ਕਰੀਏ ਨਾ ਤੁਸੀਂ ਚਲਾਨ ਨਵਾਸ ਬਸ ਇਹਦਾ ਉਹਨੇ ਪਿਛਲੇ ਸਾਲ ਬਖਸ਼ਿਆ ਦੀ ਸੰਸਕਾਰ ਵੇਲੇ ਵੀ ਚਲਾਨ ਨਵਾਸ ਉਹ ਤਾਂ ਬਾਅਦ ਫੇਰ 2 ਘੰਟੇ ਬਾਅਦ ਚਰਣਾ ਨਵਾਸ ਕੀ ਮਜ਼ਾਕ ਬਣਾਇਆ ਤੁਸੀਂ ਇਹ ਗਿਆਨ ਤੋਂ ਬਿਨੂ ਦੇ ਲੋਕ ਨੇ ਜਿਹੜੇ ਕਰਦੇ ਵਾਹਿਗੁਰੂ ਰੋਜ਼ 8 ਵਾਰ ਦਾ ਅਰਦਾਸ ਹੋ ਜਾਂਦੀ ਹੈ ਜੇ ਸੰਸਕਾਰ ਕਰਦੇ ਨੇ 8 ਵਾਰ ਅਰਦਾਸ ਹੋ ਜਾਂਦੀ ਹੈ ਅਰਦਾਸਾਂ ਮਜ਼ਾਕ ਆ ਤੁਹਾਡਾ ਇਹ ਕੀ ਹੈ ਇਹ ਤਾਂ ਬਾਬਣਾ ਨਾਲ ਮੀਟ ਬਾਤ ਤੁਸੀਂ ਕਹਿੰਦੇ ਗੁਰਬਾਣੀ ਬਿਲਕੁਲ ਪਰਵਾਣੇ ਦੀ ਉਹਦਾ ਹੈ ਸਾਡੇ ਕੋ ਜੇ ਮਿਰਤਕੋ ਚੰਨ ਚੜਾਵੇ ਜੇ ਮਿਰਤਕ ਦੇ ਨੂੰ ਚੰਦਨ ਨਾਲ ਲਪਦੀਏ ਚੜਾਈ ਜਾਈਏ ਦੋ ਦੋ ਮਿਰਤਕ ਕਵਣ ਫੜ ਪਾਵੇ ਤਿਸਤੇ ਮਿਰਤਕ ਫੜ ਪਾਵੇ ਮਿਰਤਕ ਰੁਕੀ ਫੜ ਹੋ ਜੂ ਜੇ ਮਿਰਤਕੋ ਵਿਸਤਾ ਮਿਲਦਾ ਹੈ ਤੋ ਮਿਰਤਕ ਆਖਾ ਕੜ ਜਾਏ ਕਬੀਰ ਨੇ ਕਹੇ ਸੀ ਪਹਿਲੇ ਗੁਰਬਾਣੀ ਜੇ ਲਿਖਤੀ ਹੋਰ ਤੁਹਾਡੇ ਸਿਰ ਤੇ ਰੱਖ ਦਿੰਦਾ ਸਾਰਾ ਸਰਤੇ ਇਹ ਹੁਕਮ ਹੁਕਮ ਹੁੰਦਾ ਹੀ ਸਰਤੇ ਗੁਰਬਾਣੀ ਹੈ ਸਾਡਾ ਹੁਕਮ ਹੈ ਸਿਰ ਦੇ ਉੱਤੇ ਹੈ ਸਿਰ ਦੇ ਉੱਤੇ ਤੁਹਾਡੇ ਆ ਲਿਖਿਆ ਕਰਦੇ ਤੁਸੀਂ ਕੀ ਫੇ ਹਿੰਦੂ ਤੜਫਦੇ ਨੇ ਤੜਫਦੇ ਕਹਦੇ ਹੋਖੀ ਹੋਈ ਤੁਸੀਂ ਸਿੱਖ ਜਦ ਬਣੋਗੇ ਜਾਂ ਗੁਰਬਾਣੀ ਅਨਸਾਰ ਪਿਤਰ ਛੱਡ ਦੋਗੇ ਜਿੰਨਾ ਜੇ ਰਪਿਤਰ ਨਹੀਂ ਛੱਡਦੇ ਤੁਸੀਂ ਉਹ ਸਮਝਦੇ ਨੇ ਇਸ ਗੱਲ ਨੂੰ ਤੁਸੀਂ ਕਿਉਂ ਦੋ ਉਹਨਾਂ ਨੂੰ ਧਰਮ ਦਾ ਗਿਆਨ ਹੈ ਤੁਸੀਂ ਦਾ ਧਰਮ ਵਾਲੇ ਜਿੱਥੋਂ ਗਿਆਨ ਮਿਲਣਾ ਤਾਂ ਉਹ ਤਾਂ 10 ਬਰਸ ਛੱਡੀ ਬੈਠੇ ਹੋ ਧਰਮ ਦਾ ਗਿਆਨ ਤਾਂ ਅਸਲੀ ਇੱਥੋਂ ਮਿਲਣਾ ਸੀ ਜਿਹੜੀ ਸੌਖੀ ਭਾਸ਼ਾ ਦੇ ਵਿੱਚ ਹੈ ਜੇ ਕੁਝ ਛੱਡਣਾ ਨਾ ਜਿਹੜਾ ਛੱਡਣਾ ਸੀ ਉਹ ਤਾਂ ਇੱਥੋਂ ਪਤਾ ਲੱਗੂ ਜੋ ਕਰਨਾ ਉਹਦਾ ਅਦਾਬ ਜਾਂਦਾ ਇੱਥੋਂ ਪਤਾ ਲੱਗੂ ਬਾਕੀ ਸਾਰਾ ਉੱਥੋਂ ਲੱਗ ਜੂ ਜਿਹੜਾ ਕੁਝ ਕਰਨਾ ਇੱਥੋਂ ਵੀ ਪਤਾ ਲੱਗ ਜੂ ਉਹ ਕਰਨਾ ਕੀ ਹੈ ਛੱਡਣਾ ਦਾ ਇੱਥੋਂ ਪਤਾ ਲੱਗ ਜੂ ਵੀ ਆਹ ਇਹ ਕਰਨਾ ਨਹੀਂ ਜੇ ਉਹ ਕਰਨਾ ਪਹਿਲਾਂ ਛੱਡਾਗੇ ਨਾ ਨਾ ਕਰਨੇ ਵਾਲੇ ਗੱਲ ਤਾਂ ਕਰਨੇ ਵਾਲੇ ਪਾਸੇ ਜਾਵਾਂਗੇ ਨਹੀਂ ਕਰਨੇ ਵਾਲੇ ਪਾਸੇ ਜਾ ਹੀ ਨਹੀਂ ਸਕਦੇ ਜਿੰਨਾ ਜਰ ਫੀਮ ਛੱਡਦਾ ਨਹੀਂ ਉਹ ਨਾ ਜਰ ਦੰਦ ਜਾ ਹੀ ਨਹੀਂ ਸਕਦਾ ਜਿਹੜੀ ਚੀਜ਼ ਨਾਲ ਰੁਕਸ ਪਿਆ ਹੋਇਆ ਕੋਈ ਜੇ ਕੋਈ ਚੀਜ਼ ਖੁੱਦਾ ਹੈ ਪੈ ਗਿਆ ਕੋਈ ਕਿਸੇ ਬਿਮਾਰੀ ਹੈ ਜਿੰਨਾ ਜਰੋਂ ਖਾਣ ਵਾਲੀ ਚੀਜ਼ ਛੜਦਾ ਨਹੀਂ ਬਿਮਾਰੀ ਨੂੰ ਇਲਾਜ ਕਦੇ ਆ ਜੂਗਾ ਦੁਆ ਕੇ ਵੀ ਲੱਗੂਗੀ ਦਵਾਈ ਦਾ ਤਾਂ ਹੀ ਅਸਰ ਕਰੂ ਜੇ ਖਾਣਾ ਛੱਡੂ ਜੇ ਬੁਖਾਰ ਛੜਦਾ ਹੀ ਨਹੀਂ ਬੁਖਾਰ ਤਿਆਗਦਾ ਹੀ ਨਹੀਂ ਤਾਂ ਗੁਰਬਾਨੀ ਥੋੜੇ ਦਾ ਕੀ ਅਸਰ ਕਰ ਦੂਗੀ ਪੜੀ ਜਾਓ ਦਵਾਈ ਖਾਈ ਜਾਓ ਅਸਰ ਤਾਂ ਕੋਈ ਨਹੀਂ ਗੁਰਬਾਨੀ ਵੀ ਪੜੀ ਜਾਣਾ ਬੁਖਾਰ ਉੱਡੀ ਛੱਡਦੇ ਛੱਡਣ ਵਾਲੀ ਗੱਲ ਪਹਿਲਾਂ ਛੱਡੋ ਸਭ ਤੋਂ ਪਹਿਲਾਂ ਛੱਡਣਾ ਹੀ ਛੱਡਣਾ ਪੜਨ ਦੀ ਲੋੜ ਨਹੀਂ ਹੈ ਛੱਡਣਾ ਹੀ ਆ ਸਭ ਕੁਝ ਗੁਰਬਾਣੀ ਛਡਾਉਂਦੀ ਓ ਛਡਾਉਂਦੀ ਓ ਕੁਝ ਜੋ ਫੜਿਆ ਹੈ ਛੱਡ ਦੋ ਜਿੱਥੇ ਗਲਤ ਜਗ੍ਹਾ ਜੋੜਿਆ ਹੈ ਉੱਥੋਂ ਟੁੱਟਣਾ ਹੀ ਟੁੱਟਣਾ ਹੈ ਜੋੜਾ ਕਿਤੇ ਆ ਕੇ ਮੈਨੂੰ ਫਿਰ ਉਹ ਤਾਂ ਵੱਡੀ ਗੱਲ ਹੈ ਪਹਿਲਾ ਪੱਟਤਾ ਲਓ ਇਧਰੋਂ ਪੱਟਣਾ ਹੈ ਉਹ ਲਾਉਣਾ ਲਾਉਣਾ ਦਾ ਪੱਟੇ ਹੋਰ ਨੂੰ ਹੈ ਪੱਟਿਆ ਦਾ ਹੈਰੀ ਲਾਉਣਾ ਕਿ ਹੈ ਉਹ ਨਾ ਪਣੇ ਨਹੀਂ ਪੱਟਿਓ ਨਹੀਂ ਆ ਤੂੰ ਸਲਾਹ ਕਰਦੇ ਹੋ ਜਵਾਨੇ ਪੱਟਣੀ ਪੱਟੇ ਪੜਦੇ ਰਹੇ ਰੀ ਉਰੂ ਬੰਨੂ ਜਿੱਥੇ ਲੱਗਿਆ ਹੋਇਆ ਉਹ ਲੱਗੂ ਤਾਂ ਇਹ ਪੱਟਿਆ ਜਾਊ ਪੱਟੇ ਦਾ ਕੋਈ ਨਹੀਂ ਲੱਗਦਾ ਉਹ ਤੂੰ ਹੀ ਨਹੀਂ ਕੋਈ ਬੰਨੂ ਕਿੱਥੇ ਲੱਗਿਆ ਹੋਇਆ ਪੱਟਿਆ ਜਾਊ ਦਾਵੇਂ ਜੇ ਆ ਛੱਡੂ ਸਭ ਕੁਝ ਰੀ ਜਿੱਤੇ ਹਿੰਦੂਵਾਦੀ ਕਾਰਜੇ ਲੱਗਿਆ ਲੱਗਿਆ ਹੋਇਆ ਹੈ ਯਾਰ ਤਾਂ ਲੱਗਿਆ ਹੋਇਆ ਹੈ ਉੱਥੇ ਜਿਹੜੇ ਧਰਮ 'ਚ ਲੱਗਿਆ ਹੋਇਆ ਲੱਗਿਆ ਹੋਇਆ ਹੈ ਜੋ ਗੱਲਾਂ ਜੇ ਕਰਦੇ ਆ ਉਹ ਲੱਗੇ ਹੋਇਆ ਉੱਥੇ ਜੁੜੇ ਹੋਇਆ ਆ ਫਸਲ ਕਹੂੰ ਨਿਤਨਾਚ ਇਹ ਪਟ ਰਹੀ ਆ ਇਹ ਪਟ ਰਹੀ ਆ ਬਾਣੀ ਪੰਨ ਉਤੋਂ ਪਟ ਰਹੀ ਆ ਲਗਾਤਾਰ ਇੱਕ ਗੱਲ ਇੱਥੇ ਪੱਟਣ ਦੀ ਇਕੱਠੀ ਆ ਉੱਥੇ ਇੱਕ ਸ਼ਬਦ 'ਚ ਕੋਈ ਕੋਈ ਗੱਲ ਆਈ ਹੋਈ ਆ ਕਿ ਇੱਥੇ ਲਗਾਤਾਰ ਗੱਲ ਆਈ ਹੋਈ ਆ ਨਾ ਅਕਾਲ ਉਸਤਤ ਵਿੱਚ ਉੱਥੇ ਲਗਾਤਾਰ ਕਿਤੇ ਤੁਹਾਨੂੰ ਮੁਸ਼ਬਤ ਦੇ ਵਿੱਚ ਇੰਨੀ ਗੱਲ ਦਿਖਾ ਦਿਓ ਕਿੱਠੀ ਆਦ ਗੁਰੂ ਗ੍ਰੰਥ ਸਾਹਿਬ ਕਿਤੇ ਇੰਨੀ ਇਕੱਠੇ ਗੱਲ ਦਿਖਾਓ ਕਿੱਥੇ ਕਿਤੇ ਕੋਈ ਵਾਰ ਲੈ ਲਓ ਕੋਈ ਚੈਪਟਰ ਕਿਤੋਂ ਲੈ ਲਓ ਇੰਨੀ ਗੱਲ ਕਿੰਨੀ ਹੈ ਇਹਦੇ ਵਿੱਚ ਆ ਜਾਣੀ ਹੈ ਕਿਤੇ ਦਿਖਾਓ ਕਿ ਕਿੱਥੇ ਲਿਖੀ ਹੋਈ ਹੈ ਕਿੱਠੀ ਕਿਤੇ ਵੀ ਨਹੀਂ ਲਿਖੀ ਗਈ ਕਿੱਠੀ ਇਹਦੇ ਗੱਲ ਕਰਦੇ ਕਿਤੇ ਲਿਖੀ ਉਹਨੂੰ ਚੁਗਦੇ ਰਹੋ ਉਹ ਕਿੱਥੇ ਫਸਲ ਵੱਢਣੀ ਹੈ ਤੁਸੀਂ ਜੀ ਕਿਹਦੇ ਕਟੀਲਾ ਤੀਲਾ ਜੋੜਨਾ ਤੁਸੀਂ ਤੀਲਾ ਤੀਲਾ ਜੋਗਾ ਦੇ ਪੰਡ ਕਾਲਾ ਹੋਈ ਉਹ ਤਾਂ ਬਹੁਤ ਜੇ ਸਾਹਮਣੇ ਰਖੋ ਦੀ ਪੰਡ ਵੱਢਦੀ ਹੈ ਤੇ ਕਤਕੁਆ ਝਗੜੀ ਫਹਲਾ ਵੱਢ ਕੇ ਛਰੀ ਹੋਵੇ ਤਖੜੀ ਸੰਘੜੀ ਇੱਕ ਡਾਂਡਾ ਚੁਗਦਾ ਫਰੀਦ ਹੈ ਸਾਰੇ ਜੰਗਲ ਚ ਉਥੇ ਉਹ ਤਾਂ ਹੀ ਨੇ ਕੁਛ ਮੇੜਾ ਰੋਕਾ ਨੂੰ ਐ ਇੱਕ ਧੰ ਸੰਘਣਾ ਖੜਾ ਇੱਕ ਕੋਈ ਸ਼ੰਦ ਵਿੱਚ ਉਸ ਸਾਰਾ ਪਤਾ ਲੱਗ ਜਾਂਦਾ ਹੈ। ਕੋਈ ਦਿਨ ਵਿੱਚ ਕਿੰਨਾ ਕੁਝ ਪਤਾ ਲੱਗ ਜਾਂਦਾ ਸਿਰਫ ਕੱਲੇ ਅਕਾਲ ਉਸ ਦੇ ਕੋਈ ਪੜ ਲਵੇ ਸਮਝ ਲਵੇ ਸਾਰੇ ਧਰਮ ਨੂੰ ਸਮਝ ਆ ਜਾਂਦਾ। ਕੱਲੇ ਅਕਾਲ ਉਸ ਦੇ ਪੂਰਾ ਹਿੰਦੂ ਮਤ ਦਾ ਖੰਡਣ ਕੀਤਾ ਹੋਇਆ ਦੁਨੀਆ ਭਰ ਦੀਆਂ ਬੱਤਾਂ ਦਾ ਖੰਡਣ ਕੀਤਾ ਹੋਇਆ। ਦੁਨੀਆ ਭਰ ਦੀਆਂ ਬੱਤਾਂ ਨੂੰ। ਜੋ ਕੁਝ ਕਰਨਾ ਦੱਸਿਆ ਹੋਇਆ। ਇਹ ਤੋਂ ਵੱਧ ਚਾਹੀਦਾ ਕੀ ਇਹਨੂੰ। ਹੋਰ ਕੀ ਚਾਹੀਦਾ? ਅੱਲੀ ਆਕਾਲ ਉੱਤੇ ਸਾਰਾ ਕੁਝ ਪਿਆ ਪੂਰੀ ਬ੍ਰੀਕੀ ਨੇ ਸਾਡੀ ਭਾਸ਼ਾ 'ਚ ਪਿਆ ਕੋਹ ਰਤਨਾਂ 'ਚ ਕੋ ਗਾਣ ਗੀਤ ਕੋ ਰਤਨਾਂ 'ਚ ਕੋ ਗਾਣ ਗੀਤ ਕੋਹ ਹੈ ਗੁਰਮਤਿ ਵਿੱਚ ਪ੍ਰਮਾਣ ਨਹੀਂ ਹੈ ਨਾ ਗੀਤ ਗਾਣ ਪ੍ਰਮਾਣ ਸਾਰੇ ਗੀਤ ਗਾਣ ਹੋਣੇ ਨੇ ਹੁਣ ਸਵਾਤੇ ਇਹਨੇ ਰਾਗੀ ਢਾਡੀ ਨੇ ਗੀਤ ਗਾਣ ਨਾ ਸਭ ਗੁਰਮਤਿ ਨੂੰ ਛੱਡ ਕੇ ਸਭ ਗੀਤ ਗਾਣ ਗੁਰਮਤਿ ਦੇ ਕੀਰਤਨ ਨੂੰ ਛੱਡ ਕੇ ਆ ਗੁਰਮਤਿ ਦਾ ਜਿਹੜੀ ਆਸਾ ਦੀ ਵਾਰ ਹੋਊ ਨਾ ਸਵੇਰੇ ਲਾਉਣਗੇ ਜਾਂ ਕੋਈ ਹੋਰ ਸ਼ਬਦ ਪੜ੍ਹਨਗੇ ਉਹਨੂੰ ਛੱਡ ਕੇ ਸਭ ਗੀਤ ਗਾਉਣ। ਇਹ ਵੀ ਜ્ઞાન ਬਹੁਣਾ ਗਾਵੇ। ਗਿਆਨ ਬਹੁਣਾ ਗਾਵੇ ਗੁਰਬਾਣੀ ਨੂੰ ਵੀ ਤਾਂ ਵੀ ਉਹ ਗੀਤੇ ਬਣ ਜਾਂਦੇ। ਲੋਕ ਕਹਿੰਦੇ ਗੀਤ ਹੈ। ਕਬੀਰ ਕਹਿੰਦਾ ਲੋਕ ਕਹਿੰਦੇ ਗੀਤ ਹੈ ਇਹ ਤਾਂ ਬ੍ਰह्म ਜਿਹੜੇ ਨਹੀਂ ਸੀ ਸਮਝਦੇ ਉਹ ਗੀਤ ਗਾਇਦੇ ਸੀ ਜਿਨ੍ਹਾਂ ਨੂੰ ਸਮਝ ਜਿਉਂ ਬ੍ਰह्मਚਾਰ ਕਹਿੰਦੇ ਸੀ ਹੁਣ ਵੀ ਬੇਸਮਝਾ ਵਾਸਤੇ ਗੀਤ ਹੈ ਸਮਝਦਾਰਾ ਬਾਤੋਂ ਬ੍ਰह्मਚਾਰ ਹੈ ਕੱਲ ਹੁਣ ਵੀ ਹੋਈ ਹੈ ਜਰਵੀ ਹੋਈ ਸੀ ਜਿਨ੍ਹਾਂ ਨੂੰ ਕੀਰਤਨ ਦਰਬਾਰ ਕਹਿੰਦੇ ਨੇ ਜਿਹੜੇ ਰਾਗੀ ਕਰਦੇ ਨੇ ਕੀਰਤਨ ਦਰਬਾਰ ਚਾਹੇ ਕਹੀ ਜਾਓ ਚਲੋ ਕੋਈ ਨਹੀਂ ਉਹ ਗਿਆਨ ਵਿੱਚ ਹੁਣ ਗੀਤ ਗਾਏ ਜਾ ਰਹੇ ਨੇ ਸੋਲ ਵਾਲੇ ਵੀ ਅਗਿਆਨੇ ਨੇ ਗੌਣ ਵਾਲੇ ਵੀ ਅਗਿਆਨੇ ਗੱਲ ਤੋਂ ਹੋ ਗਰੂਰੀ ਭੁੱਖੇ ਮੁੱਲਾ ਘਰੇ ਬਸੀਦ ਹੈ ਨਾ ਵਾਜੇ ਤੇ ਬਸੀਦ ਬਣੀ ਹੋਈ ਜਾਨੋ ਪੈਸੇ ਤਾਂ ਵਾਜੇ ਤੇ ਹੀ ਆਉਂਦੇ ਜਾਨੋ ਇਹ ਤਾਂ ਠੇਕਾ ਕੀਤਾ ਹੈ ਭੁੱਖੇ ਮੁੱਲਾ ਘਰੇ ਬਸੀਦ ਵਾਲੀ ਗੱਲ ਹੈ ਨਾ ਫਿਰ ਉੱਥੇ ਹੀ ਆ ਗਿਆ ਨਾ ਜਿਹੜਾ ਵਜਦੇ ਘਰੇ ਧੁਖ ਬੜਾ ਲੱਗੂਗਾ ਪਰ ਗੱਲ ਸੱਚ ਹੈ ਤੋ ਕ ਲੱਗੂਗਾ ਲੱਗੂ ਛੱਡ ਦੋ ਜੇ ਦੁੱਖ ਲੱਗਦਾ ਛੱਡ ਦੋ ਕੋਈ ਕੁਰਬਾਨ ਗੁਰੂ ਤੋਂ ਪੁੱਛ ਲੋ ਵੀ ਕਈ ਕੀ ਕਰੀਏ ਕਿਹੜੇ ਰਾਹ ਜਾਈਏ ਜਿਹੜੇ ਰਾਹ ਜਾਂਦੇ ਉਹਦੇ ਰਿਜ਼ਲਟ ਸਾਡੇ ਸਾਹਮਣੇ ਨੇ ਅੱਜ ਜੋ ਕੁਝ ਕਰ ਰਹੇ ਉਹਦਾ ਰਿਜ਼ਲਟ ਸਾਡੇ ਸਾਹਮਣੇ ਇਹਦੇ 'ਚ ਕੁਝ ਨਹੀਂ ਮਿਲਣ ਵਾਲਾ ਇਹ ਤੋਂ ਹੋਰ ਵੱਧ ਤੋਂ ਬੱਦਤਰ ਹਾਲਤ ਹੋਊਗੀ ਕਿ ਇਸੇ ਰਾਹ ਲੱਗੇ ਰਹੇ ਇਹ ਦੁੱਖਰਾਬੇ ਹੋਊ ਹਾਲਤ ਬਰਜ ਬੜਦਾ ਗਿਆ ਜੁੱਜੂ ਦਵਾਈ ਕੀ ਜੁੱਜੂ ਦਵਾਈ ਕਰਦੇ ਆ ਬਿਮਾਰੀ ਵੱਧਦੀ ਚਲੀ ਜਾਂਦੀ ਹੈ ਇਹ ਇਹ ਰਾਹ ਬਦਲਣਾ ਪਊਗਾ ਬਦਲ ਜਾਣੇ ਆਪੇ ਬਦਲ ਜਾਣਗੇ ਪਬਲਿਕ ਬਦਲ ਦੂਗੀ ਪਬਲਿਕ ਨੂੰ ਹਾਲੇ ਪਬਲਿਕ ਨੂੰ ਪਤਾ ਨਹੀਂ ਸੀ ਨਾ ਪਬਲਿਕ ਨੂੰ ਕਿਆਨ ਹੋ ਜਾਊ ਆਪੇ ਬਦਲੇ ਜਾਊਗਾ ਚੰਗਾ ਇਹਨਾਂ ਦਾ ਸੀਜ਼ਨ ਲੱਗ ਗਿਆ 5 7 4 ਸਾਲ ਪਹਿਲਾਂ ਸਾਡਾ ਸੀਜ਼ਨ ਸੀ ਦੇਖੋ ਸਾਰਿਆਂ ਦਾ ਸੀਜ਼ਨ ਲੱਗ ਲੇਗਾ ਤੁਹਾਨੂੰ ਸਾਰਿਆਂ ਦਾ ਪਬਲਿਕ ਨੂੰ ਗਿਆਨ ਹੋ ਗਿਆ ਇਹ ਹੁਗਣਾ ਵੀ ਚਾਹੀਦਾ ਸੀ ਪਬਲਿਕ ਦਾ ਪਰਪਟ ਟੁੱਟ ਜਾਂਦਾ ਵੀ ਸਾਰੇ ਤੀਰ ਅਜਮਾ ਲੈ ਅਸੀਂ ਰਾਗਿਆਂ ਦੇ ਤੀਰ ਵੀ ਅਜਮਾਏ ਗਏ ਕਥਾ ਬਾਚਕ ਵੀ ਅਜਮਾਏ ਗਏ ਸ਼ਰਮਣੀ ਕਮੇਟੀ ਵਾਲੇ ਵੀ ਅਜਮਾਏ ਗਏ ਅਸਿਆਸਤ ਦਾਨ ਵੀ ਅਜਮਾਏ ਗਏ ਅਜਮਾਏ ਗਏ ਨਾ ਸਾਰੇ ਪਹਿਲਾ ਪਹਿਲਾ ਵਿਸਲਾ ਵਾਲੇ ਵੀ ਅਜਮਾਏ ਗਏ ਰਾਜੇ ਵੀ ਅਜਮਾਏ ਗਏ ਹੁਣ ਅਖੀਰ ਤੋਂ ਦਰਬਾਰ ਵਾਲੇ ਵੀ ਅਜਮਾਏ ਗਏ ਅਕਾਰ ਸੇਵਾਲੇ ਵੀ ਜਮਾਏ ਗਏ ਸਾਰੇ ਇਹ ਜਮਾਏ ਗਏ ਹੋਰ ਕੋਈ ਹੁਣ ਜਿਹੜਾ ਉੱਠੂਗਾ ਕੋਈ ਹੁਣ ਇਹਨਾਂ ਦਾ ਕੋਈ ਵੱਖਰਾ ਹੀ ਉੱਠੂਗਾ ਹੁਣ ਆਖਰੀ ਜਿਹੜਾ ਉੱਠੂਗਾ ਨਾ ਉਹ ਕੋਈ ਵੱਖਰਾ ਹੀ ਉੱਠੂਗਾ ਇਹ ਤਾਂ ਜਮਾਏ ਹੋਏ 3 ਨੂੰ ਸਾਰੇ ਇਹ ਤਾਂ ਸਾਰੇ ਜਮਾਏ ਗਏ ਉਹ ਨਾ ਜਰ ਰੋਟਦਾ ਹੀ ਨਹੀਂ ਹੁੰਦਾ ਵੀ ਸਾਰਿਆਂ ਨੂੰ ਜੋੜ ਲਾ ਲੈਣ ਲੋ। ਇਹ ਡੱਡੂ ਬੋਲਦੇ ਮੇਰੇ ਖੰਨਾ ਕੋਈ ਨਹੀਂ ਬੋਲਦੀ ਹੁੰਦੀ। ਸੱਚ ਉਹਦੋਂ ਹੀ ਆਉਂਦਾ ਪ੍ਰਗਟ ਪਰਫੈਕਸ਼ਨ ਕਰਦਾ ਹੈ ਜਦੋਂ ਸਾਰੇ ਅਜਮਾਏ ਜਾਂਦੇ ਨੇ। ਕੋਈ ਆਇਆ ਨਾ ਕਹੇ ਮੈਨੂੰ ਟਾਈਮ ਨਹੀਂ ਮਿਲਿਆ। ਵੱਡਾ ਲੀਡਰ ਸਾਰਿਆਂ ਦੇ ਪਿੱਛੋਂ ਬੋਲਦਾ ਹੁੰਦਾ। ਸਟੇਜਾਂ ਦੇ ਸਾਰੇ ਪਹਿਲਾਂ ਹੀ ਬੋਲਦੇ ਨੇ ਨਾ। ਸਟੇਜਾਂ ਜਦ ਹੁੰਦੀਆਂ ਨੇ ਸਭ ਤੋਂ ਵੱਡਾ ਲੀਡਰ ਪਿੱਛੋਂ ਬੋਲਦਾ ਨਾ। ਪਸਵੇਂ ਪਹਿਲਾਂ ਬੋਲਣ ਤਾਂ ਸਾਰੇ ਆ। ਸਭ ਨੂੰ ਟਾਈਮ ਦੇਣਾ ਚਾਹੀਦਾ ਬੋਲਣ ਤਾਂ ਕੋਈ ਆ ਨਾ ਕਿ ਮੈਨੂੰ ਟਾਈਮ ਨਹੀਂ ਮਿਲਿਆ ਸਭ ਨੂੰ ਟਾਈਮ ਦੇ ਦਿੱਤਾ ਜੇ ਹੋਰ ਰਹਿੰਦਾ ਕੋਈ ਹੋ ਲੈਣ ਬਟਾ ਉਹਨਾਂ ਜੇ ਹੁਣ ਚੁੱਪ ਕਰ ਜਾਂਦੇ ਦੋ ਸਾਲ ਕਿ ਕੋਈ ਰਹਿੰਦਾ ਉਹ ਕਹਿੰਦੇ ਮੈਂ ਆ ਕੇ ਵੀ ਭਾਈ ਸਾਨੂੰ ਦੇ ਦਿਓ ਟਾਈਮ ਹਲੇ ਉਹਨਾਂ ਲਈ ਸੁਧਾਰ ਕਰਕੇ ਦੇਖ ਲੈ ਮੈਂ ਜੇ ਗੁਰਮਤ ਦਾ ਸੁਧਾਰ ਹੁੰਦਾ ਟਾਈਮ ਲੈ ਲਵੇ ਸੁਧਾਰ ਕਰ ਲਵੇ ਦੋ ਸਾਲ ਹੋਰ ਚੁੱਪ ਕਰ ਜਾਂਦੇ 50 ਸਾਲ ਵੀ ਚੁੱਪ ਕਰਿਆ ਨੂੰ 50 ਕਿਉਂ 150 ਸਾਲ ਦੇ ਚੁੱਪਨੇ ਤਾਂ ਪਰ ਜਿਹਨਾਂ ਨੇ ਸਾਨੂੰ ਚੁੱਪ ਕਰਾਇਆ ਸੀ ਉਹ ਆਪ ਵੀ ਚੁੱਪੇ ਸੀ ਉਹ ਕਹਿੰਦੇ ਚੁੱਪ ਕਰ ਦਿਓ ਬੋਲਣ ਲਈ ਪਤਾ ਸਾਰੇ ਸੀ ਹਾਂਜੀ ਕਹੂੰ ਕਰਤੋ ਸ਼ਾਸਤਰ ਹੋ ਰਿਹਾ ਭਾਈ ਉਹ ਪੜੀ ਜਾ ਰਹੇ ਨੇ ਪੜਦੇ ਹੀ ਨਹੀਂ ਨਾ ਕਈ ਭਜਤ ਇਕ ਪੱਗ ਨਿਰਹਾ ਧਾਰ ਕਈ ਇੱਕ ਟੰਗ ਪਾਰ ਖੜ ਕੇ ਨਰਾਕਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਭਜਨ ਕਰ ਰਹੇ ਲਗਾਤਾਰ ਕਈ ਲਗਾਤਾਰ ਇੱਕ ਟੰਗ ਪਾਰ ਖੜੇ ਹੋ ਕੇ ਉਹਦਾ ਧਿਆਨ ਧਾਰਨ ਕਰ ਰਹੇ ਨੇ ਵਿਚਾਰੇ ਦੇਖੋ ਕਿੰਨਾ ਕਠਨ ਕੰਮ ਐਨਾ ਕੁਝ ਕਰ ਰਹੇ ਨੇ ਇੱਕ ਟੰਗ ਪਾਰ ਖੜੇ ਹੋ ਕੇ ਧਿਆਨ ਧਾਰਨ ਕਈ ਨੇਹ ਦੇਹ ਕਈ ਦੇ ਕਈ ਗਹਿਵਾਸ ਕਈ ਵਿਚਾਰੇ 크੍ਰਿਸਤੀ ਕਰਦੇ ਨੇ ਉਹ ਕਹਿੰਦੇ ਨੇ ਭਾਈ ਅਸੀਂ ਤਾਂ ਇਹਨਾਂ ਦੀ ਸੇਵਾ ਹੀ ਕਰਾਂਗੇ ਜਿਹੜੇ ਐ ਧਾਰਮਿਕ ਆਦਮੀ ਨਾਲ ਦੀ ਸੇਵਾ ਕਰਾਂਗੇ ਸਾਨੂੰ ਤਾਂ ਐਨਾ ਹੀ ਬਥੇਰਾ ਚਲੋ ਜੰਗੇ ਨੇ ਵੈਸੇ ਉਹਨਾਂ ਨੇ ਜਿਹਨੇ ਸੇਵਾ ਕਰਨੀ ਆ ਉਹ ਫਾਇਦਾ ਜਨੇ ਇਹਨੇ ਉਰਤੇ ਪਾਸੇ ਲੱਗੇ ਹਨ ਇਹਨਾਂ ਨੂੰ ਫਾਇਦਾ ਕੁਝ ਨਹੀਂ ਹੋਣਾ ਬਿਜਾਰਿਆਂ ਨੂੰ ਇਹ ਅਗਲੇ ਜਨਮ ਵਿੱਚ ਜੇ ਕੋਈ ਠੱਗੇ ਠੋਕੇ ਨੇ ਵਾਅਦਾ ਫੇਰਦਾ ਠੀਕ ਹੈ ਇਹ ਜਿਹੜੇ ਦੁਏ ਨੇ ਨਾ ਇਹ ਕੀ ਹੈ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਮਤਲਬ ਹੈ ਵੀ ਨਾਮ ਨਹੀਂ ਹੈ ਜਨਮ ਜਨਮ ਜਿਹਨਾਂ ਨੂੰ ਮਿਲ ਜੇ ਇਮਾਨਦਾਰ ਵੀ ਨਾ ਨਾਮ ਹੈ ਜਨਮ ਜਨਮ ਜਿਹਨਾਂ ਮਿਲਣਾ ਕਿਉਂਕਿ ਨਾਮ ਵਾਲਾ ਕੰਮ ਹੀ ਕਰਦੀ ਰਹੇ ਇਹਦਾ ਮਤਲਬ ਇਹ ਨਹੀਂ ਹੈ ਬਿਲਕੁਲ ਅਗਲੇ ਜਨਮ ਵਿੱਚ ਇਹ ਹੌਲੀ ਹੌਲੀ ਜੇ ਕਰਦੇ ਨੇ ਪੱਤੇ ਤੱਕ ਪਹੁੰਚ ਜਾਣਗੇ ਫੇ ਫੁੱਲ ਤੱਕ ਵੀ ਪਹੁੰਚ ਜਾਂਦੇ ਨੇ ਕਬੀਰ ਇਦਾਂ ਹੀ ਪਹੁੰਚਿਆ ਫੁੱਲ ਤੱਕ ਇਹ ਸਾਰੇ ਫੁੱਲ ਤੱਕ ਲੈ ਜਾਂਦੇ ਨੇ ਇਹ ਕਰਮ ਨੇ ਜਿਹੜੇ ਧਰਮ ਕਰਮ ਨੇ ਨਾ ਫੁੱਲ ਤੱਕ ਲੈ ਜਾਂਦੇ ਨੇ ਫੜ ਲੀ ਲੱਗਦਾ ਨਾਮ ਬਾੜਾ ਬੈ ਲੱਗਦਾ ਬਸ ਉਦੋਂ ਹੀ ਨਾਮ ਤਾਂ ਲੱਗੂਗਾ ਉਹਦੇ ਨਾਲੇ ਗਿਆਨ ਨਾਲੇ ਉਹ ਉੱਥੇ ਤੱਕ ਲੈ ਜਾਂਦੇ ਨੇ ਭੁੱਖ ਨਾਮ ਦੀ ਫਾਇਦਾ ਕਰ ਦਿੰਦੇ ਜਦ ਭੁੱਖ ਪੈਦਾ ਹੋ ਗਈ ਫਿਰ ਨਾਮ ਮਿਲਦਾ ਉਦੋਂ ਬਾਅਦ ਜਨਾਬ ਦੀ ਭੁੱਖ ਪੈਦਾ ਨਾ ਮਿਲ ਜਾਂਦਾ ਬਸ ਹਾਂਜੀ ਕਈ ਪਰਮਤ ਦੇਸ਼ ਦੇਸਨ ਉਦਾਸ ਪਹਿਲਾਂ ਨਾ ਬਾਰੇ ਨਾ ਬਾਰੇ ਭਲੇਖਾ ਨਾ ਬਾਰੇ ਭਲੇਖਾ ਹੈ ਨਾ ਬਾਰੇ ਭਲੇਖਾ ਨਿਕਲੇ ਤੇ ਗੁਰਵਾਣੇ ਨਾਮ ਬਾਰੇ ਭਲੇਖਾ ਕਰਦੀ ਹੈ ਉਹਦੇ ਬਾਅਦ ਇਹ ਦੀ ਭੁੱਖ ਪੈਦਾ ਹੁੰਦੀ ਹਾਂਜੀ ਕਈ ਪਰਮਤ ਦੇਸ਼ ਦੇਸਨ ਉਦਾਸ ਕਈ ਉਦਾਸ ਹੋ ਕੇ ਦੇਸ ਦੇਸ ਦੇ ਪਰ ਫਿਰ ਤੇ ਪਰਬ ਦੇ ਫਿਰਦੇ ਨੇ ਦੇਸਾਂ ਦੇਸਾਂ ਦੇ ਵਿੱਚ ਕਈ ਜਲਨਵਾਸ ਕਈ ਅਗਨਤਾਪ ਕਈ ਜਲਦੇ ਵਿੱਚ ਨਵਾਸ ਕਰਦੇ ਨੇ ਇੱਕ ਅਗ ਤਾਪ ਦੇ ਨੇ ਪੁੱਠੇ ਲਟਕ ਜਾਪ ਜਪਦੇ ਨੇ ਮਾਲਾ ਫੇਰਦੇ ਨੇ ਪੁੱਠੇ ਲਟਕ ਝੂਲਦੇ ਨੇ ਪੁੱਠੇ ਲਟਕ ਉੱਥੇ ਸੀ ਉਰਦ ਐਂ ਝੂਲਦੇ ਨੇ ਇੱਥੇ ਲਟਕੰਤ ਲਿਖਿਆ ਹੋਇਆ ਦੇਖੋ ਉਹ ਤੇ ਉਰਦਝੂਲ ਦੇ ਲਿਖਿਆ ਸੀ ਤੇ ਉਰਦ ਲਟਕਦੇ ਲਿਖਿਆ ਉਹਦਾ ਲਟਕਦੇ ਪੈਰ ਉੱਤੇ ਨੂੰ ਵੱਢ ਕੇ ਥੱਲੇ ਲਟਕਦੇ ਨੇ ਇਹ ਜਾਪ ਕਰਦੇ ਨੇ ਥੱਲੇ ਥੋੜੀ ਨਹੀਂ ਆਏ ਦੇ ਉਹ ਬੁੱਧੇ ਪੈ ਕੇ ਝੂਲਦੇ ਸੀ ਤੂੰ ਇਹ ਤੇ ਅਗਰੇ ਉੱਤੇ ਉਰਦਾ ਆ ਲਟਕਣ ਦਾ ਫਰਕ ਹੈ ਅੱਡ ਅੱਡ ਦੋ ਲਫ਼ਜ਼